₹1550 ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਗਿਆਵਾਦ ਕੇ 10 ਮਿੰਟ ਹੋਏ ਨੇ 16 ਜਨਵਰੀ ਉਹ ਦਿਨ ਦਾ ਵਰਾ 2017 ਦਾ ਸੋਮਵਾਰ ਹੈ। ਇਨ ਨਾਨਕ ਸ਼ੈ ਸਮਰਪਨ 548 ਨਿਗਾ ਹਾਬਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਕਹਾਵਾ ਗੱਲਾਂ ਬਾਤਾਂ ਜੀ ਸੰਗੀਤ ਸੁਰਗ ਦੇ ਮਸਲੇ ਤੇ ਗੱਲਬਾਤ ਹੋਣੀ ਹੈ। ਪ੍ਰੋਗਰਾਮ ਅੱਜ ਖਾਸਾ ਕੰਮ ਮੈਨੂੰ ਕਰਨ ਲਈ ਤੁਸੀਂ ਨਾਲ ਰਹੇ ਹੋ ਪਹਿਲੇ ਹਿੱਸੇ 'ਚ 11:30 ਵਜੇ ਹਰਬਰਸ਼ਿਪ ਮੇਅਰ ਲਿੰਡਾ ਹੈਪਨਰ ਤੇ ਕਾਉਂਸਲਰ ਟਾਮ ਗਿਲ ਨੇ ਉਹਨਾਂ ਟਾਮ ਗਿਲ ਬਰਾਬਰ ਦਾ ਹੈ ਮੇਅਰ ਜਿੰਨੇ ਵੋਟਾਂ ਟਾਮ ਗਿਲ ਨੂੰ ਪਈਆਂ ਪਰ ਮਿਲਦੇ ਘੱਟ ਹੈ ਅਕਤੂਬਰ 2000 15 ਦੇ ਵਿੱਚ ਜਦ ਇਲੈਕਸ਼ਨ ਸੀ ਉਸ ਤੋਂ ਬਾਅਦ ਹੁਣ 14 ਮਹੀਨੇ ਹੋ ਗਏ ਮਸਾਂ ਸੂਤ ਆਏ ਬਾਹਰ ਦਾ ਤਜੀਤ ਤਾਂ ਸੀ ਹਰ ਦੂਜੇ ਮਹੀਨੇ ਗੱਲ ਕਰਿਆ ਕਰਨਾ ਪਰ ਕੌਣ ਕਰਦਾ ਹੈ ਵਿਆਹ ਤੋਂ ਬਾਅਦ ਵਿਚੋਲੇ ਨੂੰ ਕੋਈ ਪੁੱਛਦਾ ਚਲ ਜਿੰਨਾ ਆਇਆ ਉਨਾ ਹੀ ਸਹੀ ਜਿੰਨਾ ਘੋੜ ਡਲੂ ਪਊ ਜਿੰਨਾ ਪੁੱਛਿਆ ਪੁੱਛਾਂਗੇ 11:30 ਤੋਂ 12 ਤੱਕ ਪਰ ਲੱਗਦਾ ਨਹੀਂ ਕਿ ਦੋਨਾਂ ਦਾ ਸਮਾਂ ਹੋਵੇ ਸਵਾਲ ਮੈਂ ਤੁਹਾਡੇ ਲਈ ਵੱਧ ਤੋਂ ਵੱਧ ਪੁੱਛਾਂਗਾ 12 ਤੋਂ 1 ਵਜੇ ਤੱਕ ਪੰਜਾਬ ਦੇ ਪਾਣੀਆਂ ਦੀ ਚਰਚਾ ਹੋਵੇਗੀ ਕਿਉਂਕਿ ਸਰਜੀਤ ਸਿੰਘ ਬਰਨਾਲਾ ਇਸ ਸੰਸਾਰ ਤੋਂ ਤੁਰ ਗਿਆ ਐਸਵਾਈਐਲ ਪੂਰੀ ਕਰਾਉਂਡ ਦੇ ਵਿੱਚ ਬਰਨਾਲੇ ਦੀ ਮਿਨਿਸਟਰੀ ਜਦ ਸੀਐਮ ਦਾ ਨਿਰਮਾਤਾ ਫਿਲਮ ਦੇ ਨਿਰਮਾਤਾ ਸੁਰਾਸ਼ਕਦੀਪ ਸਿੰਘ ਸ਼ੀਨਾ ਉਹਨਾਂ ਦੇ ਨਾਲ ਉੱਗੇ ਪਾਣੀਆਂ ਦੇ ਚਿੰਤਕ ਸਰਦਾਰ ਜਸਵਿੰਦਰ ਸਿੰਘ ਵਿਦੇਸ਼ਾ ਜਿਹੜੇ ਪੰਜਾਬ ਵਾਟਰਸ ਕ੍ਰਾਈਸਿਸ ਇੱਕ ਪੇਜ ਚਲਾਉਂਦੇ ਆ ਤੇ ਬਹੁਤ ਜ਼ਿਆਦਾ ਕੰਮ ਕੀਤਾ ਸਰਦਾਰ ਵਿਦੇਸ਼ਾ ਨੇ ਦੋਨੇ ਪਹੁੰਚਣਗੇ 12:10 ਤੋਂ 1:00 ਵਜੇ ਤੱਕ 1:00 ਤੋਂ 2:00 ਵਜੇ ਤੱਕ ਇਲਨ ਮਸਕ ਨੇ ਇੱਕ ਨਵੀਂ ਉਪਲਬਧੀ ਉਹਦੀ ਸਪੇਸ ਐਕਸ ਪ੍ਰੋਗਰਾਮ ਦੇ ਵਿੱਚ ਇੱਕ ਰੌਕਟ ਚੜ੍ਹਿਆ ਜਿਸ ਨੇ ਸੈਟੇਲਾਈਟਸ ਉੱਪਰ ਛੱਡੀਆਂ ਤੇ ਰੌਕਟ ਵਾਪਸ ਦੀ ਜ਼ਿੰਦਗੀ ਦੀ ਗੱਲ ਸੈਟੇਲਾਈਟਸ ਦੀ ਗੱਲ ਸਾਡੇ ਸੌਰ ਮਾਡਲ ਦੇ ਵਿੱਚ ਸਾਡੇ ਇਸ ਧਰਤੀ ਦੇ ਆਲੇ ਦੁਆਲੇ ਕਿੰਨੇ ਕੁ ਪਾਰਟਿਕੂਲਰ ਕਿੰਨੀ ਕੁ ਡੈਬਰੀਜ਼ ਕਿੰਨੇ ਕੁ ਪੁਰਸ਼ਤਾਰੇ ਕਿੰਨੀਆਂ ਕੁ ਪੁਰਾਣੀਆਂ ਸੈਟੇਲਾਈਟਸ ਜਿਹੜੀਆਂ ਉਹ ਭੱਜੀਆਂ ਫਿਰਦੀਆਂ ਤੇ ਉਸ ਦੀ ਗੱਲ ਸੈਟੇਟੇਲਾਈਟਸ ਕਿੰਨੀਆਂ ਭੇਜ ਰਹੇ ਨੇ ਹੁਣ ਅਗਲੇ ਸਾਲ ਦੇ ਵਿੱਚ ਆਉਣ ਵਾਲੇ 14-15 ਮਹੀਨਿਆਂ ਚ ਇੱਕ ਨਵੀਆਂ ਚੀਜ਼ਾਂ ਸ਼ੁਰੂ ਹੋਈਆਂ ਇਸ ਫਾਲਕਨ 9 ਦੇ ਨਾਲ 70 ਦੇ ਕਰੀਬ ਨਵੀਆਂ ਸੈਟੇਲਾਈਟਸ ਰੇਡੀਅਮ ਵੱਲੋਂ ਭੇਜੀਆਂ ਜਾਣੀਆਂ ਜਿਹੜੀਆਂ ਫਰਸਟ ਰਿਸਪੌਂਸਰਸ ਦਾ ਫਰਸਟ ਰਿਸਪੌਂਡ ਦਾ ਕੰਮ ਕਰਨੀਆਂ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਮੁਸ਼ਕਲ ਆਵੇਗੀ ਸਭ ਤੋਂ ਪਹਿਲਾਂ ਸੈਟੇਲਾਈਟਸ ਵਿਖਿਆ ਕਰਨਗੇ ਅੱਗ ਕਿੱਥੇ ਤੇ ਪਹਚਾਲ ਕਿੱਥੇ ਤੇ ਪਾਣੀ ਜਲਜਲੇ ਕਿੱਥੇ ਤੇ ਦੱਸਿਆ ਕਰਨਗੇ ਬੇਜਾ ਬੇਜਾ ਹੋਗੀ ਬਦ ਤੋਂ ਬਦ ਕੋਸ਼ਿਸ਼ ਕਰਾਂਗਾ ਜਿੰਨੀ ਕੁ ਮੇਰੀ ਪਕੜ ਹੈ ਤੁਹਾਡੇ ਸਾਹਮਣੇ ਕਰਨ ਦੀ ਇਹ ਤੇ ਗੱਲ ਕੀਤੀ ਸੀ ਅੱਜ ਰਾਕਟ ਕਿਵੇਂ ਉੱਡਦੇ ਤੇ ਸੈਟਲਾਈਟਸ ਕਿਵੇਂ ਛੱਡਦੇ ਆ ਤੇ ਇਹ ਸਾਰੀ ਇਸ ਜਾਣਕਾਰੀ ਅਸਾਂ ਦੋਨਾਂ ਨੇ ਪਵਨਦੀਪ ਸਿੰਘ ਜਵੰਦਾ ਕਿਉਂਕਿ ਇਲੈਕਟ੍ਰੀਕਲ ਦਾ ਇੰਜੀਨੀਅਰ ਮੁੰਡਾ ਕਰੜਾ ਬਹੁਤ ਹੈ ਦੋਨੇ ਭਾਈਆਂ ਨੇ ਮਿਲ ਕੇ ਬਹਿ ਕੇ ਮੈਂ ਕਿਹਾ ਮੈਨੂੰ ਸਮਝਾ ਦੇ ਮਾੜੀ ਜੀ ਮੈਂ ਗਾਹਾਂ ਕਹਿ ਦੂੰ ਉਨੇ ਜਿਵੇਂ ਸਮਝਾਤੀ ਮੈਂ ਤੁਹਾਨੂੰ ਗਾਂਹ ਕਹਿ ਦੇਣੀ ਐ ਅਸਲ ਇੰਟਰਸਟ ਦੀ ਗੱਲ ਐ ਦੋਨਾਂ ਦੇ ਨਾਲ ਅਸੀਂ ਕੁਝ ਚੀਜ਼ਾਂ ਲੱਭੀਆਂ ਤੁਹਾਡੇ ਸਰ ਮੁਖ ਕਰਾਂਗਾ 18442471550 18442471550 on air ਨੰਬਰ ਰਹੇਗਾ ਰੌਕਟ ਸਾਇੰਸ ਦੀ ਗੱਲ ਹੋਊ ਪਰ ਨਾਲ ਨਾਲ ਚੱਲੂ airpyaudio.com ਤੇ ਤੁਸੀਂ ਸਿੱਧਾ ਪ੍ਰਸਾਰਣ ਸੁਣਦੇ ਹੋ ਨਾਲ ਐਪ ਡਾਊਨਲੋਡ ਕਰੋ ਜੇ ਮੂਰੋਈ ਗੱਲ ਨਿਕਲ ਜੇ ਤੁਹਾਨੂੰ ਲੋਕ 60 80k.wsdh ਤੇ ਤੁਸੀਂ ਪ੍ਰੋਗਰਾਮ ਸਾਰੇ ਉੱਥੇ ਪਏ ਆ ਹਾਲ ਦੀ ਘੜੀ ਹੈ ਸਾਰੇ ਪ੍ਰੋਗਰਾਮ ਉੱਥੇ ਪਏ ਆ ਤੇ ਬਾਅਦ ਚ ਵੀ ਸੁਣ ਸਕਦੇ ਜੀ ਕੀਤਾ ਤੇ krpiaudio.com ਜਿਹੜਾ ਉਹ ਵੈਬਸਾਈਟ ਹੈ ਜਿੱਥੇ ਤੁਸੀਂ ਹੋਰ ਵੀ ਹੋਸਟ ਬਾਰੇ ਤੇ ਪ੍ਰੋਗਰਾਮਾਂ ਬਾਰੇ ਪਤਾ ਕਰੋ ਨਿਮੀ ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ ਹੋ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ harjeet.gjrpiradio.com ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ ਕੱਲ ਊੜੀ ਮੁੰਡੇ ਦੀ ਲੋਹੜੀ ਮਨਾਈ ਗਈ ਤਰੰਜਨ ਵੱਲੋਂ ਵਹਿ ਜਾ ਵਹਿ ਹੋ ਗਈ ਕੱਲ ਮੈਨੂੰ ਜਾ ਕੇ ਮੈਂ ਪਹਿਲੀ ਵਾਰ ਗਿਆ ਮੈਨੂੰ ਏਉਂ ਲੱਗਿਆ ਯਾਰ ਮੈਂ ਤਾਂ ਇੰਨੇ ਵਰੇ ਗਵਾਏ ਦਿੱਤੇ ਚਲ ਦੇਰ ਆਏ ਦਰਸਤ ਆਏ ਹੁਣ ਵੀ ਸੂਤ ਗੁੱਲੀਦਾਨ ਪਉ ਗਾਣੂ ਵੇਖਿਆ ਕਰਾਂਗੇ ਕਿਉਂਕਿ ਧੀਆ ਪੁੱਤਾਂ ਨੂੰ ਬਰਾਬਰਤਾ ਦੀ ਜਦ ਗੱਲ ਕਰਨੀ ਹੈ ਤਾਂ ਉਹਨਾਂ ਦੇ ਜਦ ਸਮਾਰੋਹ ਹੁੰਦੇ ਆ ਉੱਥੇ ਵੀ ਜਾਣਾ ਪੈਂਦਾ ਐਨਾ ਦੇ ਵਿੱਚ ਐਡੇ ਵੱਡੇ ਵਧੀਆ ਸਨ ਜਿਹੜੀਆਂ ਹੁਣ ਮਾਵਾ ਬਣ ਗਈਆਂ ਤਿਰੰਜਨ 14 ਸਾਲ ਪਹਿਲਾਂ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਐਨੇ ਵਧੀਆ ਡਿਸਿਪਲਨ ਡਿਸਿਪਲਨ ਦੇ ਨਾਲ ਅਨੁਸ਼ਾਸਨ ਨਾਲ ਲੋਕ ਆਏ ਛੋਟੇ-ਛੋਟੀਆਂ ਧੀਆ ਤੇ ਪੁੱਤ ਤਿੰਨ ਤਨ 3.5 ਤਨ ਮਹੀਨੇ ਦੇ 1.5 ਹਫਤੇ ਦਾ ਹੀ ਸੀ 1 ਚਾਰਕ ਹਫਤੇ ਦਾ ਸੀ ਬਹੁਤ ਵਧੀਆ ਪ੍ਰੋਗਰਾਮ ਜਤਿੰਦਰ ਮੇਜਰ ਦੇ ਸੀ ਪਰਿੰਜਣ ਵਾਲੀਆਂ ਬੀਬੀਆਂ ਨੱਚਦੀਆਂ ਬਹੁਤੀਆਂ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਨੀ ਐ ਭਾਵੇਂ ਸੱਚ ਬੋਲੇ ਭਾਵੇਂ ਝੂਠਾ ਕੇ ਲੱਖ ਰੱਚਦਾ ਵੱਡੇ ਢੋਂਗ ਹੋਵੇ ਤੇਰੀ ਹਾਜ਼ਰੀ ਤੇਰੀ ਹਾਜ਼ਰੀ ਸੋਹਣਾ ਲੱਡਿਆ ਵੇ ਕੱਚੇ ਦੁੱਧ ਚ ਪਿਸਿਆ ਲੌਂਗ ਹੋਵੇ ਤੇਰੇ ਨਕਸ਼ ਜਿਉਂ ਫੁੱਲ ਕੋਈ ਦੌਦੀਏ ਦਾ ਲੰਮਾ ਵੇ ਸਾਡੇ ਦਿਲ ਦੀਆਂ ਸੋਹੜ ਪੀਸੀਆਂ ਨੂੰ ਡੂੰਘੇ ਨੈਣਾ ਦੇ ਦਾਤ ਨੇ ਛਾਂਗਿਆ ਵੇ ਸੰਧਾ ਫੁੱਲ ਫੁੱਲ ਪਿਪਲ ਹੋ ਗੀਆਂ ਹਾਲੇ ਕੱਲ ਕਰੂੰਬਲਾਂ ਕੱਚੀਆਂ ਸੀ ਵਿੱਚ ਇਸ਼ਕ ਦੇ ਕੁੜੀਆਂ ਮੁੱਕੀਆਂ ਜੋ ਮੈਨੂੰ ਲੱਗਦਾ ਸਾਰੀਆਂ ਸੱਚੀਆਂ ਗਿੱਦੀ ਸਾਬਤੀ ਨਾ ਕਦੇ ਹੱਥ ਆਵੇ ਹੁੰਦਾ ਇਸ਼ਕ ਹੈ ਬਾਟੇ ਅਖਰੋਟ ਵਰਗਾ ਜਦੋਂ ਖੰਭ ਫੁੱਟਣ ਹੋਵੇ ਅੱਖ ਤਾਜ਼ੀਏ ਤਾਂ ਅੱਚ ਵੀ ਖੋਰੇ ਬੋਟ ਵਰਗਾ ਬੁਝੀਆਂ ਸ਼ਾਮਾਂ ਦੇ ਤੰਦੜੇ ਵੜੇ ਲੰਮੇ ਨੱਕ ਸੂਈ ਦੇ ਖੁੱਲੇ ਮੈਦਾਨ ਹੁੰਦੇ ਚੜਦੀ ਉਮਰ ਦੇ ਦੂਰੀਆਂ ਚੜਦੀ ਉਮਰ ਦੇ ਦੂਰੀਆਂ ਖਾਨ ਕੋਲੋਂ ਐਵੇਂ ਹੋਕਿਆਂ ਦੀ ਹੀ ਖਾਨ ਹੁੰਦੇ ਤੋਂ ਕੋ ਵਿੱਚ ਫਟੀਆਂ ਘੁੱਜਾਵਣ ਟਾਂਕੇ ਹੋਸ਼ ਹਮੇਲਾਂ ਦੇ ਟੁੱਟ ਜਾਂਦੇ ਜਦੋਂ ਇਸ਼ਕ ਦਾ ਬੂੰਗਾ ਤਮੀਰ ਹੋ ਜੇ ਕੋਠੇ ਅਕਲ ਵਾਲੇ ਪਿੱਛੇ ਛੁੱਟ ਜਾਂਦੇ ਅਸੀਂ ਮਹਿਰਮਾਂ ਤਪਦਿਆਂ ਸੂਰਜਾਂ ਨੂੰ ਨਤੀ ਤੇਰੀ ਦੇ ਮੇਚ ਦਾ ਕਰ ਲਿਆ ਓਏ ਅਸੀਂ ਮਹਿਰਮਾਂ ਤਪਦਿਆਂ ਸੂਰਜਾਂ ਨੂੰ ਨਤੀ ਤੇਰੀ ਦੇ ਮੇਚ ਦਾ ਕਰ ਲਿਆ ਤੈਨੂੰ ਬਾਹਾਂ ਦੇ ਵਿੱਚ ਤਾਂ ਭਰਿਆ ਨਾ ਤੇਰੇ ਪਿੰਡ ਦਾ ਰੇਤਾ ਹੀ ਭਰ ਲਿਆ لوان زاگتے شال انگوریاں نو باگوں عشق تک ٹپکدار رس ہونداں میویں مشڑیاں رہ جان اک پاسے پھر تاں روڑاں دا مزہ وی نہیں دس ہوندا پھر تاں روڑاں دا مزہ وی نہیں دس ہوندا ہر منجیت لکھداں ٹھنک تلہ واں ਤੁਹਾڈا سارےاں دا جتھے وی بیٹھے سن رہے ہو سوموار دا ਮਸਾਂ ਸਰੀਏ ਇਕੱਠੇ ਕਰਕੇ ਕੰਮ ਵਾਲੀਆਂ ਬੈਨਾਂ ਤੁਸੀਂ ਬੈਠਿਓ ਸਾਰੇ ਦਿਹਾੜੀਆਂ ਲਾਉਣ ਗਿਆਓ ਖਿੱਚਦੇ ਆਂ ਕੰਮ ਹੁਣ ਫਿਕਰੇ ਕੋਈ ਨਹੀਂ ਦਿਹਾੜੀ ਅੱਧੀ ਤੱਕ ਮੈਂ ਨਾਲ ਰਹਿਣਾ 2 ਵਜੇ ਤੱਕ ਘੰਟੇ ਦੋ ਹੀ ਰਹਿ ਹੋ ਜਾਣਾ ਸੰਤ ਬਲੇਵਾ ਕਰ ਲਿਓ ਬਾਹਲਾ ਨਹੀਂ ਕੰਮ ਕਰੀਦਾ ਸੰਤਲ ਹੁਣਾ ਬਹੁਤ ਜ਼ਰੂਰੀ ਆ ਬੈਲੈਂਸ ਜ਼ਿੰਦਗੀ ਚ ਹੋਣਾ ਬਹੁਤ ਜ਼ਰੂਰੀ ਆ ਇਸ ਦੇ ਪਿਆਰ ਬਾਰੇ ਹਰਮਨ ਨੇ ਲਿਖਿਆ ਉਹਦੇ ਪਿਆਰ ਦੇ ਵਿੱਚ ਇਨਾ ਬਾਗੀਆਂ ਬਾਗੀ ਸੁਰ ਹੈ ਬਾਗੀਆਂ ਦਾ ਸੋਚ ਹੈ ਕਿ ਉਸ ਨੂੰ ਉਹ ਉਸ ਪਿਆਰ ਨੂੰ ਵੰਡਦੀ ਮਾਂ ਦੇ ਰੂਪ ਚਾ ਉਹ ਦੇ ਰੂਪ ਚਾ ਉਹ ਤਾਈ ਦੇ ਰੂਪ ਚਾਚੀ ਦੇ ਰੂਪ ਚਾ ਪਿਆਰ ਦੇ ਇਸ਼ਕ ਦੇ ਰੂਪ ਚਾ ਪਰ ਬਹੁਤ ਜਿਵੇਂ ਧਰਤੀ ਸੂਰਤ ਵਾਲੇ ਕੁੱਖ ਦੀ ਆ ਨਾ ਐਵੇਂ ਹੀ ਉਹ ਬਹੁਤ ਬੈਲੈਂਸ ਸੰਤਲ ਰੱਖ ਕੇ ਸੰਚਲਦੀ ਹੈ ਹਰ ਰਿਸ਼ਤੇ ਵੇਰੇ 10 8 10 ਰਿਸ਼ਤਿਆਂ ਦੇ ਆਪ ਸੰਭ ਕੇ ਰੱਖਦੀ ਹੈ ਜੇ ਉਹ ਭੈਣ ਆ ਤਾਂ ਅਥਾ ਭਾਈ ਨੂੰ ਪਿਆਰ ਕਰਦੀ ਹੈ ਜੇ ਚਾਚੀ ਜਾਂ ਤਾਈ ਹੈ ਉਹ ਭਤੀਜੇ ਨੂੰ ਬਹੁਤ ਪਿਆਰ ਕਰਦੀ ਹੈ ਉੱਤਾਂ ਤੋਂ ਵੱਧ ਮਾਸੀਆਂ ਆਪਣੇ ਭਾਣਜਿਆਂ ਨੂੰ ਬਹੁਤ ਸੇਉ ਕਰ ਦਾਦੀਆਂ ਨਾਨੀਆਂ ਉੱਚਰਲੇ ਉਪਰਲੀ ਉਮਰ ਚ ਹੋ ਕੇ ਸਦਾ ਹੀ ਸੀਸਾ ਵੰਡਦੀਆਂ ਮਾਂ ਜਿਹੜੀ ਐ ਉਹ ਬਹੁਤ ਬਹੁਤ ਠੰਡਾ ਮਿੱਠਾ ਇੱਕ ਜ਼ੇਹਾਂ ਰਿਸ਼ਤਾ ਜਿਸਦੇ ਸੋਚ ਕੇ ਹੀ ਮਨ ਆ ਜਾਂਦਾ ਜ਼ਿੰਦਗੀ ਦੇ ਵਿੱਚ ਮੀਆਂ بیوی ਦਾ ਜਿਹੜਾ ਰਿਸ਼ਤਾ ਉਸ ਰਿਸ਼ਤੇ ਦੇ ਵਿੱਚ ਉਹ ਸਭ ਤੋਂ ਵੱਧ ਸਾਰਾ ਕੁਝ ਪਾ ਕੇ ਉਸ ਰਿਸ਼ਤੇ ਨੂੰ ਗੁਣੰਦ ਕਰਦੀ ਆ ਧਰਤੀ ਦੇ ਵਿੱਚ ਅਜਿਹੀ ਇੱਕ ਕਰਾਮਾਤ ਉਬਿਆ ਸਬਰਨ ਓਖਾਂ ਦੇ ਵਿੱਚੋਂ ਉਹਦੀਆਂ ਓਖਾਂ ਦੇ ਵਿੱਚੋਂ ਰਾਜੇ ਜੰਮਦੇ ਐ ਰਾਜੇ ਜੰਮਦੇ ਐ ਇਹ ਜਦੋਂ ਪਿਆਰ ਦੇ ਵਿੱਚ ਕਿਸੇ ਨਾਲ ਘੁੱੜਦੀ ਐ ਤਾਂ ਉਹ ਸਾਰਾ ਕੁਝ ਆਪਣੀ ਜਾਨ ਤੱਕ ਲਾਉਣ ਨੂੰ ਜੰਦੀ ਆ ਆਪਣੇ ਕੋਲ ਸਵਾਰੀਖਾਂ ਨੇ ਪਰ ਇਸ ਸਾਰੀ ਨੂੰ ਇੱਕ ਸੰਤਲ ਰੱਖ ਕੇ ਇੱਕ ਬੈਲੈਂਸ ਰੱਖ ਕੇ ਚੱਲਣਾ ਪੈਂਦਾ ਜਿਹੜਾ ਪਿਆਰ ਲੈਣ ਵਾਲਾ ਜਾਂ ਉਹ ਰਿਸ਼ਤੇ ਨੂੰ ਨਿਭਾਉਣ ਵਾਲਾ ਜਦੋਂ ਕੁਝਕ ਸਮਸਾਂ ਟਿਲੀਆਂ ਛੜਦਾ ਹੈ ਕਈ ਵਾਰ ਜਵਾਨੀ ਆਪ ਖਦਰੀ ਹੋ ਕੇ ਵੋਧਿਆਂ ਤੋਂ ਥੁੱਕਣ ਲੱਗਦੀ ਹੈ ਉਸ ਨੂੰ یوں ਲੱਗਣ ਲੱਗਦਾ ਮੇਰੇ ਪੈਰਾਂ ਥਲੇ ਜਹਾਨ ਹੈ ਘੇਪ ਮੰਨਣੋ ਜਦ ਕੋਈ ਬੰਦਾ ਹਟ ਜੇ ਕਿਸੇ ਵੀ ਰਿਸ਼ਤੇ ਚ ਕੋਈ ਵੀ ਰਿਸ਼ਤਾ ਆਵੇ ਉਹ ਰਿਸ਼ਤਾ ਚਕਨਾ ਚੂਰ ਹੋ ਜਾਂਦਾ ਟੜਾਕ ਤੜਾਕ ਤੜਾਕ ਕਰਕੇ ਟੁੱਟ ਜਾਂਦਾ ਜਦ ਹੱਥ ਛੱਡਣੇ ਆ ਹੱਥ ਦੇ ਵਿੱਚੋਂ ਕੱਕਾ ਰੇਤ ਸਿੱਟਣਾ ਜੀ ਨੇ ਥੱਲੇ ਉਸ ਰੇਤੇ ਨੂੰ ਆਪਣੇ ਹੱਥਾਂ ਦੇ ਵਿੱਚ ਆਪਣੇ ਬੁੱਕ ਚ ਪਾਉਣਾ ਉਹਦੇ ਹੱਥ ਇੰਨੇ ਕਰੜੇ ਚਾਹੀਦੇ ਆ ਕਿ ਉਹ ਰੇਤਾ ਕਿਉਂਕਿ ਉੱਪਰ ਵਾਲੇ ਦੇ ਹੱਥ ਚੋਂ ਖਾਲੀ ਹੋ ਜਾਣਾ ਜੇ ਥੱਲੇ ਦੇ ਨਾਂ ਸੰਭਿਆ ਉਹਨੇ ਉਹ ਰੇਤਾ ਉਹਦੇ ਹੱਥਾਂ ਚੋਂ ਕਿਰ ਗਿਆ ਜ਼ਿੰਦਗੀ ਤਹਸ ਨਹਿਸ ਹੋ ਜਾਂਦੀ ਸੰਤਲ ਜ਼ਿੰਦਗੀ ਚ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਆ ਜੇ ਮਾਣ ਕੋਈ ਦਵੇ ਪੱਲਾ ਏਡਾ ਵੱਡਾ ਚਾਹਿੰਦਾ ਮਾਣ ਸੰਭਿਆ ਜਾਵੇ ਜੇ ਮਾਣ ਚਿਰਦਾ ਫਿਰਦਾ ਫਿਰ ਫਾਇਦਾ ਹੀ ਕੋਈ ਨਹੀਂ ਨਾ ਮਾਣ ਦੇਣ ਦਾ ਨਾ ਮਾਣ ਲੈਣ ਦਾ ਖੜੇ ਪੈਰ ਚੀਜ਼ਾਂ ਆਇਆ ਇਹ ਵਪਾਰਕ ਸੰਦੇਸ਼ 12:28 ਮਿੰਟ ਹੋ ਗਏ ਜੀ ਜਿਸ ਦੱਸਿਆ ਸੀ ਕਿ ਅੱਜ ਸਿਟੀ ਆਫ ਤੋਂ ਮੇਅਰ ਲਿੰਡਾ ਹੈਪਨਰ ਦੇ ਕਾਉਂਸਲਰ ਟੌਮ ਗਿਲ ਗੱਲਬਾਤ ਕਰਨਗੇ ਤੁਹਾਡੇ ਬਹੁਤ ਸਵਾਲ ਨੇ ਜਿਸ ਦੇ ਵਿੱਚ ਸ਼ਹਿਰ ਦੇ ਸਬੰਧੀ ਖਾਸ ਤੌਰ ਤੇ ਪ੍ਰੋਪਰਟੀ ਟੈਕਸ ਦੇ ਸੜਕਾਂ ਦੇ ਉਹਦੇ ਬਾਅਦ ਲਾ ਐਂਡ ਆਰਡਰ ਦੇ ਸੇਫਟੀ ਦੇ ਸਿਕਿਉਰਿਟੀ ਦੇ ਖਾਸ ਤੌਰ ਤੇ ਕੁਝ ਨੇਬਰਹੂਡਸ ਨੇ ਕਮਿਊਨਿਟੀਜ਼ ਨੇ ਜਿਹੜੀਆਂ ਸੋਚਦੀਆਂ ਕਿ ਅਸੀਂ ਲਵਾਰਸ ਜੇ ਨਿਊਟਨ ਹੈ ਉਸ ਤੋਂ ਬਾਅਦ ਨਾਰਥ ਫਰੀ ਹੈ ਤੇ ਬਾਕੀ ਕੁਝ ਏਰੀਆ ਦੇ ਵਿੱਚ ਠੰਡੀ ਹਵਾ ਵਗਦੀ ਆ ਕੋਸ਼ਿਸ਼ ਕਰਾਂਗੇ ਦੋਨੇ ਹੀ ਬਾਰ ਬਾਰੀ ਗੱਲ ਕਰਨਗੇ ਟੌਮ ਗੈਲੋਨੀ ਵੀ ਗੱਲਬਾਤ ਕਰਨਗੇ ਮੇਅਰ ਹੈਪਨਰ ਵੀ ਗੱਲਬਾਤ ਕਰਨਗੇ ਮੇਅਰ ਹੈਪਨਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਹਰਜੀਤ ਸਤਿ ਸ੍ਰੀ ਅਕਾਲ ਥੈਂਕ ਯੂ ਐਂਡ ਫਾਈਨਲੀ ਗਾਟ ਯੂ ਆਫਟਰ 14 ਮੰਥਸ ਯੂ ਸ਼ੁੱਡ ਹੈਵ ਆਸਕਡ ਆਈ ਹਵ ਆਈ'ਡ ਲਵਡ ਟੂ ਬੀ ਔਨ ਯੂਰ ਸ਼ੋ ਵੈਨਵਰ ਯੂ ਨੀਡ ਮੀ I tried my I tried my best many times you are sitting very high in your office that's why my reach is not there Well I your reach is uh I'm available on the show whenever you have issues that you would like me to discuss Anyway thank you so much for your time I know you are very busy for uh, uh, this evening the uh, council meeting there are a few issues um, uh, since the new assessment came out and people are asking about their property tax so uh, what would you like to say on that they are increase about 40% in their assessments 600000 uh, house which was uh, assessed, assessed last year now it's all about 900000 so uh, how they will uh, take it as a, a property tax okay harjeet first of all let i i what i'd like to start is a clear understanding of which jurisdiction does what and what that ultimately mm -hmm. means in terms of the property tax. So the assessment is different than the property tax. The assessment okay. belongs within the jurisdiction of the province and we have no authority to request any changes uh other than to identify errors or omissions. But what we take is how much does that translate into what we need to run the city? Every year the city requires a certain amount of money. Let's call it a bucket. We need this much money in the bucket to operate the city. And that is the programs, the uh, payments for the various departments, our policing, our fire, our garbage collection, all of that that's our budget. That number does not change, although this year it has of course gone up as, as uh all of the costs for the various things that we either purchase or we pay for have also gone up but very minimally 3.9 and uh, uh a little bit relative to roads that number that we need to run the city does not change based on the assessment what happens is the assessment is used to calculate what the mill rate for the city is so Let's okay. Say your assessment has gone up with the average is which is about 36%. Yes. Then you are no different this year than you were last year except for the money that we need to uh increase our operations here at the city which is as I I'd identified that 3.9. Um Okay. The rest we also and I don't know how that your listeners noor understand that we collect a whole lot of money for others and uh uh we collect money such as school taxes doesn't stay in the city goes directly to the province we collect GVRD money that doesn't stay it goes over to metro vancouver to run the operations at metro um so we collect on behalf of others as well but our bucket the money that we here at the city need has only gone up 3.9 so most of your uh listeners will not see a significant difference on their tax bill based on their high high assessments unless unless they are beyond the percentage of the normal and that, that is my understanding is it's sitting at around 36% councillor dill can correct me if, uh, if i'm wrong but i think it's at about 36% if yours went up 50% mm -hmm. in assessment then you mm -hmm. will see a difference in your tax and you'd either mm -hmm. uh apply to change your assessment through the provincial agency that does that uh mm -hmm. or you'll bite the bullet and say yes it it is higher and it's higher for a reason but if you're sitting at the average increase around 36% for multifamily and 40% for single family and your neighbor is up exactly the same and your whole street is up exactly the same the bucket of money we need won't look one bit different for you for you as a homeowner other than the increase in the property tax that about 3.9 so what is the difference in size of a bucket from 2 to uh, from 16 to 17 what is the difference what uh, you are looking for more money from uh, city of surry yes. residents yes we are and the average household would pay around $100 $130 difference based on yes. all of the increases that we're looking at yes okay so levy is uh, you are getting uh, you are uh, getting from us and giving to other authorities so are they are giving back to the city also something the gvrd or other things uh, what what they are bringing back to what you are bringing back to to the city well the metro vancouver gvrd what they use their tax money that they collect from us they use mm -hmm. it for their very large wastewater treatment plants for their mm -hmm. very large sewer operations and uh same with school taxes it all goes to the province to deliver to us that which um we require um uh, in the school district and you know that that, is, that that we are considerably at the moment underfunded in that respect okay so uh, uh, in these facilities the schools still have potable cabinets city hui the roads are in bad shape due to bad weather also and infrastructure uh, just like uh, the communities in new town or north sari uh, if you see the population late, uh, lately recently uh, Syrian refugees and every year we are getting lots of lots of immigrants um, if you see the average and if you see the increase in the immigration and uh, with the infrastructure if you go to any city suburbs say to go to pool or go to you know any any cities uh, suburbs there are always crowded and our kids are sitting in portable cabins so how we will do that we well, who are absolutely right that uh, our population is increasing at the at, an, at a substantial rate still no different than years past close to 1000 every single month and we mm. do have the jurisdiction over the parks and the road works and the fire and the police and the public uh, infrastructure pieces like our pools and our arenas those are the things that uh uh cost a lot of money and are definitely we need to keep up with the uh uh soccer fields and all of those things that keep our our young people active one of the struggles uh that we have here is that we have a significant number of people living in Surrey that are very close to the poverty line so keeping our taxes low uh is really critical and we are taxed um generally lower than anywhere else we keep our taxes lower than anywhere else in the region That has mm -hmm. a good side and that has a bad side. The good side mm -hmm. is people can afford to live here and we still encourage young families and you know just recently we got the award for being one of the best places in the country to work for young people. However, mm -hmm. it also has else. In the absence of being one of the higher tax places, you have to mm -hmm. really really position your funding very well in terms of keeping up with those infrastructure things that's why we prepare the five year capital plan and determine mm -hmm. what over the next five years can we afford to build so we've put arenas in there uh cultural gillion parks how many arenas that are we're putting in there this year uh, and by 2018 we'll have uh, two arenas in cloverdale and two arenas in bridgeview okay thank you and then uh, yes. um we have just recently opened the the second pool we're working with the YMCA to come to North Surrey so that we can have another pool there um in this area so that when uh, we retire the North Surrey arena we can also potentially retire the pool and uh utilize that for new infrastructure so it's a constant battle on making sure we have the money we need to run the city while keeping our taxes as low as we can Voters would uh, love to pay 100 if their kids are getting in the main school you know rather than the portable cabin Next uh, uh, another issue well, Now don't forget the schools are not part of the money that people pay uh to the city of Surrey Mm -hmm. school tax yeah anyways that there we goes, goes and on. that's what sorry uh, yes go ahead yeah the school tax goes to the province so we okay. i agree with you that uh having children educated for a large portion of their time in school the importables is not a good solution and we've been working very hard with the provincial government to come up with a better for them to come up with a better scenario of how they'd be to catch up. We know we've got some improvement that they have announced. We need more and hopefully we'll hear more over the coming months of how uh, all of the parties that are running for the provincial election will uh will have a better understanding and a better way of approaching high growth communities such as Surrey in keeping up with those schools. So as for population twenty ten we are about 475000 in the same by the 2020 will be about 570000 what do you think about it's not getting crowded and where will be the new developments and multi families or single families where we in which direction we are heading to now in four year there will be lots of people well you're right about that but let's back that up and think about the reality of uh let's use our neighbor uh Vancouver at 600 and I think there are about 660,000 and we can mm -hmm. fit Vancouver, Richmond and Burnaby all within our boundaries. So mm -hmm. are we are we uh overcrowded by no stretch? Would we have anywhere near the kind mm -hmm. of uh urban footprint that other cities currently have? We have mm -hmm. lots of room for growth in both density and uh um uh, multi-family as well as single family and we've probably prepared for that growth for the next 10 years at least lots of room still in Grandview in Celtsury lots of room for change in Newton and particularly around the Newton town center where we want to animate that whole town center once we get the LRT down there still lots of room for densification in north surrey um no we're where the expectation is that we will see about a million people over the next uh, 10-15 years and about 700,000 of them will locate south of the fraser that would include the langleys and deltas as well but surrey will certainly get a uh, the bigger share of all of that i have two another uh, more questions for you one is for the you know law and order for the crime and second for the referendum for the uh, ward system 2018 you promised with this, with the voters so both of them if you answer and yeah. where we are sitting you know there's um, there's balls and shooting nowadays in surry uh, i never know when it will flare up and uh, in, in terms of our cmp officers on the on the road uh, first that second for the referendum of watch system then uh, we will get a break and i'll get konstadel uh, on the line so please ansudo okay, all right let me let, let's talk first about all about the law and order and some of the things that we uh, committed to and have delivered. You're right that in any urban center, particularly as one as Youth described, getting as uh uh sophisticated and built out as Suria is with well over 500,000 people now, crime is is uh one of the most important issues that any government, any local government has to deal with. That's why we put <laughs> the first 100 new officers on the street and that has allowed us to do several things. First of all it has allowed us to increase the presence in schools with school uh, patrols it has allowed us to have more on ground uh, police officers in each of the town centers um and it has allowed us to come up with some of the innovative solutions around some of the so social vul vulnerabilities that we see in Surrey whether it's through the smart table which is the mobilization table that deals with those that are most in need of a uh, a crisis situation immediately or whether it is the most recent one with the dealing with the fentanyl crisis where we've put uh people directly 24/7 in the midst of the uh the most vulnerable population to do a couple of things get rid of some of those that are trying to do direct deals there drug deals and to uh finalize sort of what are the plans for each of those people one bed at a time how can we get them off the streets and into something that's uh uh makes their lives better so <laughs> yes we have problems yes we have absolutely addressed them i think when you saw all of the uh shot fired incidents in uh, the space of that one year um and you then you took a look at how many arrests we made and how quickly uh we engaged the uh E division people and those that are in the gang enforcement and elevated some of those programs i think we're on the right track but i do believe that it has got to start early and it has to start in the schools harjeet as well as some of the many programs that we're offering to our youth we have to have those youth understand that living a life of uh, contribution and service to the community is a better way to go than uh trying to uh, get rich quick schemes uh and that mm -hmm. that continues to be a work that that needs to be done and then the second one the ward system i have mm -hmm. never ever said that we would need a referendum on a ward system i have mm -hmm. said that and i've made this very clear on a number of occasions that mm -hmm. people who represent a single area only and mm -hmm. then it is a game of it's a game of horse trading you see it mm -hmm. and i see it in cities um when i go to the big city mayors and some mm -hmm. of them have systems like that not many but some there's it's always a trade off of who will uh support my utilization of or my my wish for a soccer field in exchange for uh I'll get something else done in your area when you have a city as quickly growing as surrey you need a uh a group you can now approach any one of the councillors any one of them because they all need your vote. Every single one of them needs your vote. If you only needed to approach one person, councilor X, uh and then all of the other councilors, why would they care? There is a there is a an arena of care that is required by all council around all areas of the city and I'm very supportive of that. So do I think a ward system is a good way to go? No, I don't. Vancouver rejected it several years ago. I continue to think that uh having all councillors serve us is the best way to build a city. Well, um thank you so much for your time. Uh please do come uh, after a month or two months uh, all listeners are feeling that you sitting direct with them and uh, listening next time um we would like to get calls for you uh, when we will set up the time and uh, thank you again uh, for your time we'll get a break and uh, then we'll get uh, counselor gill okay thanks arjeet happy to do that thank you break to baad gill nal gal hove mayor happener galwat kar rahe san hun counselor gill jinna nu bahut vote de naal tusi jitaya ਮੁਨਾ ਜਿੰਨੀਆਂ ਇੱਕ ਮੇਅਰ ਨੂੰ ਵੋਟਾਂ ਪਈਆਂ 4546019 ਕੌਂਸਲ ਗਿੱਲ ਨੂੰ ਵੋਟ ਪਾਈ ਤੁਸੀਂ ਆਪਣੇ ਭਾਈਚਾਰੇ ਦੇ ਉਸ ਕੋ ਇੱਕ ਕੌਂਸਲਰ ਨੇ ਕੌਂਸਲਰ ਗਿੱਲ ਸਤਿ ਸ੍ਰੀ ਅਕਾਲ ਜੀ ਟੂ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਤੇ ਗਲਬਾਤ ਮੇਰ ਦਸਕੇ ਗਏ ਨੇ ਪ੍ਰੋਪਰਟੀ ਟੈਕਸ ਬਾਰੇ ਕਲੀਅਰ ਹੋ ਗਈ ਇਨਫਰਾਸਟ੍ਰਕਚਰ ਦੀ ਮੈਂ ਥੋੜੀਆਂ ਜੀਆਂ ਕਮਿਊਨਿਟੀ ਬਾਰੇ ਤੁਹਾਨੂੰ ਗੱਲ ਕਰਨੀ ਚਾਹੁੰਦਾ ਪਲੀਜ਼ ਨਿਊਟਨ ਤੇ ਨਾਰਥ ਸਰੀ ਦੇ ਲੋਕ ਆਪਣੇ ਆਪ ਨੂੰ ਲਾਵਾਸ ਸਮਝਦੇ ਆ ਕਹਿੰਦੇ ਸਾਨੂੰ ਫੈਸਿਲਿਟੀਆਂ ਘਟ ਨੇ ਸਾਊਥ ਸਰੀ ਤੇ ਫਰੇਜ਼ਰ ਹਾਈਟ ਦੇ ਵਿੱਚ ਸੜਕਾਂ ਵੇਖੋ ਤੇ ਅਸੀਂ ਕਿੱਥੇ ਬੈਠੇ ਆ ਤੇ ਬਹੁਤ ਡੈਂਸ ਹੋ ਰਿਹਾ ਉਹ ਕਹਿੰਦੇ ਵੀ ਸਾਡੀਆਂ ਸੜਕਾਂ ਟੁੱਟੀਆਂ ਤੇ ਅਸੀਂ ਬਹੁਤ ਸਾਡੇ ਕਰਾਊਡ ਹੈ ਆਪਣਾ ਭਾਈਚਾਰਾ ਸਭ ਤੋਂ ਵੱਧ ਉੱਥੇ ਰਹਿੰਦਾ। ਉਹਨਾਂ ਦੇ ਸਵਾਲ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਦੇਖੋ ਆ ਆਪਣਾ ਜਿਹੜੇ ਆ ਇਸ਼ੂਸ ਹੈਗੇ ਸਟ ਕਮਿਊਨਿਟੀ ਚ ਮੈਂ ਆਪਣੇ ਮੇਅਰ ਦੇ ਸਾਹਮਣੇ ਅਸੀਂ ਰੋਡ ਲੈਵੀ ਇੰਟਰੋਡਿਊਸ ਕੀਤਾ ਸੀਗਾ। ਉਹਦੋਂ ਪਹਿਲਾਂ ਰੋਡ ਲੈਵੀ ਹੈ ਸਿਟੀ ਦੇ ਵਿੱਚ। ਉਹ ਜਦ ਲੈਵੀ ਹੈਗਾ ਹਰ ਸਾਲ ਅਸੀਂ 1.2 ਇਨਕ੍ਰੀਸ ਕਰਦੇ ਹਾਂ ਉਹ ਐਸ 2017 ਦੇ ਵਿੱਚ ਉਹ ਜਿਹੜਾ ਰੋਡ ਲੈਵੀ ਹੈਗਾ ਉਹ 16 ਡਾਲਰ 14 ਸੈਂਟ ਕਲਿੱਕ ਕਲਿੱਕ ਕਰਦੇ ਅਸੀਂ ਇਨਕਰੀਸ ਕੀਤੇ ਹੈ ਕਿ ਜਿਹੜਾ ਕਹਾ ਨਾ ਵਾਲਾ ਸਮਾ ਹੈਗਾ ਜਿਹੜਾ ਗਲੇ 10 ਸਾਲ ਸੀ ਅੱਗੇ ਜੋ ਮੈਂ ਕਾਉਂਸਲ ਤੇ ਆਨ ਸੋ ਮੈਂ ਆਪ ਦੇਖ ਰਿਹਾ ਸੀਗਾ ਦੈਟ ਮੈਂ ਸੋ ਸੋਚਿਆ ਅਸੀਂ ਕਿਸ ਤਰੀਕੇ ਨਾਲ ਆਪਾਂ ਇਹਨੂੰ ਤੱਕ ਅਸੀਂ ਜਿਹੜਾ ਰੋਡ ਇੰਪਰੂਵਮੈਂਟਸ ਕਰਨੇ ਹੈਗੇ ਅਸੀਂ ਉਹ ਉੱਥੇ ਤੇ ਲਾਏ ਹੈ ਜਾਂ ਚ ਨੇ ਹੈਗੇ ਪ੍ਰੀ ਪ੍ਰੀਵियस ਨੇ ਸੋ ਅਸੀਂ ਜਾਣਦੇ ਆ ਤੇ ਪ੍ਰਾਇੋਰਟਾਈਜ਼ੇਸ਼ਨਸ ਆਪਾਂ ਇਹ ਵੀ ਦੇਖਦੇ ਹੈਗੇ ਜਿੱਦ ਤੇ ਸਾਡੇ ਸਿਟੀ ਇਸ ਫਾਸਟ ਉਸ ਤੱਕ ਅਸੀਂ ਵੀ ਅਪਣੇ ਜਿਹੜੇ ਮੇਜਰਿਟੀ ਰੋਡਸ ਹੈਗੇ ਉਰਬੀ ਪੰਡਾਸ ਤੇ ਪਰ ਜੁਰ ਅਸੀਂ ਸਾਹਮਣੇ ਤੇ ਆ ਦੇ ਜਿਹੜਾ ਆਪਣਾ ਨਿਊਟਨ ਦੇ ਵਿੱਚ ਨਰਸਰੀ ਦੇ ਵਿੱਚ ਆ ਕਾਫੀ ਦੇਖੋ ਜਿਹੜੇ ਉਹਨੂੰ ਕਹੀ ਤਾਂ ਹੁੰਦਾ ਇਹ ਸਿਟੀ ਜਾਂ ਸਟੈਬਲਿਸ਼ ਹੋਇਆ ਸੀਗਾ ਇਹ ਸਾਰਾ ਪਹਿਲਾ ਸਟੈਬਲਿਸ਼ ਹੋਇਆ ਸੀਗੀ ਨਰਸਰੀ ਅਤੇ ਨਿਊਟਨ ਸੋ ਇਸ ਤੋਂ ਤੱਕ ਅਸੀਂ ਸਮਝਦੇ ਆ ਥੈਟ ਇਸ ਵੇਲੇ ਉਸਦੀ ਇਨਵੈਸਟਮੈਂਟ ਦੀ ਲੋੜ ਹੈ ਅਸੀਂ ਕਰਾਂਗੇ ਅੱਛਾ ਇੱਕ ਹੋਰ ਦੱਸੋ ਲੇਟੈਸਟ ਜਿਹੜੇ ਐਕਸਪੀਰੀਅੰਸ ਹੂ ਦੀ ਆ ਰਹੇ ਨੇ ਉਹ ਸੀਡਰ ਨੇ ਕੁਝ ਗਿਲਫਰਡ ਚ ਤੇ ਗਿਲਫਰਡ ਚ ਨੇ ਮੇਨ ਸਟਰੀਮ ਵਾਲੇ ਸਾਊਥ ਸਰੀ ਦੇ ਵਿੱਚ ਤੇ ਫਰੇਜ਼ਰ ਹਾਈਟਸ ਨੇ ਇਸ ਤਰ੍ਹਾਂ ਤਾਂ ਇਹ ਅਸਟਾ ਬਾਉਂਡਰੀਜ਼ ਕ੍ਰੀਏਟ ਕਰ ਲਾਂਗੇ ਕਿਹੜੇ ਪਾਸੇ ਨੂੰ ਅਸੀਂ ਚੱਲੇ ਹਾਂ ਤੁਹਾਡੇ ਦਿਮਾਗ ਦੇ ਵਿੱਚ ਅਮ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਜੀ ਦੇਖੋ ਆਈ ਥਿੰਕ ਦੈਟ ਜਿਹੜਾ ਆ ਇਸ਼ੂ ਤੁਸੀਂ ਹੁਣ ਆ ਜਿਹੜਾ ਇਹ ਰਿਸਪੌਂਸ ਦਿੱਤੀ ਹੈਗੀ ਇਮੀਗ੍ਰੇਸ਼ਨ ਦਾ ਹੈਗਾ ਇਹ ਤੁਹਾਨੂੰ ਪਤਾ ਹੈਗਾ ਜਿਹੜਾ ਫੈਡਰਲ ਸਿਸਟਮ ਹੈਗਾ ਜਿਹੜਾ ਸਟਰਲ ਗਵਰਨਮੈਂਟ ਹੈਗੀ ਆ ਉਹ ਉਹਦੀ ਅਥੋਰਟੀ ਇਸ ਤਿਆਰ ਆ ਉਹਨਾਂ ਆਪਾਂ ਇਹ ਚਾਹੁੰਦੇ ਅਸੀਂ ਜਿਹਨੇ ਸਿਟੀ ਦੇ ਜੇਰੇ ਵੀ ਕੋਈ ਕਮਿਟੀ ਨਵਾ ਪੁਰਾਣਾ ਜੇ ਕੋ ਆਨ ਅਸੀਂ ਚਾਹੁੰਦੇ ਆ ਕਾਮਰੇਟ ਕਰਨ ਉਹ ਪਰ ਦੇਖੋ ਇਸ ਵੇਲੇ ਜਿੱਥੇ ਅਕੋਮੋਡੇਸ਼ਨਸ ਹੈਗੇ ਆ ਕਰ ਸਕਦੇ ਪਰ ਜਿੱਥੇ ਆਪਣਾ ਦੇਖੋ ਇਸ ਵੇਲੇ ਜਦੋਂ ਜਲੋਂ ਪਹਿਲਾ ਕਮਿਟੀ ਆ ਰਿਹਾ ਅਸੀਂ ਇੰਡੀਆ ਤੋਂ ਪੰਜਾਬ ਤੋਂ ਕਾਫੀ ਜਦੋਂ ਸਾਡੇ ਕਮਿਊਨਿਟੀ ਰੌਸਟ ਸੈਟਲ ਹੁੰਦੇ ਸੀ ਕਿਉਂ ਹੁੰਦੇ ਸੀ ਕਿਉਂਕਿ ਤਾਂ ਕਰਦੇ ਸੀ ਕਿ ਸਾਡੇ ਕੋ ਆਫਰੰਜਵਾਨ ਸੀਗਾ ਆਪ ਨੂੰ ਬੋਲ ਸਕਦੇ ਸੀ ਅਸੀਂ ਆਪਣੀ ਕਮਿਊਨਿਟੀ ਤੇ ਆਪਣੇ ਗੁਰਦੁਆਰੇ ਜਾ ਸਕਦੇ ਹਾਂ ਲੰਗਰ ਖਾ ਸਕਦੇ ਹਾਂ ਉੱਥੇ ਜਿਹੜੇ ਤੁਸੀਂ ਸੋਚਦੇ ਹੋਗੇ ਤੁਸੀਂ ਆਪਣਾ ਕਾਵਾ ਕਮਿਊਨਿਟੀ ਸੋਚੋ ਨਾ ਫਮਾ ਤੁਸੀਂ ਆਪਣੇ ਚੀਨਿਆਂ ਸੋਚ ਕਮਿਊਨਿਟੀ ਸੋਚਦੇ ਦੇਖੋ ਇਹ ਹੀ ਇੰਪੈਕਟ ਪੈਂਦਾ ਸਾਡੇ ਸਿਟੀ ਨੂੰ ਜਿਹੜੇ ਪਹਿਲੇ ਪਾਇਨियर्स ਹੁੰਦੇ ਆ ਜਿੱਥੇ ਉਹ ਸੈਟਲ ਹੁੰਦੇ ਆ ਗਾ ਜਿਹੜੇ ਉਹਦੇ ਬਾਅਦ ਚਾੜੇ ਹੁੰਦੇ ਆ ਉਹ ਜਨਰਲੀ ਉੱਥੇ ਸੈਟਲ ਕਰਨਾ ਚਾਹੁੰਦੇ ਜੇ ਸਾਨੂੰ ਕੋਈ ਜ਼ੋਰ ਦੀ ਚੀਜ਼ ਲੋੜਿਆ ਪਾ ਗਾ ਅਸੀ ਕਰਕੇ ਬੰਦੇ ਕੋ ਸੈਲਫ ਵੀ ਲੈ ਸਕਦੇ ਸੋ ਯੂ نو ਤਰ੍ਹਾਂ ਤੱਕ ਜਿੱਦਾਂ ਹੁਣ ਸੈਰਲਮੈਂਟ ਹੋ ਰਹੀ ਆ ਸਾਡੀ ਰਿਸਪੋਨਸਿਬਿਲਟੀ ਤਾਂ ਹੈ ਹੀ ਨਗਾ ਪਰ ਦੇਖੋ ਤੁਸੀਂ ਵੀ 3 ਚ ਮੂਵ ਹੋਣਾ ਤੁਸੀਂ ਫ੍ਰੀਜ਼ਰ ਹਾਈਟਸ ਡਾਣਾ ਉਤਾਰੀ ਕੋਸ਼ੀਆ ਤੁਸੀਂ ਸਾਊਥ ਸਟੇਟ ਜਾਓ ਤੁਸੀਂ ਜਾ ਤੇ ਨੈਕਸਟ ਫੈਸਿਲਿਟੀਆਂ ਬਾਰੇ ਇਨਫਰਾਸਟ੍ਰਕਚਰ ਬਾਰੇ ਸਹੂਲਤਾਂ ਦੀ ਘਾਟ ਹੈ ਇੱਕ ਕਲਾ ਨਿਊਟਨ ਵੇਪ ਪੂਲ ਹੈ ਸਾਰੇ ਨਿਊਟਨ ਦੇ ਵਿੱਚ ਕਿੱਡੀ ਸਾਡੀ ਆ ਉੱਥੇ ਜਿਹੜੇ ਗੁੱਡ ਕੰਮ ਹੋਇਆ ਨਿਊਟਨ ਅਸਟਲਿਕ ਪਾਰਕ ਬਹੁਤ ਵਧੀਆ ਬਣਾਇਆ ਹੈ ਟਰਫ ਹੈ ਜਿਹੜਾ ਦੂਸਰੇ ਬੰਨੇ ਤੁਮਨਾ ਵਸਦੇ ਉਹ ਬਹੁਤ ਵਧੀਆ ਜਿਹੜਾ ਗੁੱਡ ਹੈ ਉਹ ਵੀ ਹੈ ਪਰ ਜਿਹੜੇ ਇਹ ਦੂਸਰੀਆਂ ਫੈਸਿਲਿਟੀ ਨੇ ਜਿਹੜਾ ਸਾਡੇ ਬਜ਼ੁਰਗਾਂ ਨੂੰ ਬਹਿਣ ਨੂੰ ਬੈਂਚ ਨੇ ਕੁਛ ਇਹ ਇਹ ਇਹ ਚੀਜ਼ਾਂ ਬਾਰੇ ਲੋਕ ਕਿਉਂਕਿ ਤੁਹਾਡੇ ਤੇ ਤੁਸੀਂ ਇੱਕ ਹੀ ਕਮਿਊਨਿਟੀ ਦੇ ਵਿੱਚੋਂ ਤੁਹਾਡੇ ਤੇ ਹੀ ਜ਼ੋਰ ਹੈ ਸਾਰਾ ਦਿਨ ਤੁਹਾਡਾ ਫੋਨ ਵੱਜਦਾ ਤੋਂ ਹੀ ਲੋਕ ਮੰਗ ਕਰਦੇ ਆ ਵੀ ਸਾਡੀ ਆ ਗੱਲ ਸਾਡੀ ਆ ਗੱਲ ਜਿਹੜੀਆਂ ਇਨ ਟਰਮਸ ਆਫ ਇਨਫਰਾਸਟ੍ਰਕਚਰ ਜਿਹੜੇ ਅਗਲੇ ਚ ਕੁਝ ਬਣ ਰਿਹਾ ਨਾ ਵੀ ਜਿਹੜਾ ਨਿਊਟਰਨ ਸਪੈਸੀਫਿਕਲੀ ਮੈਂ ਤੁਹਾਨੂੰ ਇਸ ਵੇਲੇ ਸਾਡੇ ਕਮਿਊਨਿਟੀ ਕਾਫੀ ਜੋਰ ਲੱਗਾ ਵੇਲੇ ਸਾਡੇ ਕਮਿਊਨਿਟੀ ਦੇ ਵਿੱਚ ਅ ਤੁਸੀਂ ਦੇਖੋ ਇਸ ਵੇਲੇ ਜਿਹੜੇ ਸਾਡੇ ਹੈਗੇ ਗ੍ਰਾਸ ਆਫ ਕੀ ਫੀਲਡਸ ਉਹ ਵੀ ਨੂਟਨ ਦੇ ਵਿੱਚ ਉਹ ਇਸ ਵੇਲੇ ਸਾਡੇ ਗੱਲਬਾਤ ਹੋ ਰਹੀ ਹੈ ਇਸ ਵੇਲੇ ਜਪਤ ਕੀ ਆ ਫਪਾਸ ਕਰਨ ਉੱਤੇ ਗ੍ਰਾਸ ਆਫ ਆਪਣੇ ਜਿਹੜੇ ਰੈਸਲਿੰਗ ਕਮਿਊਨਿਟੀ ਸਿਗਾ ਉਹ ਵੀ ਕਹਿੰਦੇ ਕਹਿੰਦੇ ਬਾਜੀ ਸਾਨੂੰ ਸਾਨੂੰ ਲੋੜ ਆ ਅਸੀਂ ਨੂਟਨ ਦੇ ਵਿੱਚ ਉੱਤੇ ਜਿਮ ਜਿਮ ਦਾ ਮੈਟ ਪਾਇਏ ਸੀਗੇ ਅਗੇ 2006 ਤੋਂ ਪਹਿਲਾਂ ਪਹਿਲਾਂ ਉੱਥੇ ਕੋਈ ਇਕੁਏਟਰ ਫੀਲਡ ਹੁੰਦਾ ਸੀ ਗੈਰ ਨਿਊਟਨ ਦੇਚ ਹੁਣ ਆਪਾਂ ਪੈਨ ਟਰ ਫੀਲਡ ਉੱਤੇ ਨਿਊਟਨ ਪਾਤੇ ਉੱਥੇ ਇਸ ਵੇਲੇ ਹੁਣ ਹੋਰ ਵੀ ਸਹੂਲਤਾਂ ਵੀ ਪਾਤੇ ਤੇ ਵਾਕਿੰਗ ਟ੍ਰੈਕ ਵੀ ਪਾਤਾ ਗਾਂ ਬੱਚਿਆਂ ਛੋਟੇ ਬੱਚਿਆਂ ਦੇ ਸਿਵਲਿੰਗ ਜਿਵੇਂ ਆਉਂਦੇ ਆ ਨਿਆਣੇ ਖੇਡਦੇ ਹੈਗੇ ਜੋ ਵੱਡੇ ਨਿਆਣੇ ਬਾਹਰ ਪਾਰਕਸ ਖੇਡਦੇ ਉੱਥੇ ਅਸੀਂ ਆਪਣੇ ਵਾਟਰ پارک ਵੀ ਲਾਇਆ ਹੈਗਾ ٹینس ਕੋਰਟਸ ਦੇ ਵੀ ਕਾਫੀ ਇੰਪਰੂਵਮੈਂਟਸ ਕੀਤੇ ਹੈਗੇ ਉੱਥੇ ਯਾਨੀ ਤੇ ਵਾਲੀਬॉल ਵੀ ਆਪਾਂ ਸ਼ੁਰੂ ਕੀਤੇ ਪਾਰਕਿੰਗ ਦਾ ਵੀ ਅਸੀ ਇਸ ਵੇਲੇ ਇਮਤਾਨ ਕਰੇ ਸੋ ਦੇਖੋ ਇਹ ਨਹੀਂ ਹੈਗਾ ਨਿਊਟਨ ਕਿਸੇ ਨੂੰ ਪੁਲਾਤਾ ਪਰ ਜਿਹੜਾ ਮੇਰੀ ਦੇਖਣ ਦੇ ਵਿੱਚ ਹੈਗਾ ਮੈਂ ਨਿਊਟਨ ਦੇ ਵਿੱਚ ਜਿਹੜਾ ਨਿਊਟਨ ਐਥਲੈਟਿਕ ਪਾਰਕ ਹੈਗਾ ਮੇਰਾ ਪਰਸਨਲੀ ਤੌਰ 'ਤੇ ਜੇ ਕਿਸੇ ਨਿਊਟਨ ਕੈਰਫ ਤੋਂ ਤੁਸੀਂ ਕੀ ਕੰਪਲਿਸ਼ ਕੀਤਾ ਤੁਸੀਂ ਦੇ ਵਿੱਚ ਮੈਂ ਹੰਕਾਰ ਸਿੱਕੇ ਨੂੰ ਕਹਿੰਦਾ ਜਿਹੜਾ ਮੈਂ ਨਿਊਟਨ ਪਾਰਕ ਦੇ ਵਿੱਚ ਜੇ ਜੋ ਜੋ ਕੰਡੀਸ਼ਨ ਸੀਗਾ ਮੇਰੇ ਆਉਣ ਤੋਂ ਪਹਿਲਾਂ ਜੋ ਹੁਣ ਜਿੱਥੇ ਤੱਕ ਹੁਣ ਪਹੁੰਚਿਆ ਮੈਂ ਕਾਫੀ ਖੁਸ਼ ਹਾਂ इवन ਨਿਊਟਨ ਐਥਲੈਟਿਕ ਪਾਰਕ ਸਟੇਸ ਤੇ ਵੇਲੇ ਸਾਡਾ ਹੁਣ ਕੰਸਟਰਕਸ਼ਨ ਸ਼ੁਰੂ ਹੋਣ ਲੱਗਾ ਸੀ ਸੀਨੀਅਰਜ਼ ਲਈ ਉਥੇ ਰੂਮ ਬਰਾ ਰਹੇ ਉਥੇ ਕਨਵਰਟ ਕਰਨ ਲੱਗੇ ਆਂ ਗਾਂਹ ਦੇ ਜਿਹੜਾ ਆਪਾਂ ਹੁਣ ਹੋਰ ਵੀ ਰੂਮ ਬਰਾ ਰਹੇ ਆ ਤੇ ਕ੍ਰਿਕਟ ਫੀਲਡ ਵੀ ਦੋ ਪੈਣ ਲੱਗਿਆ ਜਿਹੜਾ ਨੌਰਥ ਸਾਈਡ ਆਫ ਨਿਊਟਰਨ ਅਫਲਰਿਕ ਪਾਰਕ ਦੇ ਵਿੱਚ ਮੇਰੇ ਖਿਆਲ ਚਾਰ ਮਹੀਨੇ ਦੌਰ ਕੀ ਲਾਇਸੈਂਸ ਗ੍ਰੇਨਜ ਸਾਰਾ ਕਰਨ ਉਹ ਬੈਸਟ ਸੌਕਰ ਫੀਲਡ ਇਨ ਦੀ British Columbia if not in the in in the lower mainland of northern canada so yes ta tak deko je note ne investments bara rahe asi bara rahe uh, haali haali bara rahe but this e bhi sochna chahida ek deko je jo koi investments karne hai ki infrastructure de we need money and as well ajra sada taxs tusi e bhi dekho sada je de taxs ya city de sade third lowest taxs hege a sare region de vich sir ਦੋ ਸ਼ਹਿਰ ਹੈਗੇ ਇੱਕ ਇੱਕ ਹੈਗਾ ਪਿਟ ਇੱਕ ਹੈਗਾ ਲੈਂਗਰਲੂ ਸਿਟੀ ਤੁਸੀਂ ਇਹ ਦੇਖੋ ਇਹਨਾਂ ਦਾ ਕੀ ਇਹਨਾਂ ਦਾ ਕਮਿਊਨਿਟੀ ਦੇ ਕੀ ਸਾਈਜ਼ ਹੈ ਸਾਡਾ ਕਮਿਊਨਿਟੀ ਕੀ ਸਾਈਜ਼ ਹੈ ਸਾਡੇ ਡਿਮਾਂਡ ਕੀ ਆ ਸੋ ਇਸ ਵੇਲੇ ਜਿਹੜੇ ਅਸੀਂ ਇਨਫਰਾਸਟ੍ਰਕਚਰ ਇਨਵੈਸਟਮੈਂਟਸ ਬਰਾੜੇ ਯੂ ਇਸ ਵੇਲੇ ਇੱਕ ਅਸੀਂ ਨਿਊਟਨ ਦੇ ਵਿੱਚ ਤੁਹਾਡੀ ਗਿਲਫਰਡ ਵਿੱਚ ਅਸੀਂ ਪੂਲ ਖੁੱਲ੍ਹਿਆ ਸੀਗਾ ਆਲਮੋਸਟ 45 ਮਿਲੀਅਨ ਡਾਲਰ ਅਸੀਂ ਉੱਥੇ ਲਾਇਆ ਪੂਲ ਤੇ ਸਿਰਫ ਕੰਸਟਰਕਸ਼ਨ ਕਾਸਟ ਤੇ ਇੱਕ ਜਿਹੜਾ ਸਾਊਥ ਰੇਜ ਪੂਲ ਰਾਇਆ ਉਥੇ ਰਮ 65 ਉਹ ਵੀ ਇਨਫਰਾਸਟ੍ਰਕਚਰ ਬਾਕੀ 65 ਮਿਲੀਅਨ ਦਾ ਪਾਇਆ ਸੀਗਾ ਪੋਨੈਸ ਵਿਲੇ ਜਿਹੜਾ ਸੀ ਆਪਣੇ ਆਈਸਿੰਗਸ ਪਾਰ ਉਹ ਵੀ ਬਰਾਂ 30 ਮਿਲੀਅਨ ਡਾਲਰ ਖਰਚਣ ਲਗੇ 30 ਮਿਲੀਅਨ ਡਾਲਰ ਇਨਵੈਸਟਮੈਂਟ ਕਰਨ ਲਗੇ ਬਿਜਵਿਉ ਦੇ ਵਿੱਚ 30 ਮਿਲੀਅਨ ਡਾਲਰ ਇਨਵੈਸਟਮੈਂਟ ਕਰ ਲਏਗੇ ਕਲੋਵਰ ਡੀਲ ਵਿੱਚ ਸੋ ਆਪਾਂ ਕਾਫੀ ਸਿਗਨੀਫੀਕੈਂਟ ਇਨਵੈਸਟਮੈਂਟਸ ਕਰ ਰਹੇ ਇਸ ਪਲੇ ਜਿਹੜਾ ਪੁਰਾਣਾ ਆਪਣਾ ਜਿਲ੍ਹਾ ਪੁਰਾਣਾ ਸਾਡਾ ਲੀਡਰਸ਼ਿਪ ਸੀਗਾ 10-12 ਸਾਲ ਪਹਿਲਾਂ ਉਹ ओरिजिनल ਲੀਡਰਸ਼ਿਪ ਉਹ ਵਾਲਾ ਇਨਵੈਸਟਮੈਂਟਸ ਨਹੀਂ ਵਿਦ ਦਾ ਲਿਸਨਰਸ ਐਂਡ ਸਿਟੀਜ਼ਨ ਆਫ ਫਰੀ ਉਹ ਕਦੇ ਕਦੇ ਵੰਡਨ ਲੱਗਦਾ ਉਹਨਾਂ ਨੂੰ ਕਿ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਥੈਂਕ ਯੂ ਫਾਰ ਯੂਅਰ ਐਂਡ ਮੇਅਰਸ ਟਾਈਮ ਵੀ ਵਿਲ ਟਾਕ ਥੈਂਕਸ ਤੇ ਪੰਜਾਬ ਦੇ ਪਾਣੀਆਂ ਦੇ ਬਾਰੇ ਜਿੱਥੇ ਇੱਕ ਸੋਚ ਹੈ ਜਿਵੇਂ ਹਰ ਕੋਈ ਸੋਚਦਾ ਇੱਕ ਅੱਧਾ ਭਰਿਆ ਗਲਾਸ ਵੇਖਦਾ ਖਾਲੀ ਵੇਖਦਾ ਸੰਦੀਪ ਸਿੰਘ ਨੇ ਫਾਇਦਲ ਆਫ ਵਧੀਆ ਪੰਜਾਬ ਦੇ ਪਾਣੀਆਂ ਤੇ ਬਣਾਈ ਜਿਸ ਦੇ ਵਿੱਚ ਉਹਨਾਂ ਦੇ ਨਾਲ ਜਸਵਿੰਦਰ ਸਿੰਘ ਬਦੇਸ਼ਿਆ ਸਮਿਊਥ ਸ਼ਰਮਾ ਜੀ ਨੇ ਕੰਮ ਕੀਤਾ ਰਲ ਪੰਜਾਬ ਵਾਟਰ ਕ੍ਰਾਈਸਿਸ ਜਸਵਿੰਦਰ ਸਿੰਘ ਬਦੇਸ਼ਿਆ ਇੱਕ ਬਹੁਤ ਵਧੀਆ ਫੇਸਬੁੱਕ ਦਾ ਪੇਜ ਜਿਸ ਨੂੰ ਰਨ ਕਰਦਾ ਜਿੱਥੇ ਸਾਰੀਆਂ ਬੇਰਬੇ ਸਾਹਿਤ ਸਾਰੀਆਂ ਚੀਜ਼ਾਂ ਪੰਜਾਬ ਦੇ ਪਾਣੀਆਂ ਦੇ ਬਾਰੇ ਤੇ ਆਪਾਂ ਹਰ ਰੋਜ਼ ਹਰ ਹਫਤੇ ਇੱਕ ਜਾਂ ਦੋ ਵਾਰ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਆ ਵੀ ਕਿੱਥੇ ਆਪਾਂ ਖੜੇ ਆ ਮੈਂ ਕੋਸ਼ਿਸ਼ ਕਰਾਂਗਾ ਇਹਨਾਂ ਤੋਂ ਆਉਣ ਦੋ ਹਫਤੇ ਸੋਮਵਾਰ ਨੂੰ ਸਮਾਂ ਲੈ ਕੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਖਾਸ ਤੌਰ ਤੇ ਪਾਣੀਆਂ ਦੇ ਬਾਰੇ ਗੱਲਬਾਤ ਕੀਤੀ ਜਾਵੇ ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਪான்ਸਰ ਦੱਸਦੇ ਆ ਜਿਸ ਦੇ ਵਿੱਚ ਮਹਿਕ ਰੈਸਟੋਰੈਂਟ 94 ਐਵੈਨਿਊ ਤੇ ਸਕਾਟ ਚਰਨਮੇ ਤੇ ਸਕਾਟ ਤੇ ਨਮੀ ਮੈਨੇਜਮੈਂਟ ਥੱਲੇ ਇਹ ਪੁਰਾਣਾ ਰੈਸਟੋਰੈਂਟ ਮਹਿਕ ਉੱਥੇ ਉਹ ਸ਼ੁਰੂ ਹੋਇਆ 675853331 ਡਾਈਨ ਆਟ ਔਰ ਡਾਈਨ ਇਨ ਉੱਥੇ ਬੈਠ ਕੇ ਖਾਣਾ ਖਾ ਸਕਦੇ ਹੋ ਮਹਿਕ ਰੈਸਟੋਰੈਂਟ ਬਹੁਤ ਵੱਡਾ ਨਾਂ ਸੀ ਅੱਜ ਤੋਂ 8-10 ਸਾਲ ਪਹਿਲਾਂ ਲੋਕ ਮਹਿਕ ਚ ਖਾਣਾ ਖਾਣ ਜਾਂਦੇ ਸੀ ਹੁਣ ਨਵੀਂ ਮੈਨੇਜਮੈਂਟ ਥੱਲੇ ਆਇਆ ਏਟੀਏ ট্রাক ਬੋਡੀ ਐਂਡ ਪੇਂਟ 60494010 ਸੀਆਈਸੀਬੀਸੀਡੀ ਐਕਸਪ੍ਰੈਸ ਸ਼ਾਪ ਤੇ ਐਕਸਪ੍ਰੈਸ ਗਲਾਸ ਸ਼ਾਪ ਪਰ ਰੱਖਣ ਟ੍ਰੇਲਰ ਤੇ ਬੋਡੀ ਵਰਕ ਦਾ ਕੰਮ ਹੈ ਵੱਡੀ ਫੈਸਿਲਿਟੀ ਚ ਵੱਡੇ ਟਰੱਕ ਟ੍ਰੇਲਰ ਡੰਪ ਟਰੱਕ ਬੱਸਾਂ ਲਈ ਮਜੂਦ ਖੜ ਜਾਂਦੇ ਤੇ ਬੋਡੀ ਵਰਕ ਤੇ ਪੇਂਟ ਦਾ ਕੰਮ ਤੁਸੀਂ ਕਰਾ ਸਕਦੇ ਹੋ 6049401080 ਅਮਨ ਖੜਕੜ ਮੌਰਗੇਜ ਦੇ ਵਿੱਚ ਵੱਡਾ ਨੰਬਰ 6048251314 ਸਰੀ ਐਬਸਫੋਰਡ ਵੈਨਕੂਵਰ ਚ ਦਫ਼ਤਰ ਕੰਸਟਰਕਸ਼ਨ ਰੈ residențial ਕਮਰਸ਼ੀਅਲ ਮਾਰਗੇਜ ਲੈਣੀ ਹੈ ਤੇ ਜਾਂ ਫਿਰ ਲਾਈਨ ਆਫ ਕ੍ਰੈਡਿਟ ਲੈਣੀ ਹੈ ਲੋਨ ਇਕੱਠਾ ਕਰਨਾ ਕੋਈ ਬਿਲਡਰ ਲਾਇਸੈਂਸ ਚਾਹੀਦਾ ਕੋਈ ਰੀਅਲਟੇ ਚਾਹੀਦਾ ਵਨ ਸਟਾਪ ਸ਼ਾਪਿੰਗ ਹੈ ਅਮਨ ਖੜਕੜ .ca aman@aman.ca 6008251314 ICICI ਦਾ ਕੇਸ ਲੜਨਾ ਤਾਂ ਧਾਮੀ ਨਾਰਿੰਗ ਦੋ ਵਕੀਲਾਂ ਦੇ ਨਾਲ ਸ਼ੁਰੂ ਕੀਤੀ ਕੰਪਨੀ ਧਾਮੀ ਨਾਰਿੰਗ ਐਂਡ ਕੰਪਨੀ ਅੱਠ ਵਕੀਲ ਨੇ ਹੁਣ 60086416131 ਸਰੀ ਤੇ ਅਬਸਪੋਰਟ ਚ ਦਫ਼ਤਰ ਹੈ ICICI ਦੇ ਕੇਸ ਲੜਦੇ ਆ ਤੇ ਜਿੱਤਦੇ ਵੀ ਆ ਅਮਰੀਕ ਲਾਰਿੰਗ ਰਾਜ ਕਾਮੀ 60486461 31 ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਸੀ ਸਰਾਰ ਤੇ ਉਸ ਤੋਂ ਬਾਅਦ ਜੋ ਅਸ ਗ੍ਰੀਪ ਸਿੰਘ ਨਾਲ ਨੇ ਪੰਜਾਬ ਦੇ ਪਾਣੀਆਂ ਦੀ ਗੱਲਬਾਤ ਵਿੱਚ ਨਾ ਦਾ ਤੁਹਾਡਾ ਸਵਾਗਤ ਹੈ ਜੀ ਸਤਿ ਅਕਾਲ ਧੰਨਵਾਦ ਸਿੰਘ ਜੀ ਤੁਹਾਡੇ ਤੋਂ ਸ਼ੁਰੂ ਕਰ ਪਹਿਲਾਂ ਤਾਂ ਪਹਿਲਾਂ ਤੁਹਾਡੀ ਉਸ ਡਾਕੂਮੈਂਟਰੀ ਬਾਰੇ ਥੋੜਾ ਜਿਹਾ ਅ ਦੱਸਿਓ ਜਿਹੜੀ ਆਪਾਂ ਬਣਾਈ ਕਿਉਂਕਿ ਕਰਨ ਦਾ ਫਾਇਦਾ ਤਾਂ ਹੀ ਹੈ ਜੇ ਉਸ ਨੂੰ ਕੋਈ ਵੇਖਦਾ ਜਾਂ ਸੁਣਦਾ ਗੱਲਾਂ ਮੁੱਕ ਜਾਂਦੀਆਂ ਜੇ ਪਤਾ ਲੱਗੇ ਕੋਈ ਲਿਸਨਰ ਹੈ ਨਹੀਂ ਬਾਹਰ ਮੈਨੂੰ ਪਤਾ ਹੈ ਸਿਰਸੁੱਟ ਕੇ ਕੰਮ ਕਰਨ ਵਾਲੇ ਨੇ ਇੱਕ ਦਿਨ ਦਾ ਕੰਮ ਨਹੀਂ ਕੰਟੀਨਿਊਸ ਇਹ ਲਗਾਤਾਰ ਇੱਕ ਅਵੇਅਰਨੈਸ ਦੀ ਸਾਕਰਤਾ ਦੀ ਲਹਿਰ ਹੈ ਜਿਹਦੇ ਤੇ ਕੰਮ ਕਰਨਾ ਪੈਂਦਾ ਬਰੇ ਵਧੀ ਤੁਹਾਡਾ ਆਪਣਾ ਮਨ ਉਸ ਫਿਲਮ ਬਾਰੇ ਬਹੁਤ ਮਿਹਨਤ ਨਾਲ ਤੁਸੀਂ ਬਣਾਈ ਕਿਸ ਤਰ੍ਹਾਂ ਹੰਗਾਰਾ ਆਇਆ ਕਹੇ ਜੇ ਲੋਕਾਂ ਦੇ ਸੁਝਾਅ ਆਏ ਉਸ ਬਾਰੇ ਥੋੜਾ ਬਤ ਦੱਸਿਓ ਹਾਂ ਜੀ ਹਰਜੀਤ ਸਿੰਘ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਇਸ ਇਸ਼ੂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਦਾ ਆਪ ਦਾ ਜਿਹੜਾ ਯੋਗਦਾਨ ਪਾ ਰਹੇ ਹੋ ਥੈਂਕ ਯੂ ਜਿੱਥੇ ਤੱਕ ਫਿਲਮ ਦਾ ਸਵਾਲ ਆ ਕਿਉਂਕਿ ਫਿਲਮ ਇਹ ਕੋਈ ਕਮਰਸ਼ੀਅਲ ਪ੍ਰੋਜੈਕਟ ਤਾਂ ਨਹੀਂ ਸੀ ਇਹਦਾ ਇੱਕੋ ਇੱਕ ਮੰਤਵ ਸੀਗਾ ਕਿ ਜਿਹੜਾ ਪਾਣੀਆਂ ਦਾ ਇਸ਼ੂ ਆ ਇਹ ਕੱਲਾ ਪਾਣੀਆਂ ਦਾ ਨਹੀਂ ਪੰਜਾਬ ਦੀ ਜਵਾਨੀ ਦੇ ਘਾਣ ਦਾ ਇਸ਼ੂ ਵੀ ਇਹ ਨਾਲ ਹੀ ਆ ਕਿਉਂਕਿ ਜਿਹੜਾ ਸੰਤਾਪ ਪੰਜਾਬ ਨੇ ਭੋਗਿਆ ਉਹਦੀ ਜੜ ਇਹ ਆ ਸੋ ਇਸ ਜਿਹੜੀ ਪ੍ਰੋਬਲਮ ਨੂੰ ਜਿੱਦਿ ਕੇ ਇੱਕ ਬੜੀ ਖੂਨੀ ਹਿਸਟਰੀ ਆ ਤੇ ਜਿਹੜਾ ਅਪ ਬੈਕ ਵੀ ਬੜਾ ਖੂਨੀ ਦੱਸਦਾ ਉਹਦੇ ਬਾਰੇ ਸਮਝਿਆ ਜਾਵੇ ਉਹਦੇ ਬਾਰੇ ਜਾਣਿਆ ਜਾਵੇ ਤਾਂ ਕਿ ਅਸੀਂ ਜੋ ਕੁਝ ਹੰਡਾ ਚੁੱਕੇ ਆ ਤੇ ਜੋ ਕੁਝ ਅਸੀਂ ਹੰਡਾਣਾ ਇਹਦੇ ਕਰਕੇ ਉਹਦੇ ਤੇ ਅਸੀਂ ਜਾਗਰਤ ਹੋਈਏ ਇਹ ਇਸ ਮਿਸ਼ਨ ਨੂੰ ਲੈ ਕੇ ਫ਼ਿਲਮ ਸ਼ੁਰੂ ਕੀਤੀ ਸੀ ਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਿੰਨੇ ਵੀ ਹੁਣ ਤੱਕ ਦਾ ਜਿੰਨੇ ਵੀਰਾਂ ਪੈਣਾ ਨੇ ਦੇਖਿਆ ਜਾਂ ਕਾਫੀ ਹੱਦ ਤੱਕ ਉਹਨਾਂ ਲਾਈਨਾਂ ਤੇ ਹੀ ਆ ਉਸ ਮਿਸ਼ਨ ਦੀ ਅਕੰਪਲਿਸ਼ ਵੱਲ ਨੂੰ ਆ ਭਾਵੇਂ ਕਿ ਹਲੇ ਬਹੁਤ ਲੰਬਾ ਪੈੜਾ ਜਾਣ ਦੀ ਲੋੜ ਆ ਪਰ ਬਾਰੇ ਕੀ ਮੰਤਵ ਆ ਤੁਹਾਡਾ ਕੀ ਹੋਣ ਜਾ ਰਿਹਾ ਪੰਜਾਬ ਸਿਆਚ ਪਾਸ ਤੋਂ ਪਤਨ ਨੂੰ ਕੋਈ ਛੋਪਿਆ ਨਹੀਂ ਹੋਇਆ ਜਿਹੜਾ 1984 ਤੋਂ ਲੈ ਕੇ ਜੋ ਘਾਣ ਪੰਜਾਬ ਦਾ ਹੋਇਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ ਜੀ ਕਿਸੇ ਨੂੰ ਅਸੀਂ ਵਿਟਨੈਸ ਕੀਤਾ ਕੋਈ ਅਸੀਂ ਵਿਟਨੈਸ ਨਹੀਂ ਕੀਤਾ ਪਰ ਜਿਹੜਾ ਪੁਪੇਖਾ ਉਹ ਮੇਰੇ ਹਿਸਾਬ ਨਾਲ ਉਦੋਂ ਵੀ ਭਿਆਨਕ ਆ ਉਹ ਕਰਕੇ ਕਿਉਂਕਿ ਜਿਹੜੀ ਦੋ ਤਰੀਕੇ ਦੇ ਘਾਣ ਹੁੰਦੇ ਆ ਪੋਲੀਟਿਕਲ ਜੈਨੋਸਾਈਡ ਤੇ ਇਕ ਇਹ এনवायरमेंटਲ ਜੇਨੋਸਾਈਡ ਹੁਣ ਜਿਹੜਾ ਪੰਜਾਬ ਸੇਸ ਕਰਨ ਜਾ ਰਿਹਾ ਇਸ ਪਾਣੀ ਕਰਕੇ ਜਿਹੜੀ ਪੰਜਾਬ ਕਰਕੇ ਉਹ ਪੰਜਾਬ ਦੀ ਧਰਤੀ ਦਾ ਉਜਾੜਾ ਕਿਉਂਕਿ ਪੰਜਾਬ ਹੋਇਆ ਪਰ ਪੰਜਾਬ ਕੋਲ ਇੱਕ ਅਲਟਰਨੇਟਿਵ ਸੀ ਜਿਹੜਾ ਕਿ ਬਹੁਤ ਐਕਸਪੈਂਸਿਵ ਸੀ ਜਿਹਦੇ ਬਾਰੇ ਨਾ ਪੰਜਾਬੀਆਂ ਨੇ ਸੋਚਿਆ ਨਾ ਸਾਨੂੰ ਇਸ ਦਾ ਅੰਦਾਜ਼ਾ ਸੀ ਪਰ ਸਕੇਲ ਸੀ ਅਸੀਂ ਉਹਦੇ ਬਦਲ ਵਿੱਚ ਧਰਤੀ ਖੱਲਿਓਂ ਪਾਣੀ ਕੱਢਣ ਲੱਗ ਗਏ ਸੀ ਪਰ ਅੱਜ ਅਸੀਂ ਉਹ ਜਿਹੜਾ ਅਲਟਰਨੇਟਿਵ ਸੋਰਸ ਸੀ ਉਹ ਮੁੱਕਣ ਦੇ ਕਿਨਾਰੇ ਤੇ ਖੜਾ ਬਿਲਕੁਲ ਉਦੋਂ ਬਾਅਦ ਜਿਹੜਾ ਰਹਿੰਦਾ ਹੁੰਦਾ ਪਾਣੀ ਆ ਉਹਨੂੰ ਲੁਟਣ ਦੀ ਪਲਾਨਿੰਗ ਤੇ ਕੰਮ ਸ਼ੁਰੂ ਹੋ ਚੁੱਕਿਆ ਕੱਲੀ ਪਲਾਨਿੰਗ ਨਹੀਂ ਉੱਤੇ ਵਰਕ ਸ਼ੁਰੂ ਹੋ ਚੁੱਕਿਆ ਸੋ ਉਹ ਦੋਨੇ ਸਿਚੁਏਸ਼ਨ ਦੇ ਵਿੱਚ ਪੰਜਾਬ ਦਾ ਜਿਹੜਾ ਇੱਕੋ ਇੱਕ ਇੰਡਸਟਰੀ ਆ ਐਗਰੀਕਲਚਰ ਉਹ ਸਾਡੀ ਬਰਬਾਦੀ ਦੇ ਕੰਡੇ ਤੇ ਆ ਪੰਜਾਬ ਰੇਗਿਸਤਾਨ ਹੋਣ ਦੇ ਕਿਨਾਰੇ ਤੇ ਆ ਤੇ ਇੱਕ ਮਾਸ ਮਾਈਗ੍ਰੇਸ਼ਨ ਜਾ ਇੱਕ ਰੈਟਾਲੀਏਸ਼ਨ ਤੋਂ ਬਿਨਾ ਕੋਈ ਰਾਹ ਨਹੀਂ ਬਚ ਜਾਂਦਾ ਪੰਜਾਬੀਆਂ ਕੋਲ ਜਦੋਂ ਤੁਹਾਡੀ ਇੰਡਸਟਰੀ ਜੀਤੇ ਤੇ ਤੁਸੀਂ ਜਿਉਂਦੇ ਹੋ ਕੱਲਾ ਕਿਸਾਨ ਨਹੀਂ ਈਵਨ ਕਿ ਜਿਹੜੀ ਛੋਟੀ ਆਪਣਾ ਬਿਜ਼ਨਸ ਆ ਸੰਤਤਾ ਸਾਡੇ ਵੀਰ ਬੈਠੇ ਵਪਾਰ ਕਰਦੇ ਨੇ ਪਰ ਉਹ ਇਕਨੋਮੀ ਹਿਸਾਬ ਨਾਲ ਫਲੋ ਖੇਤੀ ਦੇ ਆਲੇ-ਦਾਲੇ ਆ ਉਹ ਜਿਹੜੀ ਬਰਬਾਦੀ ਆ ਪੰਜਾਬ ਦਾ ਜਿਹੜਾ ਉਜਾੜਾ ਕਿਉਂਕਿ ਅਸੀਂ ਉਹਦੇ ਪਾਰਲਲ ਐਗਜ਼ੈਂਪਲ ਆ ਚਾਹੇ ਚੀਨ ਚਾਹੇ ਰਾਂਚ ਦੇਖ ਰਹੇ ਹਾਂ ਮਿਲੀਅਨਾਂ ਬੰਦੇ ਮਾਈਗ੍ਰੇਟ ਕੀਤੇ ਜਦੋਂ ਇੱਕਦਮ ਇੰਡਸਟਰੀ ਪਾਣੀ ਕਰਕੇ ਕਲਾਪਸ ਹੋਈ ਆ ਸੋ ਉਹ ਇੱਕ ਪੰਜਾਬ ਦਾ ਖੂਨੀ ਪਵਿੱਖ ਦੱਸ ਰਿਹਾ ਜਿਹੜਾ ਕਿ ਉਦੋਂ ਵੀ ਜਿਆਦਾ ਡਰਾਉਣਾ ਤੇ ਭਿਆਨਕ ਆ ਜਸਵੰਦਰ ਸਿੰਘ ਵਿਦੇਸ਼ਾ ਤੋਂ ਮੈਂ ਬਿੱਟ ਭੂਮੀ ਇਸ ਪੰਜਾਬ ਦੇ ਪਾਣੀਆਂ ਦੀ ਲੁੱਟ ਦੀ ਲੰਮਾਗਾ ਉਦੋਂ ਪਹਿਲਾਂ ਸ਼੍ਰੀ ਸ਼ਰਮਾ ਜੀ ਤੋਂ ਇਸ ਦੇ ਸੁਖਦੀਪ ਸਿੰਘ ਉਹਨਾਂ ਦੀ ਗੱਲ ਦੇ ਨਾਲ ਕੋਈ ਗੱਲ ਮੈਂ ਪੁੱਛਣੀ ਚਾਹੁੰਦਾ ਵੀ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਦਿ ਕੋਰ ਜੀ ਜਿਹੜਾ ਪਾਣੀ ਹੈ ਨਾ ਜੀ ਇਹ ਪਹਿਲੀ ਗੱਲ ਤੇ ਸਮਝਣ ਦੀ ਲੋੜ ਆ ਕਿ ਪਾਣੀ ਦੇ ਨਾਲ ਹੀ ਜੀਵਨ ਚੱਲਦਾ ਜੀ ਜੀ ਆਮ ਤੌਰ ਤੇ ਜਰੂਰ ਸਾਡੇ ਹੁੰਦੀ ਘਾਟ ਦਾ ਪਤਾ ਹੀ ਨਹੀਂ ਹੁੰਦਾ ਹਮ ਤੁਸੀਂ ਉਹ ਚਲਾਈ ਜਾਂਦੇ ਆ ਪਰ ਜਿੱਥੇ ਜਿਵੇਂ ਸੁਦੀਪ ਜੀ ਨੇ ਦੱਸਿਆ ਕਿ ਜਿਹੜੀ ਪੰਜਾਬ ਦੀ ਇਕਨੋਮੀ ਆ ਉਹ ਐਗਰੀਕਲਚਰ ਬੇਸਡ ਇਕਨੋਮੀ ਐਗਰੀਕਲਚਰ ਨੂੰ ਪਾਣੀ ਦੀ ਲੋੜ ਆ ਉਹ ਜਿਹੜੀ ਲੋੜ ਇਸ ਟਾਈਮ ਜਿਹੜੀ ਇਹਨਾਂ ਨੇ ਦੱਸਿਆ ਪੂਰੀ ਹੋ ਰਹੀ ਆ ਉਹ ਕੁਦਰਤ ਦੀ ਧਰਤੀ ਨੂੰ ਉਹ ਹੈਗਾ ਪਾਣੀ ਆਪਣਾ ਨਾਂ ਪੰਜਾਬ ਤੇ ਨਾ ਪਾਣੀ ਆ ਸੁੱਕਿਆ ਹੈ ਜਿਹੜਾ ਰਿਸੋਰਸ ਹੈਗਾ ਆ ਜੇਕਰ ਯੂਸਸ ਪੰਜਾਬ ਦੇ ਕਿਸਾਨ ਪਲੈਨਿੰਗ ਨਾਲ ਸਰਕਾਰ ਦੀ ਪਲੈਨਿੰਗ ਦੇ ਨਾਲ ਕਰਦੇ ਹੁੰਦੇ ਜਾਂ ਹੁਣ ਕਰਨੀ ਸ਼ੁਰੂ ਕਰ ਦੇਣ ਹੁਣ ਵੀ ਕਰਦੇ ਹੁਣ ਵੀ ਕਰਦੇ ਤਾਂ ਸਾਡਾ ਕੁਝ ਬਚਾ ਹੋ ਸਕਦਾ ਜਿੰਨਾ ਅਸੀਂ ਪਾਣੀ ਯੂਜ਼ ਕਰਦੇ ਹਾਂ ਹਰ ਸਾਲ ਉਹਦੇ ਨਾਲੋਂ ਰੀਚਾਰਜ ਨਹੀਂ ਹੋ ਰਿਹਾ ਨਾਲ ਬਣਿਆ ਨੇ ਪਾਣੀ ਦੀ ਸ੍ਰੋਤ ਅੱਜ ਤੁਸੀਂ ਕਿੱਦਾਂ ਕਰਦੇ ਹੋ ਪਰ ਸਾਨੂੰ ਉੱਥੇ ਕਿਸਾਨਾਂ ਨੂੰ ਵੀ ਖਾਸ ਕਰਕੇ ਆਮ ਬੰਦਿਆਂ ਨੇ ਜਿਹੜੇ ਸ਼ਹਿਰਾਂ 'ਚ ਬੈਠੇ ਆ ਉਹਨਾਂ ਨੂੰ ਇਹ ਵੀ ਘਾਟ ਦੀ ਪਰ ਸਰਕਾਰਾਂ ਨੂੰ ਪਤਾ ਔਰ ਇਸੇ ਕਰਕੇ ਜਿਵੇਂ ਫਰੀਦ ਸਿੰਘ ਨੇ ਦੱਸਿਆ ਐਜੀਟੇਸ਼ਨ ਜਿਹੜੇ ਆ ਤੋਂ ਬਾਅਦ ਹੀ ਸਟਾਰਟ ਸੀ ਇਹ ਧੱਕੇ ਦੇ ਖਿਲਾਫ ਸੰਵਿਧਾਨ ਦੇ ਪਿਛਲੇ ਸਾਲ ਮੈਂ ਇੱਥੇ ਹੀ ਆਪਣੇ ਸੁਣਨ ਵਾਲਿਆਂ ਨੂੰ ਕਰਨਾਟਕਾ ਦੇ ਵਿੱਚ ਆ ਇਸੇ 2016 ਚ ਕਿੰਨਾ ਰੌਲਾ ਪਿਆ ਲੋਕਾਂ ਨੇ ਉੱਥੇ ਬਸਤਾ ਲਈ ਮੈਂ ਨਹੀਂ ਕਹਦਾ ਵੀ ਇਹ ਕੰਮ ਕਰਨੇ ਚਾਹੀਦੇ ਆ ਪਰ ਉਹਨਾਂ ਨੇ ਪਾਣੀ ਦੇ ਵਾਸਤੇ ਕੀ ਕੁਝ ਨਹੀਂ ਕੀਤਾ ਤੇ ਫੇਵੀ ਸੁਪਰੀਮ ਕੋਰਟ ਨੇ ਅਲਟੀਮੇਟਲੀ ਵਿੱਚ ਆ ਕੇ ਕਹਿਤਾ ਕਿ ਵੀ ਤੇ ਐਜੀਟੇਸ਼ਨ ਨੂੰ ਤੁਸੀਂ ਕਿੰਨੇ ਕੁ ਬੰਦੇ ਮਰ ਗਏ ਹੋਇਆ ਬੜਾ ਬਚਾ ਕੀਤਾ ਉਹਨਾਂ ਨੇ ਮੈਂ ਕਿ ਖੁਸ਼ ਆਂ ਵੀ ਚਲੋ ਜੇ ਐਜੀਟੇਸ਼ਨ ਜੇ ਸੇਮ ਗੱਲ ਹੀ ਆਪਾਂ ਪੰਜਾਬ ਤੇ ਲਾਗੂ ਕਰ ਲੇਤੇ ਹਜ਼ਾਰਾਂ ਬੰਦੇ ਨੇ ਮਾਰ ਦੇਣਗੇ ਪਾਣੀ ਬਿਲਕੁਲ ਇਹ ਜਿਹੜੀਆਂ ਡਬਲ ਸਟੈਂਡਰਡ ਕਨਸਟੀਟਿਊਸ਼ਨਲੀ ਡਬਲ ਸੈਕੰਡ ਕਲਾਸ ਸਿਟੀਜ਼ਨ ਦਾ ਇੰਟਰਵਿਊ ਪੰਜਾਬੀ ਉਹਨਾਂ ਦੇ ਰਾਈਟਸ ਖਾਤਰ ਲੜਾ ਹੋ ਰਿਹਾ ਉਹਦੇ ਬਾਰੇ ਜੇਕਰ ਆਪਾਂ ਨਹੀਂ ਜਾਗਾਂਗੇ ਤੇ ਕੱਲ ਉੱਥੋਂ ਜਿਵੇਂ ਸੁਖਦੀਪ ਸਿੰਘ ਨੇ ਕਿਹਾ ਮਾਸ ਮਾਈਗ੍ਰੇਸ਼ਨ ਜਾਣਾ ਕਿੱਥੇ ਆ ਤੋਂ ਬਾਅਦ ਮਾਸ ਮਾਈਗ੍ਰੇਸ਼ਨ ਕਰਕੇ ਮਸਾ ਛੋਟੇ ਜਿਹੇ ਪੰਜਾਬ ਜਾਗੜੇ ਬਿਲਕੁਲ ਹੁਣ ਕਿੱਥੇ ਜਾਣਾ ਆ ਤੁਸੀਂ ਥੋੜੇ ਹੋਰ ਦੇਖੜ ਦੇ ਜਲ ਜੁੱਤ ਕਹਿ ਨਹੀਂ ਬਿਲਕੁਲ ਇੱਥੋਂ ਹੁਣ ਇਹਨਾਂ ਚੀਜ਼ਾਂ ਤੋਂ ਪੰਜਾਬੀ ਜਿਹੜੇ ਖਾਨੀ ਬੰਦ ਕਰਨੀ ਚਾਹੀਦੀ ਆ ਓਟਾ ਆ ਰਹੀਆਂ ਨੇ ਪਾਣੀਆਂ ਦੀ ਕੋਈ ਕੋਈ ਗੱਲ ਹੀ ਨਹੀਂ ਗੱਲ ਨਹੀਂ ਕਰਨੀ ਜ਼ਰੂਰੀ ਹੈ ਜਿਵੇਂ ਉਪਰਾਲਾ ਕੀਤਾ ਆਪਣੇ ਪੰਜਾਬੀਆਂ ਸਮਝਾਉਣ ਵਾਸਤੇ ਕਿ ਸਾਨੂੰ ਗੱਲਬਾਤ ਜਦ ਤੱਕ ਨਹੀਂ ਚਲਾਵਾਂਗੇ ਆਪਾਂ ਇਹ ਨਹੀਂ ਕਹਿੰਦੇ ਕਹਿੰਦੇ ਆ ਵੀ ਐਜੀਟੇਟ ਨਹੀਂ ਕਰਨਾ ਪਰ ਅਸੀਂ ਆਪਣੇ ਹੱਕਾਂ ਵਾਸਤੇ ਜਾਗਰਤ ਹੋ ਕੇ ਕਿਵੇਂ ਲੈਣੇ ਆ ਉਦੇ ਬਾਰੇ ਸਾਨੂੰ ਸਾਰਿਆਂ ਨੂੰ ਰਲ ਕੇ ਚਾਹੇ ਤੁਸੀਂ ਉਧਰਲੇ ਪਾਸੇ ਬੈਠੇ ਚਾਹੇ ਇਧਰ ਬੈਠੇ ਚਾਹੇ ਆਪਣੇ ਵੀਰ ਪੈਣ ਸੁਣ ਰਹੇ ਆ ਆਪਾਂ ਸਾਰਿਆਂ ਨੂੰ ਰਲ ਕੇ ਕੋਈ ਨਾ ਕੋਈ ਸੋਚ ਬਣਾਣੀ ਪਊਗੀ ਉਸ ਸੋਚ ਦੇ ਉੱਤੇ ਸਟਰੈਟਜੀ ਬਣਾ ਕੇ ਸਾਨੂੰ ਆਪਣੇ ਹੱਕਾਂ ਵਾਸਤੇ ਖੜਨਾ ਪਊਗਾ ਵਪਾਰਕ ਸੰਦੇਸ਼ ਤੋਂ ਬਾਅਦ ਜਿਸੰਦਰ ਸਿੰਘ ਬਰੇਸ਼ਾ ਸ਼ੁਰੂ ਕਰਨਗੇ ਪਿਛ ਭੂਮੀ ਕੀ ਹੈ 47 ਤੋਂ ਬਾਅਦ ਪੰਜਾਬੀ ਪੰਜਾਬ ਦੇ ਪਾਣੀਆਂ ਦੀ ਲੁੱਟ ਪੰਜਾਬ ਜਿਹੜੇ ਗਿਆ ਤੇ ਪਾਣੀ ਕਿੱਥੇ ਕਿੱਧਰ ਚਲੇ ਗਿਆ ਕਿੰਨੇ ਮਿਲੀਅਨ ਏਕੜ ਫੁੱਟ ਸੀ ਤੇ ਉਹ ਪਾਣੀ ਹੁਣ ਕਿੰਨਾ ਹੈ ਤੇ ਉਹਦੇ ਵਿੱਚੋਂ ਕਿੰਨਾ ਬਾਹਰ ਨੂੰ ਜਾ ਰਿਹਾ ਇਸ ਦੀ ਗੱਲਬਾਤ ਅੰਕੜਿਆਂ ਦੇ ਤਹਿਤ ਜਿਸੰਦਰ ਸਿੰਘ ਬਰੇਸ਼ਾ ਦੱਸਣਗੇ ਵਪਾਰਕ ਸੰਦੇਸ਼ ਜਿਸ ਤਰ੍ਹਾਂ ਪੰਜਾਬ ਦੇ ਪਾਣੀ ਦੀ ਗੱਲਬਾਤ ਹੋ ਰਹੀ ਹੈ ਹੁਣ ਮੈਂ ਜਸਿੰਦਰ ਸਿੰਘ ਬਦੇਸ਼ਾ ਨੂੰ ਦੱਸਣ ਸ਼ੁਰੂ ਕੀਤਾ ਜਾਵੇ ਦੋ ਸੈਗਮੈਂਟਾਂ ਦੇ ਵਿੱਚ ਇਸ ਕਰਾਂਗੇ ਹੁਣੇ ਆਪਾਂ ਸਭਾ ਦਾ 16 ਦਾ ਦੋ ਸੈਗਮੈਂਟਾਂ ਪੰਜਾਬ ਦੇ ਪਾਣੀ ਤੇ ਹੋਰ ਗੱਲ ਕਰਨੀ ਜਿੰਨੀ ਅੱਜ ਕਵਰ ਹੋ ਗਈ ਅਕੀਦ ਤੱਕ ਇਸ ਨੂੰ ਲੈ ਕੇ ਜਾਵਾਂਗੇ ਬਦੇਸ਼ਾ ਜੀ ਪਿਛੂ ਨੀਤੀ ਦੱਸੋ ਜੀ ਪੰਜਾਬ ਦੇ ਪਾਣੀ ਆ ਦਾ ਮਸਲਾ ਅਸਰਚੀ ਹੈ ਜੇ ਅੱਜ ਤੋਂ ਤੋੜਨਾ ਹੋਵੇ ਯਾ ਬਾਟਰ ਕ੍ਰਾਈਸਿਸ ਦੇ ਸਾਰੇ ਪੋਸਟ ਭੁੱਲ ਜੇ ਉਹ ਸ਼ੁਰੂ ਕਰਨਾ ਤਾਂ ਕਿਵੇਂ ਸ਼ੁਰੂ ਕਰਾਂ ਉਹ ਸਰਦਾਰ ਜੀ ਕਹਿੰਦੇ ਆ ਸਭ ਤੋਂ ਪਹਿਲਾਂ 42 ਸੋਤਿਆਂ ਨੂੰ 30 ਸਾਲ ਮਸਲਾ ਹੈ ਜੀ ਤੋਂ ਸ਼ੁਰੂ ਹੋਇਆ ਜੀ 1947 ਤੋਂ ਹੀ ਜਿਹੜੀ ਸੈਂਟਰ ਦੇ ਵਿੱਚ ਸਰਕਾਰਾਂ ਰਹੀਆਂ ਉਹਨਾਂ ਦੇ ਵਿੱਚ ਜਿਹੜੀਆਂ ਧਿਰਾਂ ਸੰਮਤ ਕਰਦੀਆਂ ਸੀ ਜਾਂ ਜਿਹੜੇ ਬੀਰੋਕਰੇਟ ਸੀਗੇ ਜੀ ਉਹਨਾਂ ਨੇ ਇਸ ਮਸਲੇ ਨੂੰ ਇਸ ਤਰੀਕੇ ਦੇ ਨਾਲ ਸਿੱਕਾ ਵੜਾ ਦਿੱਤਾ ਜੀ ਕਿ ਪੰਜਾਬ ਦਾ ਜਿਹੜਾ ਪਾਣੀਆ ਦਾ ਹੱਕ ਸੀਗਾ ਉਹਨੂੰ ਦੂਸਰੀਆਂ ਗੈਰ ਰਾਈਪੇਰੀਅਨ ਸਟੇਟਾਂ ਦੇ ਤਾਂ ਰੇਸ ਆ ਉਹ ਉਹਨਾਂ ਉਹਨਾਂ ਪਾਣੀਏ ਦੇ ਉੱਤੇ ਗੈਰ ਰਾਈਪੇਰੀਅਨ ਹੱਕ ਬਣਾ ਲਿਆ ਜਿੱਥੋਂ ਵਗਦਾ ਨਹੀਂ ਤਾਂ ਸੀ ਜਿਨ੍ਹਾਂ ਦੇ ਵਿੱਚ ਦਰਿਆ ਨਹੀਂ ਸੀ ਪੰਜਾਬ ਦੇ ਜਿਹੜਾ ਇਹ ਪੇਰੀਅਨ ਸਟੇਟਸ ਨੇ ਜੀ ਜਦੋਂ ਇਹ ਵੰਡਿਆ ਗਿਆ ਜੀ ਉਦੋਂ ਉਦੋਂ ਪਹਿਲਾ ਪਹਿਲਾ ਇਹਦਾ ਪੰਜਾਬ ਸਰਕਾਰ ਦਾ ਪੰਜਾਬ ਆਪਣਾ ਈਸਟਰਨ ਤੇ ਵੈਸਟਰਨ ਪੰਜਾਬ ਸੀ ਦੋਨੇ ਇਨ੍ਹਾਂ ਦੇ ਵਿੱਚ ਦੀ ਜਿਹੜੀਆਂ ਨਹਿਰਾਂ ਸਨ ਉਹ ਕ੍ਰੋਸ ਵਰਕਸ ਪਾ ਗਈਆਂ ਜਿਸ ਤੋਂ ਪਾਕਿਸਤਾਨ ਦੀ ਬਾਉਂਡਰੀ ਬਣ ਗਈ ਇਹ ਉਹਦੇ ਕਰਕੇ ਕੀ ਬਾਇਓ ਜਿਹੜੀਆਂ ਨਹਿਰਾਂ ਸੀਗੀਆਂ ਉਹ ਇੰਟਰਨੈਸ਼ਨਲ ਦੇ ਕ੍ਰੋਸ ਕਰਨ ਲੱਗੀਆਂ ਉਹਨੂੰ ਹੱਲ ਕਰਨ ਲਈ ਦੋਨੇ ਦੇਸ਼ਾਂ ਦੇ ਵਿੱਚ ਮੀਟਿੰਗਾਂ ਹੋਈਆਂ ਉਸ ਟਾਈਮ 'ਚ ਮੀਟਿੰਗਾਂ ਦੇ ਵਿੱਚ ਕੀ ਹੋਇਆ ਜਿਹੜਾ ਉਸ ਟਾਈਮ ਪਾਣੀ ਫੇਰਾ ਸੀ ਦੁਨ ਰਾਵੀ ਤੇ ਬਿਹਾਰ ਦਰਿਆਵਾਂ ਵਾਲੇ ਵਿੱਚ ਉਹ ਤਕਰੀਬਨ 18.9 ਮਿਲੀਅਨ ਏਕੜ ਦੇ ਦੇ ਕਰੀਬ ਸੀਗਾ ਉਸ ਟਾਈਮ ਪਾਗੜਾ ਜਿਹੜਾ ਟਾਈਮ ਦਾ ਅੰਦਾਜ਼ਾ ਹੈ ਉਨੇ ਵਿੱਚੋਂ ਕੀਾਈ ਸਿਰਫ 3.1 ਮਿਲੀਅਨ ਕਹਿੰਦੇ ਹੈ ਇਹ ਪਾਣੀ ਦੀ ਇਹ ਸਕਾਇ ਹੈ ਜਿਹਨੂੰ ਆਪਾਂ ਯੂਜ਼ ਕਰਦੇ ਆ ਦਰਿਆਵਾਂ ਦਾ ਪਾਣੀ ਮੈਨੂੰ 2 ਵਾਰ ਕਹਾਂ ਜੀ ਉਹ ਜਿਹੜਾ 15.85 ਮਿਲੀਅਨ ਏਕੜ ਫੁੱਟ ਪਾਣੀ ਦਾ ਦਰਿਆ ਦੇ ਵਿਆਸ ਦਰਿਆਵਾਂ ਦੇ ਵਿੱਚ ਉਸ ਟਾਈਮ ਬ ਉਹਨੂੰ ਇਰਾਨੇ ਪੇਪਰਾਂ ਦੇ ਵਿੱਚ ਜਿਹੜਾ ਐਕਸੈਸ ਵਾਟਰ ਡਿਕਲੇਅਰ ਕਰਦਾ ਸੀ ਬਾਦੂ ਪਾਣੀ ਹੈ ਜਿਹੜਾ ਅਣਵਸਿਆ ਪਾਣੀ ਦੱਸਿਆ ਗਿਆ ਸੀ ਉਸ ਟਾਈਮ ਹੋਇਆ ਜੀ ਪੰਜਾਬ ਦੀ ਉਸ ਟਾਈਮ ਪੰਜਾਬ ਦੇ ਵਿੱਚ ਫਸਲਾਂ ਜਿਹੜੀਆਂ ਉਹ ਇਸ ਤਰੀਕੀ ਦੀਆਂ ਬੀਜੀਆਂ ਜਾਲੀ ਜੀ ਜਿਨ੍ਹਾਂ ਨੂੰ ਬਹੁਤਾ ਪਾਣੀ ਨਹੀਂ ਸੀ ਚਾਹੀਦਾ ਪੰਜਾਬ ਦੇ ਉਸ ਟਾਈਮ ਦੀ ਜਿਹੜੀ ਪਾਣੀਆਂ ਦੀ ਲੋੜ ਸੀ ਉਹਨੂੰ ਘਟਾ ਕੇ ਪੇਸ਼ ਕੀਤਾ ਜਿਹੜੀ ਪੰਜਾਬ ਤੇ ਹਰਿਆਣਾ ਉਹ ਦੋ ਇਕੱਠੇ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਲੈਂਡ ਪੁਰਾਣੀ ਪਈ ਸੀ ਉਹਨੂੰ ਛੱਡ ਦਿੱਤਾ ਗਿਆ ਜੀ ਉਹਦੀ ਬਜਾਏ ਇੰਡਸ ਬੇਸ ਇੰਡਸ ਬੇਸਨ ਜਿਹੜਾ ਸਿਗਾ ਆਪਣੇ ਇੰਡਸ ਬੇਸਨ ਦਾ ਮੈਪ ਦੇ ਵਿੱਚ ਨਹੀਂ ਪੈਂਦਾ ਜੀ ਉਹਦੀ ਰੰਜਨ ਦਾਸ ਕੁਲਾਟੀ ਇਹ ਉਸ ਪਲੈਨਿੰਗ ਉਸ ਮੈਪ ਨੂੰ ਬੇਸ ਬਣਾ ਕੇ ਰਾਜਸਥਾਨ ਤੇ ਹਰਿਆਣਾ ਦੇ ਜਿਹੜੇ ਉਹ ਜਿਹੜੇ ਹਿੱਸੇ ਬਾਤ ਦੇ ਵਿੱਚ ਜੋ ਸ਼ਾਮਿਲ ਕੀਤੇ ਰਾਜਸਥਾਨ ਨੂੰ ਪ੍ਰਵੇਸ਼ ਦਾ ਹਿੱਸਾ ਬਣਾ ਕੇ ਉਹਨੂੰ ਉਸ ਕੀਤਾ ਗਿਆ ਹਬੜਾ ਤਬੜੀ ਦੇ ਵਿੱਚ ਵੀ ਕਿਉਂਕਿ ਪਾਕਿਸਤਾਨ ਦਾ ਪਾਣੀ ਦਾ ਰੋਲਾ ਪੈ ਗਿਆ ਸੀਗਾ ਉਹਨੂੰ ਇਹ ਸ਼ੋਅ ਕੀਤਾ ਗਿਆ ਵੀ ਸਾਡਾ ਜਿਹੜਾ ਪਾਣੀ ਅਸੀਂ ਯੂਟਿਲਾਈਜ਼ ਕਰਨਾ ਪੰਜਾਬ ਦੀ ਲੋੜ ਨਹੀਂ ਪੇਪਰਾਂ ਦੇ ਵਿੱਚ ਦੱਸੀ ਗਈ ਜੀ ਰਾਜਸਥਾਨ ਦੇ ਜਿਹੜੀ ਲੈਂਡ ਚੀਕੀ ਉਹਦੀ ਲੋੜ ਸ਼ੋਅ ਕਰਕੇ ਪੇਪਰਾਂ ਦੇ ਵਿੱਚ ਵੱਲਡ ਰੈਂਕ ਦੇ ਮੋਹਰੇ ਲਾ ਦਿੱਤੀ ਗਈ ਵੀ ਸਾਲੋਂ ਆਠ ਆਕੰਬਲੀ ਨੇ ਇਕੱڑا ਫੋਟਾ ਰਾਜਸਥਾਨ ਲਈ। ਰਾਜਸਥਾਨ ਨੂੰ ਪਾਣੀ ਭੇਜਣ ਦੀ ਪਿੱਛੂਮੇ ਕੀ ਆ ਗੋੜਿਆਂ ਦੇ ਪਾਣੀ ਜਾਂਦਾ ਸੀ ਨੇ ਰਿਆਸਤ ਨੂੰ ਜਾਂਦਾ ਸੀ ਜੀ ਉਦੋਂ ਬਹਾਵਲਪੁਰ ਸਟੇਟ ਵੀ ਖੁੱਲ੍ਹੀ ਸੀ ਕਿ ਬਹਾਵਲਪੁਰ ਸਟੇਟ ਨੇ ਕੀਤਾ ਸੀਗਾ ਜਿਹੜਾ ਗੋੜਿਆਂ ਦੇ ਨਾਲ ਐਗਰੀਮੈਂਟ ਠੀਕਾ ਜੀ ਇਹਨਾਂ ਨੇ ਐਗਰੀਮੈਂਟ ਕੀਤਾ ਵਕਸ ਟਾਈਮ ਉਲੀ 20 ਦੇ ਨੇੜੇ ਜਿਹੜੇ ਬਣੀਆਂ ਜੀ ਉਲੀ 20 ਦੇ ਨੇੜੇ ਜਿਹੜੇ ਸ਼ੁਰੂ ਹੋਇਆ। ਉਦੋਂ ਮਹਾਰਾਜਾ ਗੰਗਾ ਸਿੰਘ ਜੀ ਸੈਟ ਅਮਰੀਕਾ ਉਹਨਾਂ ਨੇ ਮੰਗ ਕੀਤੀ ਸੀ ਵੀ ਸਾਡੀ ਸਟੇਟ ਨੂੰ ਵੀ ਪਾਣੀ ਦੋ ਪੰਜਾਬ ਦੇ ਕੋਲ ਪਾਣੀ ਹੈਗਾ। ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਕਿ ਨਾ ਜੀ ਉਹਨੇ ਉਹਨੇ ਉਸ ਟਾਈਮ ਇਹ ਫੈਸਲਾ ਕੀਤਾ ਆ ਕਿਸ ਸਮਾਂ ਇੱਕ ਸਾਥੀ ਉਹਨਾਂ ਦੇ ਮੇਦਗਾਹ ਤੋਂ ਬਾਹਰ ਪਰ ਇਹਦੀ ਇੱਕ ਤੁਹਾਨੂੰ ਕੀਮਤ ਦੇਣੀ ਪਊਗੀ ਉਹਦੀ ਉਹਦੀ ਦੇ ਵੰਡ ਹੋ ਗਈ ਉਸ ਤੋਂ ਇਹ ਤਿੰਨ ਦਰਿਆ ਉਹਨਾਂ ਨੂੰ ਜਿਹੜੇ ਮੰਨ ਇੰਡਸ ਬਾਉਂਡਰ ਟ੍ਰੀਟੀ ਹੋ ਗਈ ਇੰਡਸ ਬਾਉਂਡਰ ਟ੍ਰੀਟੀ ਦੇ ਵਿੱਚ ਕਾਫੀ ਦੋਵੇਂ ਦੇਸ਼ਾਂ ਦੇ ਤਰਫ ਕਲਮੀ ਹੋਈ ਲੜਾਈ ਤੱਕ ਵੀ ਇਹਨਾਂ ਦੇ ਹਾਲਾਤ ਪਹੁੰਚ ਗਏ ਜਿਹੜੇ ਆਪਸ ਦੇ ਵਿੱਚ ਤਰਿੰਦ ਸੁਬਾਸ ਕੇ ਇਹਨਾਂ ਦੇ ਵਰਲਡ ਬੈਂਕ ਨੇ ਕੇ ਇੰਟਰਫੇਅਰ ਕੀਤਾ ਉਹਨੇ ਤੇ ਪਾਕਿਸਤਾਨ ਵਾਲਿਆਂ ਨੂੰ ਦੇ ਦਿਓ ਤੇ ਜਿਹੜੇ ਹੈਗੇ ਰਾਵੀ ਬਿਆਸ ਤੇ ਸਤਲੁਜ ਉਹ ਜਿਹੜਾ ਇੰਡੀਆ ਵਾਲਾ ਪਾਸਾ ਉਹ ਜੂਲ ਤੱਕ ਲੈਵੇ ਪਰ ਉਹਦੇ ਵਿੱਚ ਇੱਕ ਨੂੰ ਜਦੋਂ ਬੰਦੇ ਪੜ੍ਹਦੇ ਆ ਬਹੁਤੇ ਬੰਦੇ ਇਹ ਰਿਜੈਕਸ਼ਨ ਕਰਦੇ ਆ ਵੀ ਇਹ ਪਾਣੀ ਉਸ ਟਾਈਮ ਇੰਡੀਆ ਨੂੰ ਦਿੱਤਾ ਗਿਆ ਹਾਂ ਫਸ ਤੋਂ ਜੇ ਕੰਡਲ ਦੇ ਪੈਸੇ ਦਿੱਤੇ ਇੰਡੀਆ ਨੇ ਪਰ ਉਸ ਟਾਈਮ ਕੀ ਹੋਇਆ ਸਿਰਫ ਪਾਕਿਸਤਾਨ ਨੂੰ ਇਨਫਰਾਸਟਰਕਚਰ ਦੇ ਲਈ ਪੈਸੇ ਦਿੱਤੇ ਸੀ ਭਾਰਤ ਸਰਕਾਰ ਨੇ ਕਿ ਤੁਸੀਂ ਆਪਣਾ ਨਹਿਰੀ ਸਿਸਟਮ ਡਿਵੈਲਪ ਕਰ ਲਓ ਤੁਹਾਨੂੰ ਇੰਨਾ ਟਾਈਮ ਬਾਅਦ ਅਸੀਂ ਤੁਹਾਨੂੰ ਉਹ ਤੇ ਬਿਆਸ ਪਾਣੀ ਤੁਹਾਡੀ ਨਹਿਰਾਂ ਜਾ ਰਿਹਾ ਉਹ ਬੰਦ ਕਰ ਦੇਣਾ ਠੀਕ ਬਾਅਦ ਇਹਨਾਂ ਨੇ ਕਰ ਦਿੱਤਾ ਜੀ ਫਿਰ ਉਸ ਤੋਂ ਬਾਅਦ 1947 ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋ ਗਿਆ ਆਪਣਾ ਪੱਖੜਾ ਬਣ ਗਿਆ ਫਿਰ ਪਾਖੜਾ ਬਿਆਸ ਯੋਜਨਾ ਰਕੀ ਗਈ ਉਹਦੇ ਵਿੱਚੋਂ ਵੀ ਰਾਜਸਥਾਨ ਨੂੰ ਪਾਣੀ ਦਿੱਤਾ ਹੋਇਆ ਰਾਜਸਥਾਨ ਨੂੰ ਉਸ ਤੇ ਸਿੰਚਾਈ ਵਿਭਾਗ ਵਿੱਚ ਸਿਗੇ ਸੀ ਉਹਨਾਂ ਦੀ ਪ੍ਰਧਾਨਗੀ ਹਟ ਇੱਕ ਮੀਟਿੰਗ ਹੋਈ ਉਹਦੇ ਕੋਸਟ ਮੀਟਿੰਗ ਦੇ ਵਿੱਚ ਰਾਜਸਥਾਨ ਨੂੰ ਪਾਣੀ ਦੇਣ ਦਾ ਜਿਹੜਾ ਤੇ ਉਸ ਮੀਟਿੰਗ ਦੇ ਵਿੱਚ ਫੈਸਲਾ ਕਰ ਦਿੱਤਾ ਗਿਆ ਉਸ ਮੀਟਿੰਗ ਦੇ ਮਿਨਟ ਦੇ ਉੱਤੇ ਉਸ ਟਾਈਮ ਜਿਹੜਾ ਸਾਹੀ ਪੰਜਾਬ ਦੇ ਸਿੰਚਾਈ ਮੰਤਰੀ ਚੌਧਰੀ ਲੈਰੀ ਸਿੰਘ ਸਿਗੇ ਉਹਨਾਂ ਨੇ ਇਤਰਾਜ਼ ਕੀਤਾ ਜੀ ਉਹਨਾਂ ਨੇ ਉਹਨਾਂ ਨੇ ਨੇ ਸਿਰਫ ਇਸ ਤਰ੍ਹਾਂ ਹੀ ਕਿਹਾ ਉਹਨਾਂ ਨੇ ਕਿਹਾ ਦੇ ਬੈਂਡਮੈਂਟ ਚਾਹੀਦਾ ਕਿ ਮੋਮਲੀ ਜੀ ਐਮੈਂਡਮੈਂਟ ਕਰਕੇ ਉਹ 8 ਮਿਲੀਅਨ ਏਕੜ ਰਾਜਸਥਾਨ ਨਹਿਰ ਨੂੰ ਬਣਾਉਣ ਦੀਆਂ ਥੇਲੀ ਤੋਂ ਥੇਲੀ ਬਣਾਉਣ ਦੀਆਂ ਤਿਆਰੀਆਂ ਕਾਣੀਆਂ ਸ਼ੁਰੂ ਕਰ ਦਿੱਤੀਆਂ ਜਿਹੜਾ ਦਾ ਉਹ ਕੋਲ ਗੈਰ ਸੰਵਿਧਾਨਕ ਐਗਰੀਮੈਂਟ ਬਣਿਆ ਜਿਹਨੂੰ ਪੰਜਾਬ ਦੀ ਅਸੈਂਬਲੀ ਨੇ ਕਰੀ ਵੀ ਅਪਰੂਵਲ ਨਹੀਂ ਦਿੱਤੀ ਕੋਈ ਉਹਦਾ ਡਾਕੂਮੈਂਟ ਅਵੇਲੇਬਲ ਨਹੀਂ ਹੈਗਾ ਕੋਈ ਵੀ ਨਹੀਂ ਅਵੇਲੇਬਲ ਹੈਗਾ ਪਰ ਹੋਇਆ ਕਿ ਤੇ ਗੱਲ ਹੀ ਗਿਆ ਸਰਵਧਾਨ ਕਹਿਤੀ ਦੇ ਸਟੋਰੇਜ ਅਤੇ ਪਾਣੀ ਦੇ ਜਿਹੜੇ ਪਾਣੀ ਦੀ ਕੀਮਤ ਦਾ ਫੈਸਲਾ ਬਾਅਦ ਵਿੱਚ ਕੀਤਾ ਬਾਅਦ ਕੀਤਾ ਉਸ ਸਮਝੌਤੇ ਨੂੰ ਸਰਦਾਰ ਪ੍ਰੀਤਮ ਸਿੰਘ ਕੁਮੈਦਾਰ ਹੋਣਾਂ ਨੇ 210 ਦੇ ਵਿੱਚ ਪੰਜਾਬ ਟੂਡੇ ਦੇ ਵਿੱਚ ਇੱਕ ਬਹੁਤ ਵੱਡਾ ਆਰਟੀਕਲ ਲਿਖਿਆ ਗ੍ਰੇਟ ਰਾਜਸਥਾਨ ਲੂਟ ਉਹ ਬਹੁਤ ਤੇ ਜ਼ਿਆਦਾ ਆਰਟੀਕਲ ਆ ਉਹਦੇ ਵਿੱਚ ਉਹਨਾਂ ਨੇ ਉਹ ਡਾਕੂਮੈਂਟ ਜਿਹੜਾ ਸੀਕ੍ਰੀਟ ਕਹਿ ਕੇ ਦੱਬ ਦਿੱਤਾ ਗਿਆ ਸੀ ਫਾਈਲਾਂ ਦੇ ਵਿੱਚ ਉਹਨੀਆਂ ਕਾਪੀਆਂ ਉਹਨਾਂ ਨੇ ਉਜਾਗਰ ਕੀਤੀਆਂ ਤੋਂ ਬਾਅਦ ਚੱਲਦੀ ਗਈ ਉਦੋਂ ਬਾਅਦ ਰਾਜਸਥਾਨ ਨਹਿਰ ਖੜ੍ਹ ਦਿੱਤੀ ਗਈ 1900 1977 ਦੇ ਵਿੱਚ ਬੀਬੀ ਇੰਦਰਾ ਕਾਮੀ ਨੇ ਫੇਰ ਇੱਕ ਬਾੜ ਇਸ਼ੂ ਕੀਤਾ ਪਾਣੀਆਂ ਦੀ ਪੰਡ ਦਾ ਉਹਨੇ ਨੰਬਰ ਫੇਰ ਬਦਲ ਕਰਕੇ 1976 ਦੇ ਵਿੱਚ ਫੇਰ ਉਦੋਂ ਮੇਰੇ ਖਲਾਇਵਨ ਚ ਸੀ ਜਿਹਦੀ ਉਸ ਟਾਈਮ ਜੋ ਕੇ ਉਹ ਉਹਨਾਂ ਦੇ ਕੰਟਰੋਲ ਸੀ ਸਾਰਾ ਪਰ ਉਹਨਾਂ ਨੇ ਫੇਰ ਤੋਬ ਦਿੱਤਾ ਜੀ ਵੀ ਇਹ ਪਾਣੀ ਇੰਨਾ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਸੀ ਉਹਨਾਂ ਨੇ ਉਹਦੇ ਵਿੱਚ ਸੱਤ ਦਾ ਰਾਲਾ ਉਦੋਂ ਆਇਆ ਜੀ ਜਿਹੜਾ ਹਰਿਆਣੇ ਨੂੰ 3.5 ਮਿਲੀਅਨ ਏਕੜ ਫੁੱਟ ਰਾਵੀ ਵਿਆਸ ਤੇ ਪਾਣੀਆਂ ਨੂੰ ਵਾਧੂ ਸ਼ੋਅ ਕਰਕੇ ਵੀ ਅਣ ਪਰ ਜਿਹੜਾ 1966 ਦੇ ਵਿੱਚ ਪੰਜਾਬ ਪੋਨਰ ਗਠਨ ਐਕਟ ਬਣਿਆ। ਸਾਡੇ ਨਾਲ ਸਭ ਤੋਂ ਵੱਡਾ ਤੋਕਾ ਉਸ ਟੈਂਪਰ ਵਿੱਚ ਹੋਇਆ। ਉਹਦੇ ਵਿੱਚ ਹੋਇਆ ਜੀ ਉਹਦੇ ਵਿੱਚ ਜਿਹੜੀਆਂ ਤਿੰਨ ਕਲੋਜਸ ਪਾਈਆਂ 78 79 80 ਸਾਡੇ ਪਾਣੀਆਂ ਦੇ ਦਰਿਆਵਾਂ ਦੀ ਡਿਵੈਲਪਮੈਂਟ ਜਿਹੜਾ ਡਿਵੈਲਪਮੈਂਟ ਤੋਂ ਵੀ ਨਹਿਰੀ ਸਿਸਟਮ ਡਿਵੈਲਪ ਕਰਨਾ ਸਾਡਾ ਸਾਡੀ ਪਾਣ ਬਿਜਲੀ ਜਿਹੜੀ ਖੜਾਣਾ ਉਹ ਸਾਫ਼ਤੀ ਬਣਦੀ ਹੈ ਜੀ ਪਾਰਟ ਅੱਜ ਵੀ ਤੇ ਸਾਡਾ ਜਿਹੜਾ ਸਦਾ ਹੈਡਵਰਕ ਦਾ ਕੰਟਰੋਲ ਉਹ ਉਹ ਕਲੋਜਸ ਪਾ ਕੇ ਸੈਂਟਰ ਨੇ ਆਪਣੇ ਕੰਟਰੋਲ ਦੇ ਵਿੱਚ ਕਰ ਲਈਆਂ। ਕਾਦੀ ਉਸ ਟਾਈਮ ਦੇ ਜਿਹੜੇ ਪੰਜਾਬ ਦੇ ਵਿੱਚ ਦੇ ਐਮਪੀ ਸੀਗੇ ਨਾ ਜੀ ਉਹਨਾਂ ਦੇ ਉੱਤੇ ਅਲੀਗੇਸ਼ਨ ਲੱਗਦੇ ਵੀ ਉਹਨਾਂ ਦੇ ਵਿੱਚੋਂ ਇੱਕ ਦੋ ਤਾਂ ਨਰਲੈਂਡ ਉਸ ਐਕਟ ਤੋਂ ਬਿਨਾਂ ਵਜਿਹੀ ਹਰਿਆਣੇ ਨਾਲ ਲੜਾਈ। ਰਾਜਸਥਾਨ ਦੇ ਨਾਲ ਜਿਹੜੀ ਜਰਾਇਸਥਾਨ ਨੂੰ ਪਹਿਲੇ ਹੀ ਇਹ ਕੱਦਤਾ ਗਿਆ ਸੀ ਪਾਣੀ ਅਲੋਟ ਰਾਜ ਹਰਿਆਣੇ ਦੇ ਨਾਲ ਉਹ ਬਣ ਬਣਿਆ ਪਰ ਉਹਦੇ ਵਿੱਚ ਵੀ ਸਾਡੇ ਨਾਲ ਪੰਜਾਬ ਦੇ ਨਾਲ ਟੱਕਾ ਹੋਇਆ ਪੰਜਾਬ ਦੇ ਨਾਲ ਜਿਹੜੇ ਪੰਜਾਬ ਦੇ ਦਰਿਆਦਗੇ ਉਹ ਕਹਿੰਦੇ 60 40 ਦੇ ਨਾਲ ਦਰਿਆ ਵੰਡ ਲਓ ਜਦਕਿ ਰਾਈਪੇਰੀਅਨ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਪਾਣੀ ਹੈ ਲੈਂਡ ਦੇ ਨਾਲ ਜਾਂਦਾ ਵਾਟਰ ਗੋਜ਼ ਅਲੋਂਗ ਵਿਦ ਲੈਂਡ ਸੋ ਲੈਂਡ ਯਾ ਇਸਫੋ ਕੀ ਬਾਗੜਾ ਉਹਨਾਂ ਲੋਕਾਂ ਦੀ ਪ੍ਰਾਪਰਟੀ ਹੈ ਜੀ ਹਰਿਆਣੇ ਦੇ ਵਿੱਚ ਤੇ ਰਿਆ ਭਗਦੇ ਜਦੋਂ ਡਿਵਾਈਡ ਹੋਮੀ ਉਹਨਾਂ ਨੂੰ ਦੇ ਤਾਂ ਸਾਡੇ ਕੋਲ ਜਿਹੜੇ ਦੂਸਰੇ ਸੀਗੇ ਢਾਈ ਦਰਿਆ ਨਾਲ ਆ ਜਾਂ ਤਾਂ ਉਸ ਪਾਣੀ ਨੂੰ ਵੀ ਦੂਸਰਾ ਟੱਕਾ ਇਹ ਪੰਜਾਬ ਦੀ ਐਗਰੀਕਲਚਰ ਲੈਂਡ ਸੀਗੀ ਉਸ ਟਾਈਮ ਜਿੰਨੀ ਟੋਟਲ ਅੰਦਰ ਐਗਰੀਕਲਚਰ ਸੀਗੀ ਤੇ ਹਿੜਿਆਣੇ ਦੀ ਜੀ ਸਾਡੀ ਬਹੁਤ ਜ਼ਿਆਦਾ ਸੀਗੀ ਉਹਨਾਂ ਦੇ ਵਿੱਚ ਵੀ ਸਾਡੇ ਨਾਲ ਟੱਕਰ ਕੀਤਾ ਗਿਆ ਪਾਣੀ ਉਹਨਾਂ ਨੂੰ 7.5 ਮਿਲੀਅਨ ਇਕੜ ਫੋਟ ਬਾਦੇ ਵਿੱਚ ਜਿਹੜੇ ਉਹਨਾਂ ਵਾਰਡਾਂ ਦੇ ਵਿੱਚ ਟਕੜੇ ਦਿੱਤਾ ਉਹ ਕਰੋੜ ਰੁਪਈਆ ਵੀ ਇਹਦੇ ਜਿਹੜੇ ਸਰਵੇ ਵਗੈਰਾ ਕਰਾਉਣ ਲਈ ਨਾਲੋ ਕੇਟ ਬਿਲਕੁਲ ਉਦੋਂ ਜਿਹੜੀ ਸਰਕਾਰ ਆਈ ਸੀ ਉਹ ਸਰਕਾਰ ਨੂੰ 77 ਵਾਲੀ ਬਾਅਦ ਦੂਸਰੀ ਸਰਕਾਰ ਆ ਗਈ ਉਹਨਾਂ ਨੇ ਵੀ ਕੀਤਾ ਲੈਂਡ ਐਕਵੀਜ਼ੀਸ਼ਨ ਬਿੱਲ ਉਹ ਕੋਲੋ ਕਿਤਾਬੀ ਲੈਂਡ ਅਕਵਾਇਰ ਕੀਤੀ ਜਾਵੇ ਇਸ ਤਰ੍ਹਾਂ ਦੀ। 1980 ਦੇ ਵਿੱਚ ਫਿਰ 1 ਕਰੋੜ ਰੁਪਇਆ ਲਿਆ ਗਿਆ। ਉਸ ਤੋਂ ਬਾਅਦ ਕੀ ਹੋਇਆ ਜੀ ਉਸ ਸਾਰੇ ਕੰਮ ਪ੍ਰਕਾਸ਼ ਸਿੰਘ ਬਾਦਲ ਨੇ ਕੋਰਟ ਦੇ ਵਿੱਚ ਜਿੰਨੀ ਅਸੀਂ ਲੰਬੀ ਜੀ ਬੁੱਕਾਂ 'ਚੋ ਆਰਟੀਕਲ ਪੋਰਟ ਡਾਕੂਮੈਂਟ ਜਿਹੜੇ ਸਿਰਫ 78 ਲਿਖਾਇਆ। ਉਸ ਤੋਂ ਬਾਅਦ ਕੀ ਹੋਇਆ ਜੀ? ਸਰ ਸਰਕਾਰਾਂ ਟੁੱਟ ਗਈਆਂ ਜੀ ਇਹ ਵੀ ਜਿਹੜੀ ਸੀ ਤੇ 1980 1980 ਅਕਤੂਬਰ ਦੇ ਵਿੱਚ ਸਰਵਾਰਾ ਸਿੰਘ ਮੁੱਖ ਪਾਵਰ ਸਾਰੇ। ਉਹਨਾਂ ਨੇ ਉਸ ਦੇ ਵਿੱਚ ਸਾਡੇ ਨਾਲ ਅਸਲੀ ਧੋਖਾ ਹੋਇਆ ਜਦੋਂ ਸੈਨਸ ਦੇ ਮੁੱਖ ਮੰਤਰੀਆਂ ਨੂੰ ਬਿਠਾ ਲ ਕੇ 1985 ਵਾਲਾ ਐਗਰੀਮੈਂਟ ਲਿਖਿਆ ਗਿਆ ਜੀ। ਉਹਦੇ ਸਾਡੇ ਨਾਲ ਅਸਲੀ ਧੋਖਾ ਆ ਪੰਜਾਬ ਦੇ ਨਾਲ ਗੈਰਸੰਵਿਧਾਨਕ ਧੱਕਾ ਕੀਤਾ ਗਿਆ। ੱਲੇ ਮੁੱਖ ਮੰਤਰੀਆਂ ਪੰਜਾਬ ਹਰਿਆਣਾ ਤੇ ਇਹਨੂੰ ਨੇ ਸ਼ੇਅਰ ਕੀਤਾ ਦਿੱਲੀ ਨੂੰ ਵਿੱਚੋਂ ਇਹਨਾਂ ਦੇ ਵਿੱਚੋਂ ਇੱਕ ਦਿੱਲੀ ਨੂੰ ਵੀ ਪੀਣ ਵਾਲਾ ਪਾਣੀ ਪੁਆਇੰਟ 2.0 ਲਾਉ ਕੀਤਾ ਗਿਆ ਪਹਿਲਾਂ ਉਹ ਕੀਤਾ ਗਿਆ ਸੀਗਾ ਵੀ ਪੰਜਾਬ ਦੇ ਪਾਣੀ ਕਿਉਂ ਕਰਕੇ ਵਰਡਿੰਗ ਕਰ ਦਿੱਤਾ ਵੀ ਪੰਜਾਬ ਤੇ ਹਰਿਆਣੇ ਦੇ ਹਿੱਸੇ ਤੋਂ ਪੁਆਇੰਟ 2.0 ਮਿਲੀਅਨ ਇਕੜ ਫੁੱਟ ਜਾ ਰਿਹਾ ਵੀ ਰੌਲਾ ਪਾਉਣੇ ਉਹ ਸਭ ਜੋ ਤੇਦਵਾਰੀ 1982 ਦੇ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਦਾ ਤੱਕ ਲੌਣ ਆਇਆ ਹੈ ਐਸਵਾਈਐਲ ਬਹੁਤ ਈ ਵਿੱਚ ਸੋ ਇਹ ਸਦਾ ਸੰਦੀਪ ਸਿੰਘ ਸਾਰੇ ਪੰਜਾਬ ਦੇ ਖਾਸ ਦਾ ਮੁੱਢ ਦੇਖੋ ਸਰਕਾਰ ਨੇ ਐਡ ਪਾਈ ਵੀ ਪੰਜਾਬ ਪੰਜਾਬ ਲਈ ਬਹੁਤ ਫਾਇਦੇਮੰਦ ਫੌਦਾ ਆ ਇਹ ਜਿਹੜਾ ਬਣ ਰਹੀ ਆ ਉਹਨਾਂ ਨੇ ਇੱਕ ਪੇਪਰ ਪ੍ਰਿੰਟ ਕੀਤਾ ਜੀ ਸਦਾ ਦਰਵਾਜ਼ਾ ਪਿੰਦੀ ਦੀਆਂ ਉਦੇ ਵਿੱਚ ਇਹ ਲਿਖਿਆ ਪੰਜਾਬ ਨੂੰ ਇਹਨਾਂ ਨੇ ਡਾਕੂਮੈਂਟੇਸ਼ਨ ਵੀ ਦਿੱਤੀ ਵੀ ਕਿਹੜੀ ਕਿਹੜੀ ਸਰਕਾਰ ਵੱਲੋਂ ਕੀ ਕੀ ਦਿੱਤਾ ਗਿਆ 1982 ਦੇ ਵਿੱਚ ਜਦੋਂ ਇਹ ਮੋਰਚਾ ਰੂਪ ਧਾਰਨ ਕਰ ਗਿਆ ਜੀ ਲੰਮੇ ਸਮੇਂ ਦੇ ਵਿੱਚ ਉਸ ਤੋਂ ਬਾਅਦ 1985 ਦੇ ਵਿੱਚ ਪੰਜਾਬ ਸੈਟਲਮੈਂਟ ਐਕਟ ਵਾਲਾ ਜਿਹੜਾ ਅਸੀਂ ਪੰਜਾਬ ਸੈਟਲਮੈਂਟ ਪਰ ਜੀ ਲੋਗੋ ਦੇ ਨਾਂ ਨਾਲ ਜਾਣਦੇ ਜੀ 1985 ਚ ਹੋਇਆ ਉਦੇ ਵਿੱਚ ਸੱਤ ਹਰਚੰਦ ਸਿੰਘ ਲੋਂਗੋਵਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਰਜੀਨ ਜਾਨੀ ਨੇ ਸਾਈਨ ਕੀ ਸੱਤ ਹਰਚੰਦ ਸਿੰਘ ਲੋਂਗੋਵਾਲ ਦੇ ਪੰਜਾਬ ਦੀ ਦੇ ਲਈ ਉਹਨਾਂ ਦੇ ਕੋਲ ਕੋਈ ਵੀ ਸੰਵਿਧਾਨਕ ਪਾਵਰ ਨਹੀਂ ਸੀ ਪੰਜਾਬ ਦੇ ਲੋਕਾਂ ਦੇ ਬਿਹਾਰ ਤੇ ਉਹ ਸਮਝੌਤਾ ਸਾਈਨ ਕਰ ਸੀ ਬਹੁਤ ਸਾਰੀਆਂ ਕਲੋਜ਼ ਉਹਦੇ ਵਿੱਚ ਨੰਬਰ 9 ਸੀ ਨਾ ਜੀ ਉਹ ਬੜੀ ਇੰਟਰਸਟਿੰਗ ਸੀ ਉਹਦੇ ਵਿੱਚ ਲਿਖਿਆ ਸੀ ਕਿ SBYL ਪੰਜਾਬ ਬਣਾ ਕੇ ਲਊਗਾ ਪਹਿਲਾ ਜਿੰਨਾ ਪਾਣੀ ਦੂਸਰੀਆਂ ਸਟੇਟਾਂ ਨੂੰ ਜਾਂ ਪੰਜਾਬ ਸਮੇਤ ਜਿੰਨੀਆਂ ਜਿਹੜੀਆਂ ਸਟੇਟਾਂ ਪਹਿਲਾ ਜਿਵੇਂ ਵੱਡਿਆ ਉਵੇਂ ਹੀ ਜਾਂਦਾ ਰਹੂਗਾ ਤੇ ਉਹਦੇ ਜਿਹੜੀ ਉਸ ਸਰਕਾਰ ਬਣਾ ਕੇ ਦੋ ਉਹ ਸਮਝੌਤਾ ਜਿਹੜਾ ਵੀ ਉਹਦੇ ਵਿੱਚ ਜਿਹੜੀਆਂ 8-9 ਕਲੋਜ਼ਸ ਹੋਰ ਸੀਗੇ ਜਿਵੇਂ ਚੰਡੀਗੜ੍ਹ ਪੰਜਾਬ ਨੂੰ ਦੇਣਾ ਪੰਜਾਬੀ ਬੋਲ ਦੇ ਸੈਂਟਰ ਸਰਕਾਰ ਨੇ ਅਕੀਲ ਮਨਾ ਕਾਤਾ ਸਦਾਰ ਸਦੀਪ ਸਿੰਘ ਪੰਡਾਲਾ ਮੁੱਖ ਮੰਤਰੀ ਬੜੇ ਉਸ ਤੇ ਪੰਜਾਬ ਦੇ ਉਹ ਸਮਝੌਤੇ ਤੋਂ ਬਾਅਦ ਜਿਹੜੀਆਂ ਲੈਕਸਾਂ ਹੋਈਆਂ ਪੁਰਾਣੀ ਕੀ ਕੀਤਾ ਜੀ ਇਹਨਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਵੀ ਸਾਨੂੰ ਇੰਨਾ ਕੁਝ ਨਹੀਂ ਦਿੱਤਾ ਉਸ ਟਾਈਮ ਨੇ ਐਸਵਾਈਐਲ ਬੜੇ ਜੋਰ-ਸ਼ੋਰ ਨਾਲ ਕੰਰੂਣੀ ਸ਼ੁਰੂ ਕਰ ਦਿੱਤੀ ਜਿਹਦੇ ਤੁਸੀਂ ਵੀ ਇੱਕ ਚੱਕ ਪੰਜਾਬ ਦੇ ਵਿੱਚ ਭਿਆਨਕ ਲਹਿਰ ਚੱਲ ਰਹੀ ਸੀਗੀ ਉਹ ਹਾਲਾਤ ਇੱਥੋਂ ਤੱਕ ਪਹੁੰਚ ਗਏ ਜੀ ਕਿ ਉਹ ਜਿਹੜਾ ਉਹਨਾਂ ਦਾ ਜਿਹੜਾ ਉਹ ਕੋਸ਼ ਅੰਜਲੀ ਦਾ ਉਸ ਟਾਈਮ ਖਤਲ ਹੋਇਆ ਉਹਦੇ 30 ਵਜੇ ਨਾਲ ਹੋਇਆ ਤੇ ਉਹ ਨਹਿਰ ਪਾਣੀ ਰੁਕਤ ਗਈ ਕਿਉਂਕਿ ਬੀ ਲੋਕਾਂ ਨੇ ਕੰਮ ਕਰਨਾ ਮਨਾ ਕਰ ਪਰ ਉਸ ਟਾਈਮ ਗ੍ਰੀਕ ਬੋਕੇ ਦੀ ਸਰਕਾਰ ਇਸ ਤਰ੍ਹਾਂ ਸਲੀਮ ਬਣਾ ਲਾ ਨੇ ਇਹ ਨਹੀਂ ਬਾਕੀ ਸਾਡੀਆਂ ਮੰਗਾਂ ਦੇ ਤਾਂ ਇੰਪਲੀਮੈਂਟ ਕੀਤਾ ਨਹੀਂ ਸੈਂਟਰ ਨੇ ਜੀ ਉਹ ਸਮਝੌਤਾ ਵੈਲਿਡ ਮੰਗਾਂ ਤਾਂ ਸਿਰਫ ਕੇਕ ਮੰਨ ਲਿਆ ਵਿੱਚ ਖੋਰ ਵੱਡੀ ਗਲਤੀ ਇਹ ਕੀਤੀ ਗਈ ਉਸ ਟਾਈਮ ਉਹਦੇ ਟ੍ਰਿਬਿਊਨਲ ਬਣਾਣਾ ਮੰਨਿਆ ਗਿਆ ਟ੍ਰਿਬਿਊਨਲ ਉਹਦਾ ਸਟੇਟਾ ਬਣਾਉਣਾ ਮੰਨਿਆ ਜਾਂਦਾ ਸੀ ਭਾਰਤ ਕਾਨੂੰਨ ਦੇ ਅਨੁਸਾਰ ਜਿਹੜੇ ਅੰਤਰਰਾਸ਼ਟਰੀਆਂ ਦੇ ਵਿੱਚ ਅੰਤਰਰਾਸ਼ਟਰੀ ਦਰਿਆ ਬਣੀ ਬਿਲਕੁਲ ਤੋਂ ਆਪੇ ਹੀ ਮੰਨ ਲਿਆ ਉਹ ਰਾਈਪੇਰੀਅਨ ਨੂੰ ਸੁਪਰੀਮ ਕੋਰਟ ਦੇ ਵਿੱਚ ਟ੍ਰਿਬਿਊਨਲ ਦੇ ਕੀਤਾ ਜਾ ਸਕਦਾ ਉਹ ਟ੍ਰਿਬਿਊਨਲ ਨੇ ਰਾਡੀ ਤੇ ਬੇਸਿਕ ਇੱਕ ਇੱਕ ਬੜੀਆਂ ਟਰਸਟਿੰਗ ਗੱਲਾਂ ਲਿਖੀਆਂ ਉਹਨਾਂ ਨੇ ਉਹ ਕਹਿੰਦੇ ਵੀ ਚੇਂਜ ਹੋ ਸਕਦੀਆਂ ਤੇ ਤਾਂ ਨਹੀਂ ਆਵੇ ਪੰਜਾਬ ਹੀ ਇਕੱਲਾ ਜਿਹੜੀਆਂ ਚੀਜ਼ਾਂ ਪੜਨ ਉਹ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਚੀਜ਼ਾਂ ਕੱਢ ਕੇ ਕੋਰੋ ਰਾਡੀ ਟ੍ਰਿਬਿਊਨਲ ਦੇ ਫੈਸਲੇ ਆ ਸਾਰੇ ਤੇ ਭਾਰਤ ਸਰਕਾਰ ਦੀਆਂ ਜੀ 1985 ਦੇ ਵਿੱਚ ਕਮਿਸ਼ਨ ਨੇ ਪੰਜਾਬ ਦਾ ਜਿਹੜਾ ਪਾਣੀ ਪਹਿਲੇ ਸਮਝੌਤੇ 'ਚ 15.85 ਮਿਲੀਅਨ ਏਕੜ ਫੁੱਟ ਲਿਆ ਸੀ ਉਹ 17.17 ਮਿਲੀਅਨ ਏਕੜ ਫੁੱਟ ਵਾਕੇ ਵੰਡ ਦਿੱਤਾ ਪਰ ਤੁਸੀਂ ਉਹਨਾਂ ਦਾ ਅੰਦਾਜ਼ਾ ਲਾਓ ਜੀ ਸਿੱਧੇ ਹਿਸਾਬ ਦੇ ਵਿੱਚ ਕਿ ਦੇ ਦਿੱਤਾ 15 ਲੀਟਰ ਤੇ ਚਾਰ ਭਰਾਵਾਂ ਵਿੱਚ ਵੰਡ ਦਿੱਤਾ। ਸੋ ਕਾਹੜ ਭਰਾ ਬਣਾਈ ਹੋਏ ਆ ਸਾਡੇ ਕੇ ਤੁਸੀਂ ਵੰਡ ਦਰਿਆਵਾਂ ਕਿੰਨੇ ਦਰਿਆਵਾਂ ਦੇ ਵਿੱਚ ਟੋਟਲ ਪਾਣੀ ਸਾਡੇ ਪੂਲ ਉਹਨਾਂ ਉਸ ਪਾਣੀ ਦੇ ਨਾਲ ਸਾਡਾ ਪੰਜਾਬ ਦੀ ਖੇਤੀਬਾੜੀ ਦੀ ਸਾਡੇ ਪੀਣ ਵਾਲੇ ਪਾਣੀ ਦੀ ਤੇ ਸਾਡੇ ਸਾਨੂੰ ਉਦੋਂ ਅੱਧਾ ਪਾਣੀ ਹੋਰ ਚਾਹੀਦਾ ਤੇ ਹੋਕ ਹੋਇਆ ਕੀ ਹੈ ਜੀ ਪੰਜਾਬ ਦੇ ਪਾਣੀ ਦੀ ਮੈਲਟੀ ਪ੍ਰੋਪਰ ਕੀਤੀ ਗਈ ਉਦੋਂ ਬਾਅਦ 15.85 ਜਿਹੜਾ ਸੀ ਪੰਜਾਬ ਦੇ ਸਚਾਈ ਵਿਭਾਗ ਦੇ ਅਨੁਸਾਰ ਨਾਲ 12. ਕੁਝ ਮਿਲੀਅਨ ਇਕਰ ਜਾਦਾ ਕਿੰਨਾ ਹਾਲਿ ਹੈ ਉਹ ਕਿੰਨਾ ਜਾਂਦਾ ਉਹਦੇ ਵਿੱਚੋਂ ਜਾਂਦਾ ਜੀ ਇੱਕ ਰਾਜ ਰਾਜ 8.60 ਰਾਜਸਥਾਨ ਨੂੰ ਦਿੱਤਾ ਗਿਆ ਸੀ ਰਾਜੀ ਆਪਣੇ ਪਹਿਲਾ ਰਾਜਸਥਾਨ ਜਿਹੜਾ ਗਿਆ ਉਹ ਤੇ ਕੀ ਹੈ ਜੀ ਇੱਕ ਪਹਿਲਾ ਜਿਹੜਾ ਸੰਝੋਤਾ ਤੁਸੀਂ ਪੀਕਾ ਲੈਰ ਵਾਲੇ ਸੰਝੋਤੇ ਦੀ ਗੱਲ ਕੀਤੀ 1947 ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ ਜੀ ਪਰ ਉਹ ਉਸ ਸੰਝੋਤੇ ਦੇ ਤਹਿਤ ਵੀ ਪਾਣੀ ਲਈ ਜਾਂਦੇ ਅੱਜ ਵੀ ਰਾਜਸਥਾਨ ਗਵਰਨਮੈਂਟ ਦੀ ਵੈਬਸਾਈਟ ਤੇ ਜਾ ਕੇ ਉਹ 2.1 ਮਿਲੀਅਨ ਏਕੜ ਖੁੱਤ ਦੇ ਨੇੜੇ ਉਹ ਸਮਝੌਤਾ ਲੈ ਜਾਂਦੇ ਆ 8.6 ਉਹਨਾਂ ਨੂੰ ਬਾਹਰ ਬਾਦ ਵਾਲੇ ਜਾਇ ਸਮਝਾ ਸੰਵਿਧਾਨਕ ਸਮਝੋ ਤੇਰਾ ਡੇਟ ਆ ਗਿਆ ਤੇ ਉਹ ਖੜੀ ਹੈ ਜੀ ਸਾਡੀ ਜਿਹੜੀ ਤਰਾਸੀ ਹੈ ਜੀ ਸਾਡੇ ਕੋਲ ਪਾਣੀ ਹੈ ਹੀ ਨਹੀਂ 15.58 ਘਟ ਕੇ ਰਹਿ ਗਿਆ ਜਦ ਇਹਨਾਂ ਸਾਰੇ ਸਮਝੌਤੇ ਗਿਆ ਸੰਵਿਧਾਨਕ ਸਮਝੋ ਗਿਆ ਜੀ ਵੀ ਜੇ ਪਾਣੀਆਂ ਦੀ ਸਪਲਾਈ ਘਟ ਜਵੇ ਦਰਿਆਵਾਂ 'ਚ ਉਸੇ ਰੇਸ਼ੋ ਦੇ ਨਾਲ ਬਾਕੀ ਪਾਣੀ ਇਹ 3.4 3.5 ਤੋਂ ਖਾਣੀ ਜਾਂਦੇ। 215 ਲੀਟਰ ਗੁੰਗੀਆਂ ਕੱਢ ਕੇ ਦੇਖੋ ਜੀ ਉਹਦੇ ਵਿੱਚ ਪਾਖੜਾ ਮੈਰ ਦੇ ਖਲਾਰਿਆਂ ਨੂੰ ਚਾਹਾਂ ਦਾ ਰੋਲਾ ਪਿਆ। ਇਸੇ ਵੀ ਪੋਲੀਟিক্যাল ਪਾਰਟੀ ਨੇ ਉਹਨੂੰ ਡਲਾਈ ਨਹੀਂ ਕੀਤਾ ਪੰਜਾਬ ਦੇ ਹਾਂਜੀ ਉਹ ਪਾਣੀ ਉਹਨਾਂ ਨੂੰ ਆਲਰੇਡੀ ਉੱਥੋਂ ਲਈ ਜਾਂਦੇ ਆ ਸਾਨੂੰ ਪੰਜਾਬ ਨੂੰ 78 ਮਿਲੀਅਨ ਪਾਣੀ ਦੀ ਲੋੜ ਆ ਰਹੀ ਪੰਜਾਬ ਦੇ ਖੇਤੀਬਾੜੀ ਮਾਰਾਂ ਦਾ ਉਹਦੇ ਵਿੱਚੋਂ ਮਿਲੀਅਨ ਏਕੜ ਫੁੱਟ ਸਾਡੀ ਜਿਹੜੀ ਖੇਤੀਬਾੜੀ ਉਹ ਲਈ ਚਾਹੀਦਾ 20 ਮਿਲੀਅਨ ਏਕੜ ਫੁੱਟ ਸਾਨੂੰ ਚਾਹੀਦਾ ਪੀਣ ਵਾਸਤੇ ਸ਼ਹਿਰਾਂ ਵਾਸਤੇ ਤੇ 5 ਮਿਲੀਅਨ ਇਕੜ ਫੁੱਟ ਜਾਈਦਾ ਸਾਨੂੰ ਸਾਡੀ ਇੰਡਸਟਰੀ ਜਿਹੜੀ ਪੰਜਾਬ 'ਚ ਚੱਲਦੀ ਆ ਬਿਨਾਂ ਤੇ ਦੇ ਕੇ ਸਾਨੂੰ 10 ਮਿਲੀਅਨ ਇਕੜ ਫੁੱਟ ਵੀ ਨਹੀਂ ਪੱਜਦਾ ਜੀ ਸਾਨੂੰ ਹੀ ਲਾਓ ਵੀ ਮਿਲੀਅਨ ਇਕੜ ਫੁੱਟ 'ਚੋਂ ਮਿਲੀਅਨ ਇਕੜ ਫੁੱਟ ਕੱਢ ਲਓ। ਮਿਲੀਅਨ ਇਕੜ ਫੁੱਟ ਦੇ ਕਰੀਬ ਪਾਣੀ ਥੁਰਦਾ ਹੀ। ਥੋੜੇ ਬਹੁਤ ਨੰਬਰ ਇੱਥੋਂ ਤੋਂ ਕੋਸਾ ਗਏ। ਵਪਾਰਕ ਲਿਖ ਲੈ ਲੀਏ ਜੀ ਬਹੁਤ ਵਿਦੂਤਾ ਨਾਲ ਸਰ ਜਿਸ ਜੀ ਸਿੰਘ ਗਰੇਸ਼ਾ ਨੇ ਦੱਸਿਆ ਇਸ ਨੂੰ ਹੋਰ ਖੂਬ ਲਾਗੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਤੇ ਵਪਾਰਕ ਨੇ ਸਰ ਬਾਤਾਂ ਆ ਗਏ ਸੀਲ ਜੀ ਜਮਨ ਨਾਲ ਕੱਲ ਕਰਾਂ। ਹੁਤਾ ਵਿਦੂਤਾ ਦੇ ਨਾਲ ਸਾਰੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਹੜਾ ਰਾਜਸਥਾਨ ਦੀ ਨਹਿਰ ਦੀ ਗੱਲ ਹੈ ਤੇ ਰਾਜਸਥਾਨ ਨੂੰ ਜਿਹੜੀ ਨਹਿਰ ਗਈ ਹੈ ਉਹਦੇ ਬਾਰੇ ਸੀਨੀਲ ਜੀ ਕੁਝ ਐਡ ਕਰਨਾ ਚਾਹੁੰਦੇ। ਹਾਂਜੀ ਹਰਜੀਤ ਸਿੰਘ ਜੀ ਪਹਿਲੀ ਗੱਲ ਤਾਂ ਮੈਂ ਇੱਕ ਵਾਰ ਸੇਅਰ ਕਰ ਪੰਜਾਬ ਚ ਨਾ ਉਹਦਾ ਵਾਟਰ ਵਰਕਸ ਆ ਇਹ ਸੂਲ ਦੇ ਵਿੱਚ ਬ੍ਰਿਟਿਸ਼ਰਸ ਨੇ ਇਤਹਿੰਦਰਪੁਰ 1860 ਤੋਂ ਬਾਅਦ ਜਿਹੜੀ ਪਹਿਲੀ ਈਡੀ ਥੈਰ ਹਸਤੰਦ ਕਨਾਲ ਗੋਰੀਆਂ ਵੀ ਬਣਾਈ ਗਈ ਆ ਕਿਉਂਕਿ ਪਾਣੀ ਡੈਫੀਸ਼ੀਐਂਸਗਾ ਜੀਨ ਦੇ ਵਿੱਚ ਪਟਿਆਲੇ ਦੇ ਵਿੱਚ ਹੂੰ ਨੇ ਆਪਣੀ ਗੱਲਬਾਤ ਦੇ ਵਿੱਚ ਰਾਜਸਥਾਨ ਦੀ ਗੱਲ ਕੀਤੀ ਸੀ ਜਿਹੜਾ ਸਿੰਘ ਸੀ बीकानेर ਦਾ ਰਾਜਾ ਉਹ ਬਾਹਰ ਇੰਗਲੈਂਡ ਪੜ੍ਹਨਾ ਸੀ ਜਦੋਂ ਉਹ ਵਾਪਸ ਆਇਆ ਤੇ ਉਹਨੇ ਦੇਖਿਆ ਕਿ ਉੱਥੇ ਜਿਹੜੇ ਲੋਕ ਹੈਗੇ ਆ ਹਰ ਕੱਲ ਭੁੱਖਮਰੀ ਨਾਲ ਮਰ ਰਹੇ ਆ ਤੇ ਜ਼ਰੂਰੀ ਨਹੀਂ ਪਹਿਲਾਂ ਰਿਸਤੋਫਰ ਤੇ ਰਾਜ ਵੀ ਸਾਨੂੰ ਪਾਣੀ ਦੀ ਲੋੜ ਆ ਸਾਨੂੰ ਪਾਣੀ ਜਿਹੜਾ ਪੰਜਾਬ ਤੋਂ ਦਿੱਤਾ ਜਾਵੇ 1903 ਚ ਤੁਸੀਂ ਦੇਖ ਲਓ ਰੂਲ ਆਫ ਲਾ ਦੀ ਕਿੰਨੀ ਵਧੀਆ ਬ੍ਰਿਟਿਸ਼ਸ ਨੇ ਹਜੇ ਕਿ ਗੁਲਾਮ ਸੀ ਸਾਰਾ ਉਹਨਾਂ ਨੇ ਉਹਦੀ ਐਪਲੀਕੇਸ਼ਨ ਦੇ ਪ੍ਰੋਸੈਸ 'ਚ ਦੋ ਸਟੇਟਾਂ ਦਾ ਆਬਜੈਕਸ਼ਨ ਸੀ ਇੱਕ ਪੰਜਾਬ ਸਟੇਟ ਦਾ ਇੱਕ ਬਹਾਵਲ ਬੋਲਦਾ ਉਹ ਸਾਲ ਮੀਟਿੰਗਾਂ ਹੁੰਦੀਆਂ ਆਪਣੀ ਸਟੇਟ ਨੂੰ ਪਾਣੀ ਲਿਜਾਣ ਵਾਸਤੇ ਕਿਉਂ ਤੇ ਰੂਲ ਕਰਦੇ ਸੀ ਉਹੋ ਮਰਜ਼ੀ ਕਰ ਜਾਂਦੇ ਪਰ ਉਹਨਾਂ ਨੇ ਜਿਹੜਾ ਪਾਣੀਆਂ ਦੀ ਵੰਡ ਬਾਰੇ ਜਿਹੜਾ ਅੰਤਰਰਾਸ਼ਟਰੀ ਕਾਨੂੰਨ ਜਿਗਾ ਉਹਨੂੰ ਮਤੇ ਨਜ਼ਰ ਰੱਖਦੇ ਤੇ ਜਿਹੜੀ ਸਟੇਟ ਦੇ ਹੱਕ ਸੀਗੇ ਉਹਨਾਂ ਦੇ ਸਾਰੇ ਅభ్యਕਸ਼ਣ ਗੱਲਬਾਤ ਹੋਇਆ ਫਿਰ ਉਹਨਾਂ ਨੇ ਕਿਹਾ ਕਿ ਸਾਰਾ ਖਰਚਾ ਵੀ ਪਿਕਨਿਓ ਸਟੇਟ ਕਰੂਗੀ ਰਾੜ ਮੁਆਵਜ਼ਾ ਉਹ ਜਮ੍ਹਾਂ ਕਰਾਇਆ ਕਰਨਗੇ ਤੇ ਹਾਵਲਪੁਰ ਹਾਵਲਪੁਰ ਜਿਹੜਾ ਸੀ ਪਾਣੀ ਜਿਹੜਾ ਆ ਹੁਣ ਬਹੁਤ ਜ਼ਿਆਦਾ ਦਿੱਤਾ ਜਾ ਰਿਹਾ ਜਿਹੜਾ ਉਹਦੀ ਮੈਨੂੰ ਐਕਚੁਅਲੀ ਡਿਟੇਲ ਵਿੱਚ ਦਿੱਤਾ ਜਾਂਦਾ ਸੀ ਉਹ ਪਾਣੀ ਫਿਰ 1927 ਦੇ ਲਗਭਗ ਜਿਹੜਾ ਜਾਣਾ ਸਾਖ ਹੈ ਤੋਂ ਪ੍ਰੋਸੈਸ ਦੇਖ ਲਓ 24 ਸਾਲ ਲੱਗੇ ਅਜੇ ਕੋਈ ਇੱਕ ਦਿਨ ਛੋਟ ਸਕਦਾ ਸੀਗਾ ਅੱਜ ਜਦੋਂ ਫੈਸਲੇ ਹੁੰਦੇ ਜਿਵੇਂ ਵੀਰ ਜੀ ਦੇ ਬੰਦ ਕਮਰਿਆਂ 'ਚ ਫੈਸਲਾ ਕਰਕੇ ਜਿਵੇਂ ਵੀਰ ਜੀ ਨੇ ਵੀ ਕਿਹਾ ਸੀ ਗਈ ਆ ਜੇਕਰ ਅਜਿਹੀ ਸ਼ਿਕਾਰ ਨਾ ਹੁੰਦੇ ਸ਼ਾਇਦ ਅੱਜ ਆਪਾਂ ਰੇਡੀਓ ਦੇ ਦਿਨਾਂ ਬੈਠੇ ਹੁੰਦੇ ਉਸੇ ਸਟੇਟ ਦੀ ਇਕਨੋਮਿਕ ਡਵੈਲਪਮੈਂਟ ਦੇ ਵਿੱਚ ਆਪਾਂ ਉੱਥੇ ਹੀ ਬੈਠ ਕੇ ਕੁਛ ਅਨੁਸਰਚ ਕਰ ਰਹੇ ਹਾਂ। ਸਿੰਘ ਜੀ ਇਹਦੇ ਸਾਰੇ ਤੁਸੀਂ ਕੁਛ ਕਰਨਾ ਚਾਹੋ ਤਾਂ ਆਪਣੇ ਕੋਲ ਅਬਾਊਟ 2 ਨੇ ਹੋਰ। ਹਾਂਜੀ ਵੀਰ ਜੀ ਦੇਖੋ ਕਾਫੀ ਵਿਸਤਾਰ ਚ ਆਪਾਂ ਇਹਦੀ ਜਿਹੜੀ ਹਿਸਟਰੀ ਆ ਕਿਵੇਂ ਕਿਵੇਂ ਹੋਇਆ ਇਹ ਤਾਂ ਚਿੱਪੇ ਦਾ ਮਰਗਾ ਫੱਟਾ ਜਿਹੜਾ ੱੱਕਾ ਪੰਜਾਬ ਨਾਲ ਹੋਇਆ ਤੇ ਇਹਦੀ ਤਾਂ ਜਿੰਨੀ ਮਰਜ਼ੀ ਆਪਾਂ ਡਿਸਕਸ਼ਨ ਕਰ ਲਈਏ ਉਹ ਵੀ ਥੋੜੀ ਆ ਕਿਉਂਕਿ ਇਹਦੇ ਇੰਨੀਆਂ ਡੂੰਘੀਆਂ ਜੜਾਂ ਨੇ। ਔਰ ਅੱਜ ਗੱਲ ਆ ਕੇ ਖੜ ਜਾਂਦੀ ਹੈ ਵੀ ਅੱਜ ਹੁਣ ਕਿੱਥੇ ਖੜੇ ਆ ਅਸੀਂ ਹੁਣ ਕੀ ਇੱਕ ਤਾਂ ਹੈਗਾ ਜਿਹੜਾ ਪਿੱਛੇ ਹੋ ਗਿਆ ਸੋ ਹੋ ਗਿਆ ਹੁਣ ਭਵਿੱਖ ਕੀ ਆ ਨੇ ਦੱਸਿਆ ਵੀ 22000 ਕਰੋੜ ਰੁਪਏ ਪੰਜਾਬ ਦਾ ਖੋਇਆ ਜਾਂਦਾ ਜੇ ਹੋਰ ਸਾਰੀਆਂ ਚੀਜ਼ਾਂ ਨੂੰ ਛੱਡ ਅੱਜ ਜਿਹੜਾ ਮੇਰੇ ਵੀਰ ਅੱਜ ਛੱਤਾਂ ਤੇ ਚੜੇ ਸਰਦੇ ਆ ਘਰ ਛੱਡ ਕੇ ਇੱਥੇ ਤੁਰੇ ਸਰਦਾ ਕੋਈ ਟਰੱਕਾਂ ਤੇ ਸਰਦਾ 22000 ਕਰੋੜ ਰੁਪਇਆ ਸਾਨੂੰ ਆਉਂਦਾ ਸੀ ਹਰ ਸਾਲ ਦਾ ਅੱਜ ਸਾਡੀ ਜਿਹੜੀ ਸਟੇਟ ਸੀ ਪੰਜਾਬ ਉਹ ਇੱਕ ਮਾਡਲ ਸਟੇਟ ਹੋ ਸਕਦੀ ਸੀਗੀ ਪਰ ਸਾਨੂੰ ਆ ਦਰਦਰ ਦੇ ੱਟਕੇ ਨਹੀਂ ਸੀ ਖਾਣੇ ਪੈਣੇ ਹੂੰ ਪਰ ਗੱਲ ਇੱਥੇ ਵੀ ਨਹੀਂ ਨਿਬੜਦੀ ਗੱਲ ਤਾਂ ਇਹ ਅੱਗੇ ਜਾਣ ਦੀ ਪੂਰੀ ਤਿਆਰੀ ਆ ਜਿਹੜੀ ਅੱਗੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਰਪੇਰੀਅਨ ਲਾ ਦਾ ਜਿੰਨਾ ਰੌਲਾ ਪੈ ਰਿਹਾ ਅੱਜ ਉਹਨਾਂ ਨੂੰ ਵੀ ਪਤਾ ਵੀ ਜਦੋਂ ਇਹ ਇੰਟਰਨੈਸ਼ਨਲ ਕਿਤੇ ਚਲੇ ਗਿਆ ਅਸੀਂ ਝੂਠੇ ਆ ਉਹਨੂੰ ਨਜਿੱਠਣ ਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਸਪਲਾਈ ਦੇ ਬਹਾਨੇ ਬਦਲ ਕੇ ਜਿਹੜੀ ਸਰਸਪਤੀ ਦੀ ਪਟਾਈ ਆ ਉਹ ਇੱਕ ਉਸ ਪ੍ਰੋਜੈਕਟ ਦਾ ਹਿੱਸਾ ਬਿਨਾਂ ਰਹੁ ਤੇ ਨਾ ਬਜੂ ਬਾਂਸਰੀ ਪ੍ਰੋਮੋਰਦਾਂਗੇ ਪ੍ਰੋਮੋਰਦਾਂਗੇ ਉਸ ਪ੍ਰੋਜੈਕਟ ਤੇ ਕੰਮ ਸ਼ੁਰੂ ਹੋ ਗਿਆ ਤੇ ਪੰਜਾਬ ਕੋਲ ਤਾਂ ਜੇ ਅਸੀਂ ਨਾ ਜਾਗੇ ਸੱਚੀ ਸਾਡੇ ਕੋਲ ਤਾਂ ਗਣਮੇ ਦਿਨ ਨੇ ਸੋ ਇਹ ਇੱਕ ਐਡਾ ਕੁ ਸੀਰੀਅਸ ਇਸ਼ੂ ਆ ਬਾਕੀ ਸਾਰੀਆਂ ਲੜਾਈਆਂ ਸਾਰੇ ਇਸ਼ੂ ਇਹਦੇ ਥੱਲੇ ਆ ਜਾਂਦਾ ਜਦੋਂ ਉੱਜੜ ਕੇ ਫਿਰ ਨਾ ਅਣਖਾ ਰਹਿਣੀ ਨਾ ਗਰਤਾ ਰਹਿਣੀ ਨਾ ਹੋਰ ਕੁਛ ਰਹਿਣਾ ਸੋ ਇਸ ਤੇ ਸਾਨੂੰ ਸੀਰੀਅਸਲੀ ਸੋਚਣਾ ਪੈਣਾ ਧੰਵਾਦ ਜੀ ਹੁਣ ਦੁਬਾਰਾ ਇਸ ਕੜੀ ਦੀ ਅਗਲੀ ਇਸ ਐਤਵਾਰ 12 ਤੋਂ 1 ਵਜੇ ਤੱਕ ਤਿੰਨੇ ਵੀਰ ਆਉਣਗੇ ਮੰਡੇ ਨੂੰ 12 ਤੋਂ 1 ਦੁਬਾਰਾ ਫੇਰ ਗੱਲਬਾਤ ਚੱਲੇਗੀ ਕਿ ਰਾਸੀ ਪਾਰਟੀਆਂ ਉੱਤਰਕਾਟੋਂ ਮੈਂ ਚੜਾਂ ਚੰਗਾ ਸਿਪਾਹੀ ਮਾੜਾ ਸਿਪਾਹੀ ਤੂੰ ਮੈਂ ਤੇਰੇ ਢੂਈ ਤੇ ਖਾਜ ਕਰਾਂ ਤੂੰ ਮੇਰੀ ਤੇ ਕਰ ਉਸ ਦੀਆਂ ਗੱਲਾਂ ਕਿਵੇਂ ਕਰ ਰਹੇ ਨੇ ਔਰ ਇਹਨੂੰ ਤੁਸੀਂ ਚੰਗਾਈ ਸਿੰਘ ਨੇ ਜਿਹੜਾ ਕਿਹਾ ਵੀ ਜਿਹੜਾ ਹੁਣ ਨਾਲ ਜੋੜ ਇਹ ਨਹੀਂ ਕਹਾਣੀ ਇਹ ਉਸ ਗੱਦੀ ਦੀ ਗੱਲ ਹੈ ਵੀ ਪੰਜਾਬ ਨਾਲ ਕਰਨਾ ਕੀ ਔਰ ਪੰਜਾਬ ਦੇ ਵਿੱਚ ਵੀ ਕੋਈ ਤੇ ਰਾਜਵੇ ਇਹ ਵੀ ਸੁਣ ਲਿਓ ਜਿਹੜੇ ਆਪਾਂ ਕਰ ਰਹੇ ਆ ਨਾ ਗੱਲਾਂ ਆਸਬੰਦ ਆਪਾਂ ਬਹੁਤ ਹੈ ਨਵੇਂ ਬਦਲਦੇ ਨਵੇਂ ਬਦਲਦੇ ਪਰ ਸੈਂਟਰ ਤੋਂ ਉੱਪਰ ਜਾ ਕੇ ਜਾਂ ਪ੍ਰੇਮਾ ਭਗਤੀ ਦੇਸ਼ ਭਗਤੀ ਨੂੰ ਤੋੜਨ ਵਾਲਾ ਕੋਈ ਨੀ ਜੇ ਤੁਸੀਂ ਇਹ ਵੀ ਕਹੋਗੇ ਵੀ ਕੇਜਰੀ ਬਾਲ ਤੋੜ ਦੂ ਦੇਸ਼ ਭਗਤੀ ਨੂੰ ਭੁੱਲ ਜਾਓ ਜੋ ਦਿੱਲੀ ਚ ਕਹਿੰਦਾ ਪਾਣੀ ਥੋੜਾ ਪੰਜਾਬ ਚ ਕਹਿੰਦਾ ਥੋੜਾ ਪਾਣੀ ਹੈ ਤਿੰਨੇ ਤਰ੍ਹਾਂ ਦਾ ਵਿਸ਼ਲੇਸ਼ਣ ਆਉਣ ਵਾਲਿਆਂ ਦੋ ਹਫ਼ਤਿਆਂ ਦੇ ਵਿੱਚ ਕਰਾਂਗੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਖਬਰਾਂ ਤੇ ਅਨ ਤੁਹਾਡਾ ਤਿੰਨਾਂ ਦਾ ਵਿਦੇ ਜੀ ਬਹੁਤ ਬਹੁਤ ਧੰਨਵਾਦ ਸਰ ਬਰੇਸ਼ਾ ਜੀ ਸਰ ਸਗੀਪ ਸਿੰਘ ਤੇ ਸੀਰ ਸ਼ਰਮਚ ਜੀ ਬਹੁਤ ਦੇਬਪਾਰਕਸ ਮੇਸ਼ ਬਾਫਸਾਉਨਿਆ ਜੀ ਖਦਰਾ ਤੋਂ ਬਾਅਦ 12:58 ਮਿੰਟ ਜੀ ਬਹੁਤ ਵਿਦੂਤਾ ਨਾਲ ਵੀਰ ਦਸਕੇ ਗਏ ਨੇ ਰਜਨਾ ਸਪੋਕਸਮੈਨ ਦੀ ਜੁਲਾਈ 17 2016 ਦੀ ਖਬਰ ਹੈ ਕਿ ਪੰਜਾਬ ਦੇ ਵਿੱਚ ਤੋਂ ਆਗਰ ਅਨੁਸਾਰ ਕਿਸਾਨ ਫਿਰ 31 ਮਾਰ 2015 ਤੱਕ ਬੈਂਕਾਂ ਦਾ 75449 ਕਰੋੜ ਰੁਪਏ ਕਰਜ਼ਾ ਸੀ ਪੰਜਾਬ ਦਾ ప్రతి ਕਿਸਾਨ ਪਰਿਵਾਰ ਦੇ ਫਿਰ 2016 ਚ 1 ਕਰੋੜ 70 ਲੱਖ ਰੁਪਏ ਦਾ ਕਰਜ਼ਾ ਸੀ ਤੇ ਵੱਧ ਕੇ ਜਿਹੜਾ 2 ਕਰੋੜ 80 ਲੱਖ ਰੁਪਈਆ ਹੋ ਗਿਆ ਪੰਜਾਬ ਦੇ 88% ਕਿਸਾਨ ਕਰਜ਼ੇਈ ਨੇ ਪੰਜਾਬ ਦੇ ਗਰੀਬ ਤਕਰੀਬ 20237 ਸਰਕਾਰ ਕੋਲੋਂ ਕਿਸਾਨਾਂ ਦੀ ਜਲਦ ਪੈਸੇ ਲੈ ਕੇ ਹਾਸਲ ਕਰਕੇ ਬੈਠੇ ਬਿਠਾਈ 2500 ਕਰੋੜ ਰੁਪਈਆ ਆਪਣੇ ਜੇਬ ਚ ਪਾਉਂਦੇ ਆ ਕਿਸਾਨਾਂ ਦੇ ਸਿਰਾਂ ਦੀਆਂ ਦਾ 35000 ਕਰੋੜ ਰੁਪਈਆ ਦਾ ਕਰਜ਼ਾ ਮੈਂ ਕਹਨਾ ਕਰਦਾ 47000 ਕਰੋੜ ਕਿਸਾਨ ਕੀ ਕਰ ਸਕਦਾ ਜਿੰਦੂ ਇਸ ਕਾਦੀ ਰਿਪੋਰਟ ਅਨੁਸਾਰ 95 ਤੋਂ 2000 ਤੱਕ 290740 ਕਿਸਾਨਾਂ ਨੇ ਮੁਲਕੀਸ਼ੀ ਕੀਤੀ ਪਿਆ ਇੱਕ ਵਜ ਕੇ 5 ਮਿੰਟ ਹੋਏ ਜੀ ਬਹੁਤ ਸਰਪ੍ਰਵਜ ਪਾਲ ਸਿੰਧੀ ਮੈਂ ਸਮਾਧ ਮੰਗਾ ਜੀ ਫੇਰ ਫੋਨ ਕਰਿਓ ਮੈਂ ਕੁਝ ਹੋਰ ਗੱਲਾਂ ਕਰੀਆਂ ਚਾਹੁੰਦਾ ਬਹੁਤ ਕਾਲਰ ਨੇ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਜਿਹੜੇ ਵੀਰ ਗੱਲ ਕਰਕੇ ਗਏ ਨੇ ਸਰਾਜ ਜਸਵਿੰਦਰ ਸਿੰਘ ਵਿਦੇਸ਼ਾ ਜਿਹੜੇ ਚਿੰਤਕ ਨੇ ਕੋਈ ਵੀ ਮੁਸ਼ਕਲ ਹੋਵੇ ਭਾਈਚਾਰੇ ਦੀ ਚੈਨਸਟੀ ਦੀ ਹੋਵੇ ਚਾਹ ਪੰਜਾਬ ਦੀ ਹੋਵੇ ਬਹੁਤ ਖੁੱਲ ਕੇ ਗੱਲ ਕਰਦੇ ਆ ਤੇ ਸਾਰੀ ਪੰਜਾਬ ਦੇ ਪਾਣੀਆਂ ਜਿਨ੍ਹਾਂ ਨੇ ਪੰਜਾਬ ਦੀ ਪਾਣੀਆਂ ਦੀ ਲੁੱਟ ਦੀ ਉਸ ਦਾਸਤਾਨ ਨੂੰ ਡਾਕੂਮੈਂਟਰੀ ਦੱਸਿਆ ਉਹਦਾ ਨਾਮ ਆ ਫਾਈਨਲ ਅਸਾਲਟ ਉਹ ਦੇ ਵਿੱਚ ਵੀ ਲੱਗੀ ਸੀ ਤੇ ਫਿਰ ਲੋਕਲ ਸੌਰੀ ਲੋਕਲ ਜਿੰਨੇ ਸਾਡੇ ਐਡੀਟੋਰੀਅਮ ਸੀ ਉਹਨਾਂ ਚ ਉਹਨਾਂ ਨੂੰ ਦਿਖਾਇਆ ਸੀ ਤੇ ਹੁਣ ਉਹ YouTube ਤੇ ਪਈ ਹੈ। ਦਾ ਫਾਈਨਲ ਅਸੌਲਟ ਜਿੱਦਾਂ ਚ ਉਹਨਾਂ ਨੇ ਬਹੁਤ ਡੂੰਗੀ ਗੱਲ ਕੀਤੀ ਕਹਿੰਦੇ ਅਸੀਂ ਬਾਉਂਡਰੀਆਂ ਬਾਉਂਡਰੀਆਂ ਤੁਹਾਡੀਆਂ ਸੈੱਟ ਕਰਦੇ ਆਂਗੇ ਰਿਪੇਰੀਅਨ ਲਾਅ ਜਿਹੜਾ ਤੁਹਾਡਾ ਉਹ ਪੰਜਾਬ ਦੀ ਹਿੱਕ ਤੇ ਵਹਿੰਦੇ ਦਰਿਆਵਾਂ ਦਾ ਕੰਮ ਹੁਣ ਉਹਨੂੰ ਜਿਹੜੇ ਭਾਰਤ ਦੇ ਦਰਿਆਵਾਂ ਨੂੰ ਜੋੜਨ ਦੀ ਗੱਲ ਚੱਲ ਰਹੀ ਹੈ ਯਾਦ ਆ ਤੁਹਾਨੂੰ ਵੱਜਪਾਈ ਨੇ ਵੀ ਗੱਲ ਕੀਤੀ ਤੇ ਮੋਦੀ ਵੀ ਕਰ ਰਿਹਾ ਹੈ ਤੇ ਸਤਲੁਜ ਹਿਮਾਚਲ ਦੇ ਵਿੱਚੋਂ ਉੱਪਰਲੇ ਬੰਨਿਓ ਕਿਤੇ ਉਸ ਜੋੜਨ ਦੀਆਂ ਗੱਲਾਂ ਚੱਲ ਰਹੀਆਂ ਜਿਸ ਤਰ੍ਹਾਂ ਇੱਕ ਜਿਹੜੀ ਲੋਟ ਐ ਬਿਆਸ ਪਾਣੀ ਜਿਹੜਾ ਸੁੰਦਰ ਨਗਰ ਪ੍ਰੋਜੈਕਟ ਦੇ ਰਾਹੀਂ SLAPPD ਦੇ ਚ ਲਿਆ ਕੇ ਉਸ ਨੂੰ ਲੰਗਾ ਆਪਣੇ ਗਵਰਨਮੈਂਟ ਸਾਗਰ ਚ ਪਾਇਆ ਤੇ ਥੀਨ ਬੈਂਡ ਤੋਂ ਬਿਆਸ ਨੂ ਬਨ ਕੇ ਇੱਕ ਤਾਂ ਬਿਆਸ ਜਿਹੜਾ ਸਿੱਧਾ ਚਲੇ ਗਿਆ ਜੀ ਤੇ ਪੌਂਗਟਨ ਬੰਨਿਆ ਹੋਇਆ ਤੇ ਵੱਡੀ ਚੈਨਲ ਜਿਹੜੀ ਅੰਡਰ ਚੈਨਲ ਆ ਜਿਹੜੀ ਸੁੰਦਰ ਨਗਰ ਬਹੁਤ ਸਿੱਖਾਂ ਨੇ ਉਹ ਪ੍ਰੋਜੈਕਟ ਤੇ ਕੰਮ ਕੀਤਾ ਸਲਾਪੜ ਹਾਈਡਰੋ ਪਾਵਰ ਸਟੇਸ਼ਨ ਬਣਾ ਕੇ ਬੀਬੀ ਐਮਬੀ ਦੇ ਥੱਲੇ ਪੰਜਾਬ ਦੀ ਹੱਦ ਦੇ ਉੱਪਰ ਗਲਜਾਰੀ ਨਾਲ ਨੰਦਾ ਦੀ ਕਹਾਣੀ ਕਹਿੰਦਾ ਇਹੋ ਜਿਹਾ ਪੰਜਾਬ ਬਣਾ ਕੇ ਜਾਊਂਗਾ ਨੇ ਤਾਂ ਉੱਠਦੇ ਚੰਗਿਆੜਾ ਮਾਰਿਆ ਕਰਨਗੇ 6 ਕਿਲੋਮੀਟਰ ਆਪ ਸਪੀਨ ਤੇ ਬੀਬੀ ਐਮਬੀ ਦੇ ਥੱਲੇ ਪਾਖੜਾ ਡੈਮ ਬੰਦ ਕੇ ਨੰਗਲ ਤੋਂ ਉੱਪਰ ਹਮਾਚ ਲਾਲੇ ਪਾਸੇ ਫਸਤਾ ਵੱਡ ਤੇ ਪਰ ਇਸ ਗੱਲ ਦੀ ਹੀਟ ਐ ਇਸ ਗੱਲ ਦੀ ਜਿਹੜੀ ਤਪਸ਼ਾ ਨਾ ਇੱਥੇ ਤੁਸੀਂ ਬੈਠੇ ਸੁਣਦੇ ਸਮਝ ਰਹੇ ਆ ਤੇ ਨਾ ਪੰਜਾਬ ਦੇ ਬੰਦੇ ਸੰਸ ਇੱਥੇ ਸਮਝ ਰਹੇ ਹੋਣਗੇ ਪੰਜਾਬ ਵਾਲਿਆਂ ਨੂੰ ਤਾਂ ਪਤਾ ਹੀ ਉਹ ਕਹਿੰਦੇ ਬਾਲਟੀ ਲਮਕਾ ਚਾਰ ਡੂੰ ਮਾਰ ਨਲਕੀਆਂ ਤੇ ਪਾਣੀ ਭਰ ਜਾਂਦਾ ਪਾਣੀ ਕਿੱਥੇ ਮੁੱਕ ਗਿਆ ਐਵੇਂ ਤੇ ਰੱਖ ਕੇ ਖੜੇ ਜਿਵੇਂ ਅਫਰੀਕਾ ਦੇ ਵਿੱਚ ਲੋਕ ਸੜਾਂ ਚ ਤੁਰੇ ਫਿਰਦੇ ਆ ਦਾਰਫੋਰ ਦੇ ਏਰੀਆ ਚ ਉਸ ਤਰ੍ਹਾਂ ਫਿਰ ਪਤਾ ਲੱਗੂਗਾ ਪਾਣੀ ਮੁੱਕਿਆ ਜਾਂ ਨਹੀਂ ਕੱਲ ਦੀ ਬੋ ਕੱਲ ਸੌਰੀ ਕੱਲ ਦੋ ਜਿਹੜੇ ਨੇ ਲੋਹੜੀ ਦੇ ਸਬੰਧ ਦੇ ਵਿੱਚ ਵੱਡੇ ਫੰਕਸ਼ਨ ਹੋਏ ਨੇ ਪਛਾਨੇ ਪੰਜਾਬ ਵੱਲੋਂ ਹੋਇਆ ਪਾਲਵਿੰਦਰ ਸੈਂਟਰ ਚ ਰਾਇਲ ਬੈਂਕਟ ਹਾਲ ਦੇ ਵਿੱਚ ਰਾਇਲ ਕਿੰਗ ਦੇ ਵਿੱਚ ਤੇ ਦੂਸਰਾ ਹਰ ਸਾਲ ਸਿਰੇ ਦਾ ਫੰਕਸ਼ਨ ਕੀਤਾ ਜਾਂਦਾ ਕੁੜੀ ਮੁੰਡੇ ਦੀ ਲੋਹੜੀ ਜੀ ਦੀ ਫਿਰਤ ਐਮੀ ਕੋ ਤੇ ਉਸ ਟੀਮ ਨੇ ਸ਼ੁਰੂ ਕੀਤੀ 14 ਸਾਲ ਪਹਿਲਾਂ ਤੇ ਭਾਈਚਾਰ ਨੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਇਦੇ ਵਿੱਚ ਸਾਧ ਦਿੱਤਾ ਉਸ ਦਾ ਕੱਲ 14ਵਾਂ ਸਾਲ ਸੀ ਢਾਲੀਵਾਲ ਬੈਂਕਟ ਹਾਲ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਬੈਂਕਟ ਹਾਲ ਆ ਜਿਹੜਾ ਸੇਵਾ ਵੀ ਉਹ ਕਰਦੇ ਆ ਢਾਲੀਵਾਲ ਪਰਿਵਾਰ ਟੂਸਿਆਂ ਦਾ ਪਰਿਵਾਰ ਹੈ ਜਗਦੇਵ ਸਿੰਘ ਜੱਗਾ ਢਾਲੀਵਾਲ ਉਹਨਾਂ ਗਿਣਦੇ ਇਹ ਜੇ ਕੰਮਾਂ ਲਈ ਉਹ ਫਿਰ ਕਹਿੰਦੇ ਵੀ ਗੱਲੇ ਕੋਈ ਨਹੀਂ ਤੇ ਇਸ ਬੈਂਕਟ ਹਾਲ ਦੇ ਵਿੱਚ ਪਹਿਲਾਂ ਲੋੜੀ ਜਿਹੜਾ ਥੱਲੇ ਧੂਣੀ ਧੂਣੀ ਦੇ ਉੱਪਰ ਤੇਲ ਛੁੱਟ ਕੇ ਦਲਿਤਰਾ ਦੀ ਗੱਲ ਜਿਹੜੀ ਲਾਉਣ ਦੀ ਦੀ ਗੱਲ ਕਰਨ ਤੋਂ ਬਾਅਦ ਉੱਪਰ ਬੈਂਕਟ ਹਾਲ ਦੇ ਵਿੱਚ ਜਿਹੜਾ ਵੱਡਾ ਇਕੱਠ ਸਾਰੀ ਸੇਵਾ ਖਾਨ ਪਿੰਡ ਦੀ ਉੱਥੇ ਜਿਹੜਾ ਮਨੋਰੰਜਨ ਸੀ ਮਨੋਰੰਜਨ ਬਹੁਤ ਸਿਰੇ ਸੀ ਆਪ ਜਿਹੜਾ ਸਾਰਾ ਖੁਦ ਤਰੰਜਨ ਦੀ ਟੀਮ ਐਮੀ ਕੁਮੰਦ ਦੇ ਨਾਲ ਸਾਰੀਆਂ ਬੀਬੀਆਂ ਰਲ ਕੇ ਜਿੰਨ ਕਾ ਇੱਕ ਇੱਕ ਵੇਖਣ ਵਾਲੀ ਸੀ ਉਸ ਕੱਲੀ ਕਲੀ ਜਿਹੜੀ ਇੱਕ ਇੱਕ ਬੰਨਗੇ ਚਾਹੇ ਉਹ ਗਿੱਧਾ ਚਾਹੇ ਉਹ ਕੋਰੀਓਗ੍ਰਾਫੀ ਹੈ ਗੱਲ ਨਾ ਤਾਂ ਉਹ ਨੇ ਤੇ ਨਾ ਹੀ ਲੋਕ ਆ ਪਸੰਦ ਬਹੁਤ ਕਰਦੇ ਇਹ ਬਹੁਤ ਜ਼ਿਆਦਾ ਵਧੀਆ ਜਿਹੜਾ ਉਹ ਲੋਕਾਂ ਨੂੰ ਉਸਦੇ ਇਨਾਮ ਕੱਢੇ ਗਏ ਤੇ ਬਹੁਤ ਭਾਈਚਾਰੇ ਦੇ ਵੱਡੇ ਬਿਜ਼ਨਸ ਨੇ ਜਿਹੜੇ ਉਹਨੂੰ ਸਪੌਂਸਰ ਕਰਦੇ ਆ ਛੇ ਰਾਟਾ ਬਹੁਤ ਮਿਹਨਤ ਇਹਨਾਂ ਦੇ ਨਾਲ ਕਰਦਾ ਵਿੰਸ ਸਾਰਾ ਇਸ ਨੂੰ ਆਰਗੇਨਾਈਜ਼ ਕਰਦੇ ਸਾਰਾ ਜਤਿੰਦਰ ਸਿੰਘ ਨੇ ਮਾਸਟਰ ਆਫ ਸੈਰੇਮੋਨੀਆਂ ਐਮ ਸੀ ਕਰਕੇ ਸਟੇਜ ਦੀ ਜਿਹੜਾ ਸੰਭਾਲ ਕੀਤੀ ਉਹ ਬਹੁਤ ਜ਼ਿਆਦਾ ਵਧੀਆ ਕੀਤੀ ਸੇਰੀਆ ਦੇ ਪਰਿਵਾਰ ਜਿਹੜੇ ਮੁੜ ਪਰਿਵਾਰਾਂ ਨੂੰ ਉੱਥੇ ਸੱਦ ਕੇ ਮਾਣ ਦਿੱਤਾ ਗਿਆ ਉਹਨਾਂ ਦਾ ਉਹਨਾਂ ਨੂੰ ਵੈਲਕਮ ਕਿਹਾ ਗਿਆ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜੀ ਆਇਆਂ ਨੂੰ ਕਿਹਾ ਤਾਂ ਖੁਸ਼ ਹੋਏ ਸਦਨ ਇੱਕ ਸਰਦਾਰ ਖੜਾ ਹੋਰ ਵੀ ਬੋਲ ਰਿਹਾ ਤੇ ਖੁਦਾ ਨੂੰ ਬਾਤ ਜ਼ਿਆਦਾ ਵਧੀਆ ਲੱਗੀ ਏ ਕਾਕੇ ਮੈਨੂੰ ਕਹਿੰਦਾ ਵੀ ਕਿੱਥੇ ਰਿਆਂ ਤੂੰ ਮੈਂ ਕਿਹਾ ਮੈਂ ਵੀ ਦਾ ਹੀ ਲਾ ਲਾ ਲਾ ਲਾ ਇੰਤੇ ਮਾਕਲਾ ਮੈਨੂੰ ਝੂਠ ਬੋਲਨ ਸੀਰੀਆ ਤਾਂ ਹੈ ਨਹੀਂ ਤੂੰ ਮੈਂ ਕਿਹਾ ਫਿਰ ਮੈਂ ਸਿੱਖ ਲਈ ਕਿਤੇ ਕਹਿੰਦਾ ਸੋਹਣੀ ਲੱਗੀ ਮੈਨੂੰ ਮੇਰੇ ਕੋਲ ਬੰਦਾ ਇੱਕ ਆ ਬੈਠਾ ਰਿਹਾ ਗੱਲਾਂ ਵੜੀਆਂ ਸੁਣਾਈਆਂ ਇਹ ਧੀਆ ਤੇ ਪੁੱਤਾਂ ਦਾ ਇੱਕ ਬੈਠ ਕੇ ਅਸੀਂ ਵੇਖਿਆ ਆਪਣੀਆਂ ਧੀਆਂ ਅਸੀਂ ਨਾਲ ਲੈ ਕੇ ਗਏ ਸੋਹਣਾ ਲੱਗਿਆ ਬਹੁਤ ਏ ਦੇਖੋ ਕਈ ਵਾਰ ਜ਼ਿੰਦਗੀ ਦੀ ਫਿਰਤ ਆ ਉਹ ਸਭ ਜਦ ਮਨਾ ਰਹੇ ਛੋਟੀਆਂ ਬੱਚੀਆਂ ਨੂੰ ਬੇਟੀ ਮੇਰੀ ਕਹਿੰਦੀ ਵੀ ਮੇਰੀ ਲੋਹੜੀ ਡੈਡੀ ਤੁਸੀਂ ਬਣਾਈ ਸੀ ਇਹ 2003 ਦੀ ਗੱਲ ਹੈ ਦੋ ਦਾ ਦਾ ਜਨਮ ਹੈ ਜੇ ਮੈਂ ਕਿਤੇ ਉੱਥੇ ਖੁੰਝਿਆ ਹੁੰਦਾ ਤੇ ਮੈਂ ਉਸ ਧੀ ਦੀਆਂ ਅੱਖਾਂ ਚੱਖਾਂ ਪਾ ਕੇ ਪਤਾ ਹੀ ਨਹੀਂ ਮੈਂ ਕਿੱਥੇ ਜਾ ਕੇ ਨੇਰੇ ਚ ਖੜਦਾ ਜਾ ਕੇ ਮੈਂ ਕਿਹਾ ਪੁੱਤਰਾ ਐ ਠੋਕ ਕੇ ਮਨਾਈ ਸੀ ਪਰ ਪਹਿਲੀਆਂ ਲੋੜੀਆਂ ਚੋਂ ਸੀ ਪਿੰਡਦਿਆਂ ਚੋਂ ਤੇ ਉਸ ਦਿਨ ਤੋਂ ਬਾਅਦ ਪਰਤਾਂ ਪਈਆਂ ਤੇ ਕਦੇ ਨਹੀਂ ਸੀ ਸੋਚਿਆ ਕਿ ਇਹ 14 ਸਾਲ ਬਾਅਦ ਇਹ ਸਵਾਲ ਪੁੱਛਿਆ ਜਾਊ ਸੋ ਮੈਂ ਬੇਨਤੀ ਕਰਦਾ ਜਿੱਥੇ ਪੁੱਤਾਂ ਦਾ ਪਿਆਰ ਉੱਥੇ ਧੀਆਂ ਦਾ ਪਿਆਰ ਕਰਕੇ ਉਹਨਾਂ ਨੂੰ ਬਰਾਬਰ ਦੇ ਕੱਦ ਦਾ ਕਰਕੇ ਦਾ ਮਾਣ ਕਰਿਆ ਕਰੋ ਇਸਤਰੀ ਨੂੰ ਜਦ ਤੱਕ ਤੁਸੀਂ ਸਤਕਾਰ ਨਹੀਂ ਦਿੰਦੇ ਆਪਣੇ ਸਮਾਜ ਦੇ ਵਿੱਚ ਜਦ ਤੱਕ ਸਮਾਜ ਸੰਪੂਰਨ ਨਹੀਂ ਹੈ ਸ੍ਰੀ ਨੂ ਵੀ ਗਾਂ ਚਾਹੀਦਾ ਦਿੱਤਾ ਮਾਨ ਪਲੇ ਚ ਪਵਾ ਕੇ ਉਹਨੂੰ ਸਿਰ ਮੱਥੇ ਕਰਕੇ ਰੱਖਿਆ ਜਾਵੇ ਖੰਡਾਵੇ ਨਾ ਕਈ ਵਾਰ ਹੁੰਦਾ ਮਾਣ ਦਿੱਤਾ ਇੰਨਾ ਜਾਂਦਾ ਫਿਰ ਉਹਦੀਆਂ ਮਾਣ ਨੂੰ ਲਟਾ ਪੀਂਗ ਹੋ ਕੇ ਕਈ ਵਾਰ ਪਾੜ ਪਾੜ ਕੇ ਸੁੱਟਿਆ ਜਾਂਦਾ ਕੁਝ ਇੱਕ ਦਿੱਤੀਆਂ ਸਹੂਲਤਾਂ ਕੁਝ ਇੱਕ ਦਿੱਤੀਆਂ ਦਿੱਤੇ ਮਾਣ ਨੂੰ ਫਿਰ ਜਾਂ ਖਖੜੀਆਂ ਕਰੇਲੇ ਕੋਈ ਕਰਦਾ ਫਿਰ ਬਹੁਤ ਔਖਾ ਹੁੰਦਾ ਪਰ ਇਹ ਉਦਮ ਲਈ ਤਰੰਜਨ ਦਾ ਧੰਨਵਾਦ ਹੈ ਇਸ ਦੇ ਵਿੱਚ ਸਾਰਾ ਭਾਈਚਾਰਾ ਰਲ ਕੇ ਇਸ ਨੂੰ ਬਹੁਤ ਵਧੀਆ ਆਰਗੇਨਾਈਜ਼ ਕੀਤਾ ਤੇ ਸਾਰੇ ਬਿਜ਼ਨਸ ਦੇ ਮੈਨ ਜਿਹੜੇ ਨੇ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਰਲ ਕੇ ਵਧੀਆ ਕਿ ਮਨਾਇਆ ਅਗਲੇ ਸਾਲ ਫੇਰ ਇਸ ਦਾ ਵਾਅਦਾ ਕਰਕੇ ਕੁੜੀ ਮੁੰਡੇ ਦੀ ਲੋਹੜੀ ਜਿਹੜੀ ਹੈ ਮਨਾਈ ਜਾਵੇਗੀ ਤੇ ਇਸ ਲਈ ਇਸ ਤੋਂ ਬਾਅਦ ਵਿਦਾਈ ਹੋਈ ਤੇ ਨੂੰ ਇਹ ਨੂੰ ਬੰਸਾਰਾਂ ਦੀ ਸਾਰੀ ਟੀਮ ਜਿੰਨੀਆਂ ਵੀ ਵੀ ਨੇ ਬਹੁਤ ਜ਼ਿਆਦਾ ਮਿਤ ਕਰਦੇ ਹਨ ਸਾਰਾ ਹਾਲ ਜਿਹੜਾ ਆਰਾਮ ਦੇ ਨਾਲ ਬੈਠ ਕੇ ਨਜ਼ਾਰੇ ਆਪਣੇ ਲੈਂਦਾ ਰਿਹਾ ਸੋਣਾ ਉਹਨਾਂ ਨੂੰ ਵਧੀਆ ਲੱਗਿਆ ਤੇ ਪੰਜਾਬ ਇਸ ਵਧੀਆ ਤਿਹਾਰ ਦੀ ਮਹਿਕ ਜਿਹੜੀ ਉਹ ਮਿਲਦੀ ਰਹੀ। ਫੇਰ ਇੱਕ ਵਾਰ ਐਮੀ ਕੁਮੜ ਨੂੰ ਬਹੁਤ ਵਧਾਈਆਂ ਨੇ ਤੇ ਸਰ ਜਤਿੰਦਰ ਸਿੰਘ ਮੈਨੇਜਰ ਨੂੰ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਧੀਆ ਇਸ ਨੂੰ ਸਮਾਗਮ ਨੂੰ ਨੇ ਪਰਚਾੜਿਆ ਚੰਦਰਾ ਬਡਾਲੀਆ ਦਾ ਬਹੁਤ ਮਾਣ ਹੋਇਆ ਤੁਹਾਨੂੰ ਦੇ ਸਾਰੇ ਸਮਾਗਮਾਂ ਚੋਂਦੇ ਪਿੱਛੇ ਜੇ ਨਾਮਰਾਦ ਬਿਮਾਰੀ ਕਰਕੇ ਚੰਦਰਾ ਬਿਮਾਰ ਹੋ ਗਏ ਤੇ ਸਾਰੀਆਂ ਕਮਿਊਨਿਟੀ ਨੇ ਰਲ ਕੇ ਬਹੁਤ ਵੱਡੀ ਉਹਨੂੰ ਵਿੱਤੀ ਮਦਦ ਕੀਤੀ ਘਰ ਉਹਦਾ ਫ੍ਰੀ ਕਰ ਦਿੱਤਾ ਤੇ ਹੋਰ ਉਹਨੂੰ ਪੈਸਾ ਤੇਰਾ ਦਿੱਤਾ ਉਹਦੇ ਮਨ ਦੇ ਵਿੱਚ ਸਾਡੇ ਪ੍ਰਤੀ ਹੋਰ ਵੀ ਪਿਆਰ ਵਧਿਆ ਯਾਰ ਇਹ ਜੇ ਲੋਕ ਅਕਸਰ ਸਾਰੇ ਇਸ ਮਾਗਮਾ ਤੇ ਚੰਦਾ ਹੁੰਦਾ ਜਿਹੜਾ ਭਾਰੀ ਚੰਦਰਾ ਹੁੰਦਾ ਸੀ ਹੁਣ ਬਹੁਤ ਪਤਲਾ ਹੋ ਗਿਆ ਹਲੇ ਬੋਲ ਨਹੀਂ ਸਕਦੇ ਹੁਣ ਫੋਟੋਆਂ ਹਲੇ ਵੀ ਖਿੱਚਦਾ ਹਰ ਇਕੱਠ ਦਾ ਬਹੁਤ ਵਧੀਆ ਇੰਤਜ਼ਾਮ ਸੀ ਢਾਲੀਵਾਲ ਬੈਂਕ ਖਾਲ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਇਕੱਠ ਹੋਇਆ ਮੈਨੂੰ ਮੇਰੇ ਮਨ ਦੇ ਵਿੱਚ ਇਹ ਸੀ ਕਿ ਬੀਬੀਆਂ ਦਾ ਹੀ ਇਕੱਠਾ ਮੈਂ ਕਦੇ ਨਹੀਂ ਸੀ ਗਿਆ ਪਹਿਲੀ ਵਾਰ ਮੈਂ ਗਿਆ ਤੇ ਮਰਦ ਵੀ ਬਹੁਤ ਆਏ ਹੋਏ ਸੀ ਪਰ ਸੋਹਣਾ ਬਹੁਤ ਲੱਗਿਆ ਇੱਕ ਤਾਂ ਗਿੱਧਾ ਪਾਉਂਦੀਆਂ ਸਾਰੀਆਂ ਕੁੜੀਆਂ ਮੁੰਡੇ ਆਪਣੇ ਬੀਬੀਆਂ ਥੱਕ ਜਾਂਦੀਆਂ ਕਿਉਂਕਿ ਪ੍ਰੈਕਟਿਸ ਚਾਹੀਦੀ ਹੈ ਇਤਿਰੰਜਣ ਵਾਲੀਆਂ ਨਹੀਂ ਥੱਕਦੀਆਂ ਅੱਡੀ ਆ ਘੁੱਕਦੀ ਹੈ ਜਿਵੇਂ ਚਰਖਾ ਘੁੱਕਦਾ ਲਾਟੂ ਵਾਂਗੂ ਘੁੱਕਦੀ ਤੇ ਫਿਰ ਡਾਂਸ ਫਲੋਰ ਤੇ ਜਦ ਕਦੇ ਸਮਾਂ ਮਿਲਦਾ ਹੈ ਬੀਜੇ ਵਾਲਾ ਮਾਰਦਾ ਮੈਨੂੰ ਉਹ ਦੀਜ਼ੇ ਵਾਲੇ ਨੇ ਜਦ ਕਹਿ ਕੇ ਸ਼ੁਰੂ ਕੀਤਾ ਲਲਕਰਾ ਐ ਲੱਗਿਆ ਜਿਵੇਂ ਪੰਜਾਬ ਦੀ ਕਿਸੇ ਜਾਗੋ ਦਾ ਲਲਕਰਾ ਹੋ ਪਈ ਦੇ ਢੇੜਾ ਹੋਣਾ ਉੱਚੀ ਦੇ ਕੇ ਜਦ ਕਹਿ ਦਿੰਦਾ ਬੰਦਾ ਸਿਰ ਦਾ ਸਾਈ ਫੇਰ ਕਾਂਤੀ ਘੁੰਮਦੀ ਆ ਪੂਰੀ ਫੇਰ ਝਾਂਜੜਾ ਫੇਰ ਛਣਕਦੀਆਂ ਕੰਨਾਂ ਨੂੰ ਛਣ ਛਣ ਛਣ ਛਣ ਛਣ ਛਣ ਹੁੰਦੀ ਹੈ ਜਦ ਤੱਕ ਸਿਰ ਦਾ ਸਾਈ ਨਾ ਕਵੇ ਜਦ ਤੱਕ ਅਕਸਰ ਬੀਬੀਆਂ ਨੀ ਤੇ ਡੀਜੇ ਦੇ ਵਿੱਚ ਬਹੁਤ ਵਧੀਆ ਸਾਰਾ ਸਾਰਿਆਂ ਨੇ ਆਪਣਾ ਇੰਜੋਏ ਕੀਤਾ ਖੁਸ਼ ਵੀ ਹੋਣਾ ਚਾਹੀਦਾ ਡਾਂਸ ਆ ਜਿਹੜਾ ਇੱਕ ਨੱਚਣਾ ਜਿਹੜਾ ਮਰਦਾਂ ਦਾ ਭੰਗੜਾ ਬੀਬੀਆਂ ਦਾ ਗਿੱਧਾ ਇਹ ਇਦੋਂ ਵਧੀਆ ਐਕਸਰਸਾਈਜ਼ ਕੋਈ ਨਹੀਂ ਇਦੋਂ ਉੱਪਰ ਰੂਹ ਦਾ ਖੇੜਾ ਕੋਈ ਨਹੀਂ ਤੇ ਬਹੁਤ ਵਧੀਆ ਇਟ ਵਾਸ ਅ ਵੰਡਰਫੁਲ ਇਵੈਂਟ ਤੇ ਬਹੁਤ ਧੰਨਵਾਦ ਹੈ ਸਰੀਆ ਦੇ ਲੋਕ ਬਹੁਤ ਖੁਸ਼ ਹੋਏ ਚੀਕੂ ਉਹਨਾਂ ਦੇ ਬੱਚੇ ਆਏ ਹੋਏ ਸੀ ਤੇ ਉਹਨਾਂ ਨੂੰ ਦੱਸਿਆ ਗੱਲ ਕੀਤੀ ਵੀ ਇੱਕ ਦਸਾਲ ਪਹਿਲਾਂ ਕਦੇ ਅਸੀਂ ਸ਼ੁਰੂ ਕੀਤਾ ਤੁਸੀਂ ਵੀ ਨਵੇਂ ਹੋ ਸਾਰਾ ਕੁਝ ਆ ਜਾਣਾ ਇਹ ਦੀਆਂ ਵਰਕਟਾਂ ਨੇ ਫਿਕਦੇ ਨਾਲ ਬਰਨੋ ਬੜੇ ਖੁਸ਼ ਹੋ ਇਹ ਇੱਕ ਕਮਰਗੱਤ ਵਰਦਾ ਗੀਤ ਆ ਕਿ ਫਿਰ ਰਾਕਟ ਸਾਇੰਸ ਦੀ ਗੱਲ ਕਰਦਾ ਫਾਲਕਨ 9 ਇਲਨ ਮਸਕ ਮਸਤ ਦੇ ਸਪੇਸਐਕਸ ਨੇ ਕੈਲੀਫੋਰਨੀਆ ਰੇਅਰ ਬੇਸ ਤੋਂ ਵਾਲੇ ਤੋਂ ਬਾਹਰ ਰਾਕਟ ਜਿਹੜਾ ਸੈਟੇਲਾਈਟਸ ਨੂੰ ਛੱਡ ਕੇ ਦੁਆਰਾ ਪੈਸੀਫਿਕ ਓਸ਼ੀਅਨ 'ਚ ਲਾ ਲਿਆ ਉਹਨਾਂ ਨੇ ਸਿਰੇ ਹੋ ਗਈ ਕਿੰਨੀਆਂ ਸੈਟੇਲਾਈਟਸ ਨੇ ਕਿੰਨੇ ਕਬਜੈਕਟ 1500 ਮੰਡਲ ਦੇ ਵਿੱਚ ਸਾਡੇ ਖਲਾਅ ਦੇ ਵਿੱਚ ਘੁੰਮ ਰਹੇ ਨੇ ਉਹਨਾਂ ਦੀ ਤੀਬਰਤਾ ਕਿੰਨੀ ਹੈ ਰਾਕੇਟ ਕਿਵੇਂ ਚੜਦੇ ਆ ਰਾਕੇਟ ਨੂੰ ਕਿੰਨਾ ਤੇਜ਼ ਧਰਤੀ ਦੀ ਗਰੂਤਾ ਸ਼ਕਤੀ ਤੋਂ ਬਾਹਰ ਕੀਤਾ ਜਾਂਦਾ ਸੈਟਲਾਈਟਸ ਨੇ ਜਿਹੜੀਆਂ ਉਪਗ੍ਰਹ ਦੇ ਪਿੱਛੇ ਪਿੱਛੇ ਚੱਲਣ ਵਾਲੀਆਂ ਸੈਟਲਾਈਟ ਦਾ ਪੰਜਾਬੀ ਚ ਤਰਜਮਾ ਇਹ ਆ ਕਿ ਉਪਗ੍ਰਹ ਦੇ ਪੈਰ ਦੱਬਦਾ ਜਿਵੇਂ ਜਿਵੇਂ ਮਰਦ ਦੇ ਪਿੱਛੇ ਕਦੇ ਪਹਿਲਾਂ ਦੂਰੋਂ 2 ਕਿਲੋਮੀਟਰ ਤੋਂ ਬਸ ਚੜਦੇ ਹੁੰਦੇ ਸੀ ਨਾ ਬੰਦਾ ਮੂਹਰੇ 3 ਫੁੱਟ ਛੱਡ ਕੇ ਸਰਦਾ ਨਹੀਂ ਹੁੰਦੇ ਸੀ ਜਿੱਥੇ ਮੂਹਰੇ ਪੈਰ ਰੱਖ ਲਏ ਉੱਥੇ ਉਹ ਰੱਖਦੀ ਹੁੰਦੀ ਸੀ ਨੀਵਾ ਨੀਵੀਂ ਹੁੰਦੀ ਸੀ ਢੰਡ ਕੱਢਿਆ ਹੁੰਦਾ ਪਿੰਡ ਚੋਂ ਲਿੰਗੜਾ ਹੁੰਦਾ ਚਾਂਦੀ ਦੀਆਂ ਝਾਂਜਰਾ ਉੱਚੀ ਅੱਡੀ ਦਾ ਸੈਂਡਲ ਕਮਰਗਰੇਵਾਲ ਦਾ ਗੀਤ ਕੱਲ ਜਗ ਸਪੋਰਟ ਕਬੱਡੀ ਕਲੱਬ ਦੀ ਜਿਹੜੀ ਇੱਕ ਮੀਟਿੰਗ ਹੋਈ ਦੂਮ ਰੈਸਟੋਰੈਂਟ ਦੇ ਵਿੱਚ ਜਿਸ ਦੀ ਜਿਸ ਨੂੰ ਕਮਲਜੀਤ ਸਿੰਘ ਕਾਂਗ ਨੀਟੂ ਕਾਂਗ ਤੇ ਲਾਲੀ ਤੇ ਨੇ ਜਿਸ ਅੱਜ ਆ ਸੀ ਤੇ ਇਸ ਕਲੱਬ ਦੇ ਸਾਰੇ ਔਦੇਦਾਰ ਸਾਰੇ ਸਮਰਥਕ ਇਹਦੇ ਵਿੱਚ ਪਹੁੰਚੇ ਸੀ ਇਸ ਸਾਲ ਦੇ ਲਈ ਕਿਹੜੇ ਨੇ ਤੇ ਕਿਹਜਾ ਨੇ ਪ੍ਰਧਾਨ ਹੈ ਜਿਹੜਾ ਯੰਗ ਸਪੋਰਟਸ ਕਲੱਬ ਦੇ ਵਿੱਚ ਬਹੁਤ ਕੰਮ ਕਰਦਾ ਤੇ ਹੋਰ ਵੀ ਇਹਦੇ ਔਦੇਦਾਰ ਜਿੰਨੇ ਵੀ ਨੇ ਉਹ ਸਾਰੇ ਸ਼ਾਮਲ ਹੋਏ ਸਨ ਉਈ ਨਾ ਰਹਿ ਨਾ ਜਾਵੇ ਇਹਦੇ ਲਈ 30 35 ਜਣੇ ਸੀ ਫ੍ਰੀਡਰ ਵੈਲੀ ਕਬੱਡੀ ਕਲੱਬ ਦਾ ਇਸ ਤੇ ਇਸ ਸਾਲ ਲਈ ਪ੍ਰਧਾਨ ਬਣਾਇਆ ਗਿਆ ਤਖਰ ਐਕਸਕੇਵੇਟਿੰਗ ਬਿਜ਼ਨਸ ਹੈ ਤੇ ਪੀਐਲ ਫਾਈਨੈਂਸ਼ੀਅਲ ਤਖਰ ਐਕਸਕੇਵੇਟਿੰਗ ਹਰਜਿੰਦਰ ਸਿੰਘ ਤਖਰ ਹਿਸਾਬਦਾਰ ਤੇ ਅੰਦਰਜੀਤ ਸਿੰਘ ਗਿਲ ਰੂਮੀ ਅਮਰੀਕ ਸਿੰਘ ਤਖਰ ਹਿਸਾਬਦਾਰੇ ਪਰਿਵਾਰ ਦੋਨੇ ਆਪਸ ਵਿੱਚ ਰਿਸ਼ਤੇਦਾਰ ਨੇ ਇਹਨਾਂ ਦੀ ਇਹ ਕੰਪਨੀ ਹੈ ਤੇ ਨਰਜੀਤ ਸਿੰਘ ਗਿਲ ਰੂਮੀ ਦੇ ਨਾਲ ਕਰਨਜੀਤ ਸਿੰਘ ਬਰਾੜ ਡਗਰੂ ਤੇ ਜੰਟਾ ਲੱड्डੂ ਇਹ ਸਿੰਘ ਗਿਲ ਦੀਆਂ ਸਵਾਭਾ ਨੂੰ ਦੇਖਦੇ ਆ ਪ੍ਰਧਾਨ ਇਸ ਜੰਗ ਸਪੋਰਟਸ ਕਲੱਬ ਦਾ ਬਰਾਇਆ ਗਿਆ ਬਹੁਤ ਸਿਰੇ ਦੇਸ ਦੇ ਪਲੇਅਰ ਆਉਣੇ ਨੇ ਤੇ ਨੈਸ਼ਨਲ ਕਵਡਿਟੀ ਫੈਡਰੇਸ਼ਨ ਦੇ ਤਹਿਤ ਇਹ ਮੈਚ ਹੋਣੇ ਨੇ 6 ਤੋਂ 7 ਜਿਹੜੇ ਕੱਪ ਨੇ ਉਹ ਸਰੀਚ ਹੋਣਗੇ ਗੁਰਦੁਆਰਾ ਸਾਹਿਬ ਤੇ ਵਰਲਡ ਕੱਪ ਤੇ ਬਹੁਤ ਵਧੀਆ ਟੂਰਨਾਮੈਂਟ ਹੋਣੇ ਨੇ ਇਸ ਵਾਰ ਇਹ ਗਿੱਲ ਨੂੰ ਵੱਡੀ ਇਹਦੇ ਦੇ ਗਈ ਹੈ ਤੇ ਉਹਨੂੰ ਵਾਣ ਦੇ ਵਿੱਚ ਕੰਮ ਬਹੁਤ ਕਰਦੇ ਆ ਰਾਤ ਤਾਨੂੰ ਪਲੇਅਰ ਨੂੰ ਲਿਆਉਣਾ ਸੱਜਣਾ ਰੋਕੀ ਪਾਣੀ ਤੇ ਬਹੁਤ ਕੁਸ਼ ਪਲੇਅਰ ਬੜੇ ਮਹਿੰਗੇ ਨੇ 30-30 ਹਜ਼ਾਰ ਡਾਲਰ ਪਲੇਅਰ ਲੈਂਦੇ ਆ ਇੱਕ ਗੇੜੇ ਦਾ ਦੇਖ ਲਓ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਨਿਕਲ ਕੇ 15-15 ਲੱਖ ਰੁਪਏ ਗੱਲ ਦਾ ਉਹਨਾਂ ਨੇ ਜਿੰਨੇ ਵੀ ਸਪੋਰਟਰ ਨੇ ਉਹਨਾਂ ਦਾ ਧੰਨਵਾਦ ਕੀਤਾ ਬਹੁਤ ਵਧੀਆ ਇਸ ਸਾਲ ਦੇ ਮੈਚ ਹੋਣਗੇ ਹੁਣ ਵੀਕਐਂਡ ਗੱਲ ਤੁਹਾਨੂੰ ਸੁਣਾਵਾਂ ਮੀਲਨ ਮਸਕ ਦਾ ਨਾਮ ਤੁਸੀਂ ਸੁਣਦੇ ਹੋ 1971 ਚ ਇਲਨ ਦਾ ਜਨਮ ਹੋਇਆ 20 ਸਾਲ ਦੀ ਉਮਰ ਦੇ ਵਿੱਚ ਉਹ ਮਲਟੀ ਮਿਲੀਅਨਰ ਬਣ ਗਿਆ ਸੀ ਕੈਨੇਡੀਅਨ ਉਸਦੀ ਮਾਤਾ ਹੈ ਤੇ ਸਾਊਥ ਅਫਰੀਕਨ ਉਸਦਾ ਪਿਤਾ ਹੈ ਪ੍ਰੀਟੋਰੀਆ ਦੇ ਵਿੱਚ ਸਾਊਥ ਅਫਰੀਕਾ ਚ ਉਸਦਾ ਜਨਮ ਹੋਇਆ ਤੇ ਸਾਲ ਦੀ ਉਮਰ ਦੇ ਵਿੱਚ ਕੰਪਿਊਟਰ ਦੇ ਵਿੱਚ ਉਹਦਾ 1981 ਦੇ ਵਿੱਚ ਕੰਪਿਊਟਰ ਚ ਬਹੁਤ ਜ਼ਿਆਦਾ ਉਸਦਾ ਮਨ ਲੱਗਣ ਲੱਗਿਆ ਉਹਦੇ ਪੇਰੈਂਟਸ ਜਿਹੜੇ ਨੇ ਉਹਨਾਂ ਦਾ ਤਲਾਕ ਹੋ ਗਿਆ ਤੇ ਜਦ 12 ਸਾਲ ਦਾ ਸੀ ਉਹਨੇ ਪਹਿਲਾ ਆਪਣਾ ਸੌਫਟਵੇਅਰ ਬਣਾਇਆ ਤੇ ਇੱਕ ਗੇਮ ਬਣਾਈ ਉਸਦਾ ਨਾਮ ਦੀ ਦੇ ਵਿੱਚ ਬੜਿਆ ਕਿਉਂਕਿ ਸਾਊਥ ਅਫਰੀਕਨ ਦੀ ਮਿਲਟਰੀ ਦੇ ਵਿੱਚ ਪੱਕਾ ਜਾਣਾ ਪੈਣਾ ਸੀ ਤੇ ਇੱਥੇ ਆ ਕੇ ਉਹਦੇ ਬਾਅਦ 1992 ਦੇ ਵਿੱਚ ਉਹ ਪੈਂਸਿਲਵੇਨੀਆ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਚ ਬਿਜ਼ਨਸ ਦੀ ਡਿਗਰੀ ਕਰਕੇ ਇਕਨੋਮਿਕਸ ਬੈਚਲਰ ਦੀ ਜਿਹੜੀ ਡੀ ਕਰਨ ਲਈ એનર્ਜੀ ਤੇ ਫਿਜ਼ਿਕਸ ਦੇ ਲਈ ਆਇਆ ਤਾਂ ਫਿਰ ਉਸਨੇ ਪਹਿਲੀ ਆਪਣੀ ਕੰਪਨੀ ਜ਼ਿਪ 2 ਕਾਰਪੋਰੇਸ਼ਨ ਬਣਾਈ ਜਿਹਦੇ ਵਿੱਚ ਜ਼ਿਪ ਕੋਡ ਜਿਹੜੇ ਅਮਰੀਕਾ ਦੇ ਉਹਦੇ ਵਿੱਚ ਇਸ ਵੈਬਸਾਈਟ ਤੇ ਸੀ ਟਾਈਮ ਤੇ ਸ਼ਿਕਾਗੋ ਟ੍ਰਿਬਿਊਨ ਨੇ ਬੜੀਆਂ ਐਸੀਆਂ ਗੱਲਾਂ ਕੀਤੀਆਂ 1999 ਦੇ ਵਿੱਚ कंपेयर कंप्यूटर कॉर्पोरेशन ਨੇ 1060 ਮਿਲੀਅਨ ਦੀ ਇਹਨੂੰ ਖਰੀਦ ਲਿਆ ਤੇ ਦੀ ਸਟਾਕ ਦੀ ਆਪਸ਼ਨ ਇਲਨ ਦੇ ਕੋਲ ਹੋਈ ਸੀ ਮੈਂ 1999 ਚ ਮਸਕ ਨੇ x.com ਖੋਲੀ ਜਿਹੜਾ ਫਾਈਨੈਂਸ਼ੀਅਲ ਸਰਵਿਸਿਜ਼ ਤੇ ਪੇਮੈਂਟ ਦੀ ਪੈਸੇ ਦੇਣਾ ਉਹਦੇ ਸੰਨ ਦੇ ਵਿੱਚ ਸਾਲ ਸੀ ਹੈ ਤੁਹਾਡੀ ਜਾਣਕਾਰੀ ਸਾਹਮਣੇ ਰੱਖਦਾ ਤੇ ਗਾਹ ਪੈਸੇ ਕੋਈ ਨਾ ਹੋ ਜਵੇ ਉਹ 2002 ਦੇ ਵਿੱਚ eBay ਨੇ ਇਹ ਲੈ ਲਈ 1.5 ਬਿਲੀਅਨ ਦੇ ਦੇ ਸਟਾਕ ਹੋਏ 11% PayPal ਦੇ ਸਟਾਕ ਇਲਨ ਕਾਲਡ ਨੇ ਤੇ ਉਹਦੇ ਬਾਅਦ ਫਿਰ SpaceX ਉਸਨੇ ਬਣਾਈ 2002 ਦੇ ਵਿੱਚ Space Exploration Technologies Corporation ਸੀ ਇੱਕ ਸਾਡੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਵਿੱਚੋਂ ਉੱਥੇ ਡਿਲੀਵਰੀ ਭੇਜਣੀ ਉੱਥੋਂ ਗਾਰਬੇਜ ਲੈ ਕੇ ਆਉਣਾ ਜਾਂ ਪੁਲਾੜ ਕਰਨੇ ਉਹਦੇ ਲਈ ਬਹੁਤ ਵੱਡਾ ਕੰਮ ਹੈ ਸ਼ਟਲਸ ਛੱਗਣੀਆਂ ਪੈਂਦੀਆਂ ਨੇ ਉਹਦੇ ਤੇ ਕੰਮ ਕਰਨਾ ਟੈਸਲਾ ਕਾਰਾਂ ਦੀਆਂ ਗੱਲਾਂ ਤੁਹਾਡੇ ਕੋਲ ਨੇ ਸਪੇਸਐਕਸ ਦੀ ਫਾਲਕਨ 9 ਜਿਹੜਾ ਇੱਕ ਹੈ ਜਿਹੜਾ ਬਿਨਾਂ ਕਿਸੇ ਬੰਦੇ ਤੋਂ ਅਨਮੈਨਡ ਕੈਪਸੂਲ ਜਿਹੜਾ ਭੇਜਿਆ ਤੇ ਇਸਨੇ ਕੰਮ ਸ਼ੁਰੂ ਕੀਤਾ ਰੌਕਟ ਜਿਹੜੇ ਨੇ ਉਹਨਾਂ ਨੂੰ ਭੇਜਿਆ ਜਾਂਦਾ ਹੈ ਪੁਲਾੜ ਦੇ ਵਿੱਚ ਜਾਂ ਤਾਂ ਉਹ ਸੈਟੇਲਾਈਟਸ ਲੈ ਕੇ ਜਾਂਦੇ ਨੇ ਜਿਹੜੇ ਸੈਟੇਲਾਈਟ ਸਾਡੀ ਕੰਮ ਆਉਂਦੀਆਂ ਨੇ ਜਿਹਦੇ ਵਿੱਚ ਜੀਪੀਐਸ ਦਾ ਸਿਸਟਮ ਤੇ ਹੋਰ ਬਹੁਤ ਅ ਚੀਜ਼ਾਂ ਨੇ ਜਿਹੜੀਆਂ ਉਹ ਸੈਟੇਲਾਈਟਸ ਨੂੰ ਜਿਹੜੇ ਰੌਕਟ ਛੱਡਦੇ ਆ ਲੈ ਕੇ ਜਾਂਦੇ ਆ ਰੌਕਟ ਵੀ ਉੱਪਰੇ ਰਹਿ ਜਾਂਦੇ ਆ ਡੈਬਰੀਜ਼ ਦੇ ਉਹ ਰਹਿ ਜਾਂਦੇ ਨੇ ਉੱਪਰ ਪੁਲਾੜ ਦੇ ਵਿੱਚ ਤੁਰੇ ਫਿਰਦੇ ਆ ਧਰਤੀ ਚਾਰੇ ਰਹਿੰਦੇ ਆ ਬਹੁਤ ਤੇਜ਼ ਗਤੀ ਨਾਲ 18000 ਮੀਲ ਪਰ ਸੈਕਿੰਡ ਇੰਨੀ ਤੇਜ਼ੀ ਦੇ ਨਾਲ ਉਹ ਆ ਸਾਰੇ ਜਿਹੜੇ ਨੇ ਇਹ ਉਹਦੇ ਵਿੱਚ ਸਾਡੇ ਪੁਲਾੜ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਹ ਫਿਰਦੇ ਆ ਇਹਦੇ ਮੁਰਕੇ ਬਹੁਤ ਘੱਟ ਆਉਂਦੇ ਸੀ ਤੇ ਮੁਰਦਾ ਹੀ ਨਹੀਂ ਸੀ ਇੱਕ ਨਵੀਂ ਚੀਜ਼ ਜਿਹੜੀ ਹੈ ਸ਼ੁਰੂ ਕੀਤੀ ਉਸ ਦੇ ਵਿੱਚ ਰਾਕਟ ਜਿਹੜਾ ਫਾਲਕਨ 9 ਹੈ ਉਹ ਛੱਡ ਕੇ ਉਹਨੂੰ ਲਾਉਣ ਦੀ ਗੱਲ ਸੀ ਰਾਕਟ ਕੀ ਹੈ ਰਾਕਟ ਇੱਕ ਕੈਪਸੂਲ ਨੁਮਾ ਤੇਲ ਦਾ ਭੰਡਾਰ ਆ ਦੇਣ ਲਈ ਕਿਉਂਕਿ ਜਦੋਂ ਧਰਤੀ ਦੇ ਗੁਰੂਤਾ ਸ਼ਕਤੀ ਤੋਂ ਬਾਹਰ ਨਿਕਲਣਾ ਹੈ ਕੁਝ ਸਮੇਂ ਚ ਉਹ ਸਾਡਾ ਧਰਤੀ ਦੇ ਇਸ ਵਾਯੂ ਮੰਡਲ ਬਾਹਰ ਨਿਕਲਣਾ ਚਾਹੀਦਾ ਉਹਨੂੰ ਬਹੁਤ ਤੇਜ਼ੀ ਦੇ ਨਾਲ ਹੋ ਉੱਪਰ ਨੂੰ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਸਿੱਧਾ ਹੀ ਨਹੀਂ ਉੱਪਰ ਨੂੰ ਚੜਦਾ ਆਤਿਸ਼ਵਾਦੀ ਵਾਂਗੂ ਉਹ ਕੁਝ ਕਿਲੋਮੀਟਰਾਂ ਤੇ ਜਾ ਕੇ ਟੇਡ ਮੰਡਾ ਟੇਡ ਤੋਂ ਬਾਅਦ ਫਿਰ ਉਸ ਦਾ ਕੈਪਸੂਲ ਦਾ ਸਟੇਜ 1 ਸਟੇਜ 2 ਐ ਥੱਲੇੋਂ ਜਿਹੜਾ ਉਹਨੂੰ ਜ਼ੋਰ ਦੇ ਨਾਲ ਇੰਜਨ ਲੈ ਕੇ ਜਾਂਦੇ ਨੇ ਉਹ ਲੈ ਜਾਂਦੇ ਨੇ ਫਿਰ ਉੱਪਰ ਵਾਲਾ ਰਹਿ ਜਾਂਦਾ ਅਖੀਰ ਦੇ ਵਿੱਚ ਉਹਦੇ ਵਿੱਚ ਸੈਟੇਲਾਈਟਸ ਨਿਕਲ ਜਾਂਦੀਆਂ ਨੇ ਤੇ ਉਹ ਗੱਲ ਖਤਮ ਹੋ ਜਾਂਦੀ ਹੈ ਇਹਨਾਂ ਨੇ ਕੀ ਕੀਤਾ ਜਿਹੜੀ ਸਟੇਜ 1 ਹੈ ਜਿਹੜਾ ਖਤਮ ਹੋ ਜਾਂਦਾ ਸੀ ਉਹ ਸਟੇਜ 1 ਨੂੰ ਦੁਬਾਰਾ ਲਾ ਲਿਆ ਕਿ ਪਸਪਿਕ ਓਸ਼ਨ ਦੇ ਵਿੱਚ ਇੱਕ ਪਾਣੀ ਦੇ ਵਿੱਚ ਵੱਡਾ ਬੈਰੇਜ ਬਣਾ ਲਿਆ ਤੇ ਉਹਦੇ ਤੇ ਲਾ ਕੇ ਪਹਿਲਾਂ ਵੀ ਦੋ ਤਿੰਨ ਵਾਰ ਟਰਾਈ ਕੀਤੀ ਇੱਕ ਵਾਰ ਚੜਨ ਵੇਲੇ ਫਟ ਗਿਆ ਇੱਕ ਵਾਰ ਲਾ ਲਿਆ ਸੀ ਤੇ ਹੁਣ 10 ਸੈਟੇਲਾਈਟਸ ਇਰੇਡੀਅਮ ਦੀਆਂ ਇਹਦੇ ਵਿੱਚ ਭੇਜੀਆਂ ਉਹਨੇ ਤੇ ਉਹਨਾਂ ਨੂੰ ਛੱਡ ਕੇ ਤੇ ਦੁਬਾਰਾ ਉਹ ਆ ਕੇ ਲਹਿ ਗਿਆ ਤੇ ਮੋਸਟਲੀ ਕੋਈ ਵੀ ਵਾਪਸ ਨਹੀਂ ਆਉਂਦਾ ਤੇ ਇਹ ਡੈਵਰੀਜ਼ ਨੇ ਜਿਹੜੀਆਂ ਉੱਪਰ ਫਿਰਦੀਆਂ ਰਹੀਆਂ ਜਿਹਦੇ ਤੋਂ NASA ਵਾਲੇ ਬਹੁਤ ਡਰ ਰਹੇ ਨੇ ਹੁਣ ਇਸ ਸਮੇਂ 2271 ਸੈਟੇਲਾਈਟਸ ਨੇ ਜਿਹੜੀਆਂ ਧਰਤੀ ਦੇ ਆਲੇ-ਦੁਆਲੇ ਘੁੰਮ ਰਹੀਆਂ ਨੇ 200 ਕਿਲੋਮੀਟਰ ਤੇ ਲੋ ਐਲਟੀਟਿਊਡ 'ਚ ਨੇ ਉਦੋਂ ਉੱਪਰ 400 ਕਿਲੋਮੀਟਰ ਸਾਡੇ ਤੋਂ ਉੱਪਰ ਉਹ ਘੁੰਮਦੀਆਂ ਨੇ ਫਿਰ ਇਦੋਂ ਉੱਪਰ 5000 ਕਿਲੋਮੀਟਰ ਤੇ ਵੀ ਨੇ ਜਿਹੜੀਆਂ ਉੱਪਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਆਪਣੇ ਆਲੇ-ਦਾਲੇ 400 ਕਿਲੋਮੀਟਰ ਦੀ ਇੱਕ ਕਿਉਂਕਿ ਔਰਬਿਟ ਨੂੰ ਧਰਤੀ ਦੇ ਆਲੇ-ਦੁਆਲੇ ਜਿਹੜਾ ਉਹਨੇ ਗੇੜਾ ਲਾਉਣਾ ਹੈ ਧਰਤੀ ਦੇ ਆਲੇ-ਦੁਆਲੇ ਉਹਨੇ ਸੈਟੇਲਾਈਟ ਜਿੱਥੇ ਉਹਨੇ ਘੁੰਮਣਾ ਫਿਰ ਉੱਥੇ ਘੁੰਮਦੀ ਹੈ ਜਦੋਂ ਉਮਰ ਖਤਮ ਹੋ ਗਈ ਫੇਰ ਵੀ ਹੁਣ ਇਹ 2200 72 ਜਿਹੜੀਆਂ ਸੈਟੇਲਾਈਟਸ ਨੇ ਜਿਹੜੀਆਂ ਉੱਪਰ ਫਿਰ ਰਹੀਆਂ ਨੇ ਤੇ ਉਹਦੇ ਵਿੱਚੋਂ 1400 ਦੇ ਕਰੀਬ ਕੰਮ ਕਰ ਰਹੀਆਂ ਤੇ ਟੋਟਲ ਜਿਹੜਾ ਇਸ ਸਮੇਂ ਜਿਹੜੇ ਜਿਹਦੇ ਵਿੱਚ ਕੁਝ ਮੈਨ ਮੇਡ ਜਿਵੇਂ ਸੈਟੇਲਾਈਟਸ ਨੇ ਕੁਝ ਪੂਰਸ਼ਾ ਤਾਰੇ ਨੇ 5 ਲੱਖ ਦੇ ਕਰੀਬ ਜਿਹੜੇ ਇਹ ਪਾਰਟੀਕਲ ਸਾਡੀ ਧਰਤੀ ਦੇ ਆਲੇ-ਦਾਲੇ ਘੁੰਮ ਰਹੇ ਨੇ ਲੱਖ ਜਿਹੜਾ ਕਹਿੰਦੇ ਕਈ ਵਾਰ ਪੂਰਸ਼ਾ ਤਾਰਾ ਆਪਸ ਵਿੱਚ ਲੱਗਿਆ ਇਹਨਾਂ ਤੋਂ ਜਿਹੜੀ ਸਪੇਸ ਸ਼ੈਟਲ ਦਾ ਪ੍ਰੋਗਰਾਮ ਹੈ ਜਿਸ ਤੋਂ ਰੌਕਟ ਛੱਡਣੇ ਇਹਨਾਂ ਦਾ ਬਹੁਤ ਵੱਡਾ ਡਰਾ ਨੈ ਸਰ ਹੁਣ ਜਾਣ ਤਾਂ ਉਹਦੇ ਤੋਂ ਦੇਖ ਕੇ ਡਰ ਲੱਗਦਾ ਇੰਨਾ ਕੁਝ ਸਾਡੀ ਧਰਤੀ ਦੇ ਆਲੇ-ਦਾਲੇ ਘੁੰਮ ਰਿਹਾ ਤੇ ਫਿਰ ਇਹਦੇ ਵਿੱਚੋਂ ਹੁਣ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਇਹਨਾਂ ਨੂੰ ਕਿਵੇਂ ਨਾ ਕਿਵੇਂ ਨੈਟ ਲਾ ਕੇ ਕਿਵੇਂ ਨਾ ਕਿਵੇਂ ਜਿਹੜਾ ਇੱਕ ਤਾਂ ਮੈਨ ਮੇਡ ਆਬਜੈਕਟ ਨਹੀਂ ਜਿਹੜੇ ਆਪਣੇ ਨੇ ਭੇਜੇ ਹੋਏ ਸੈਟੇਲਾਈਟ ਦਾ ਹੋਰ ਕਰਦਾ ਇਹ ਤਾਂ ਪਹਿਲੀ ਨੇ ਫਾਲਕਨ 9 ਜਿਹੜਾ ਲਾ ਕੇ ਸਿਰੇ ਲਾਤੀ ਕਹਾਣੀ ਨਵੀਂ ਇਨਵੈਂਸ਼ਨ ਹੋਈ ਇਲਨ ਮਸਕ ਨੇ ਜਿਹੜੇ ਜਦ ਪੇਪਲ ਤੋਂ ਸਾਰਾ ਕੁਝ ਉਹਦਾ ਵਿਕ ਗਿਆ ਸੀ ਇੱਕ ਵਾਰ ਪੈਣੀ ਨਹੀਂ ਸੀ ਜੇਬ ਚ ਅੱਜ ਫੇਰ ਔਰ ਇਹ ਸਾਰੀਆਂ ਕਾਡਾਂ ਦੇ ਲਈ 80% ਮਸਕ ਦਾ ਆਪਣਾ ਦਿਮਾਗ ਹੈ। ਇਉਂ ਨਹੀਂ ਗੱਲ ਹੈ ਕਿ ਅ ਇਹ ਸਿਰਫ 45 ਸਾਲਾਂ ਦੀ ਉਮਰ ਤੇ ਲਈ ਬਹੁਤ ਕਰ ਰਿਹਾ ਗੱਲ ਉਹ ਕਰ ਰਿਹਾ ਜਿਹਦੇ ਵਿੱਚ ਵੱਡੀ ਕਯੂਬ ਨਮਾ ਜਗ੍ਹਾ ਜੋੜ ਦਿੱਤਾ ਜਾਊ ਬੜੇ ਤੇ ਬੜੇ ਸ਼ਹਿਰਾਂ ਤੋਂ 700 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਉਹਦੇ ਵਿੱਚ ਦੀ ਇੱਕ ਟਿਊਬ ਦੇ ਵਿੱਚ ਦੀ ਵੈਕਮ ਦੇ ਨਾਲ ਇੱਕ ਗੱਡੀ ਨੋ ਗਾਂ ਕਾ ਰਸੂਲ ਉਹ ਚ ਬੰਦੇ ਬੈਠਣਗੇ ਘੰਟਿਆਂ ਦੇ ਵਿੱਚ ਘੰਟੇ ਦਾ ਸਫਰ 5 ਘੰਟੇ ਦਾ ਸਫਰ ਆ ਜੇ ਮੰਨ ਲਓ ਉਹ ਘੰਟਿਆਂ ਦੇ ਵਿੱਚ 1.5 ਘੰਟਾ ਪੌਣੇ 2 ਘੰਟੇ ਇਸ ਤਰ੍ਹਾਂ ਦਾ ਅਲੱਗ-ਅਲੱਗ ਇਸ ਨੂੰ ਬਣਾਉਣ ਲਈ ਜਿਹੜਾ 5 ਲੱਖ ਦੇ ਕਰੀਬ ਅੜਦਾਲੇ ਧਰਤੀ ਦੇ ਇਸਮਾਨ ਜਿਹੜੇ ਪਾਰਟਿਕਲਰ ਜਾਂ ਪੀਸਸ ਰਹੇ ਜੋ ਦੇ ਕਰੀਬ ਜਿਹੜੀਆਂ ਡੈਬਰੀਜ਼ ਨੇ ਉਹ ਸਾਫਟ ਵਾਲ ਜਿੰਨੀ ਅੱਖ ਨੇ ਕੋਈ ਸੈਂਟੀਮੀਟਰ ਦੀ ਆ ਮੀਲ ਘੰਟੇ ਦੇ ਮੀਲ ਮਾਈਲ ਜਿਹੜੀਆਂ ਹੁਣ ਭੇਜੀਆਂ ਨੇ ਉਹਦੇ ਵਿੱਚ ਖਾਸ ਤੌਰ ਤੇ ਇਹ ਹੈ ਕਿ ਜਿਹੜੀ ਕੰਪਨੀ ਨੇ ਭੇਜੀਆਂ ਉਸ ਨੂੰ ਮੈਂ ਸੁਣ ਰਿਹਾ ਸੀ ਕਿ ਭੇਜਣੀਆਂ ਆਉਣ ਵਾਲੇ 15 ਮਿੰਟ 10 ਅਸੀਂ ਭੇਜੀਆਂ ਦੁਨੀਆ ਦੇ ਵਿੱਚ ਅਜਿਹੜਾ ਸਾਡਾ ਜੀਪੀਐਸ ਦਾ ਸਿਸਟਮ ਆ ਇਹ ਬਹੁਤ ਸਭ ਤੋਂ ਵੱਡਾ ਹੋਗਾ ਫਾਸਟ ਰਿਸਪੌਂਡਰ ਦੇ ਤੌਰ ਤੇ ਧਰਤੀ ਤੇ ਕੋਈ ਵੀ ਮੁਸ਼ਕਲ ਆ ਗਈ ਸਭ ਤੋਂ ਪਹਿਲਾਂ ਸੈਟੇਲਾਈਟਸ ਨੂੰ ਜਿਹੜਾ ਇਹਦੇ ਦੀਆਂ ਨੇ ਸੂਈਆ ਏਜੰਸੀਆਂ ਦੀਆਂ ਨੇ ਨੇ ਛੱਡੀਆਂ ਹੋਈਆਂ ਨੇ ਹੋਰ ਦੇਸ਼ਾਂ ਨੇ ਚਾਈਨਾ ਦੀਆਂ ਰਸ਼ੀਆ ਦੀਆਂ ਅਮਰੀਕਾ ਦੀਆਂ ਬਹੁਤ ਜ਼ਿਆਦਾ ਨੇ ਤੇ ਹੁਣ 70 ਦੇ ਕਰੀਬ ਸੈਟੇਲਾਈਟਸ ਉਹਨਾਂ ਨੇ ਹੋਰ ਛੱਡੀਆਂ ਜਿਹਦੇ ਵਿੱਚ ਮਨੁੱਖੀ ਸੇਵਾਵਾਂ ਦੇ ਲਈ ਇਸ ਸੈਟੇਲਾਈਟਸ ਵਰਤੀਆਂ ਜਾਣੀਆਂ ਨੇ ਇਹ ਜਿਹੜੀਆਂ ਹੁਣ ਛੱਡੀਆਂ ਨੇ ਉਹਦੇ ਵਿੱਚ ਫਰਸਟ ਰਿਸਪੌਂਡਰ ਤੌਰ ਤੇ 911 ਦੁਨੀਆ ਦੇ ਵਿੱਚ ਕਿਤੇ ਵੀ ਕੋਈ ਅਹ ਜੀ ਕੁਦਰਤੀ ਭਚਾਲ ਆ ਗਿਆ ਗਈ ਕੋਈ ਸਭ ਤੋਂ ਪਹਿਲਾਂ ਉਹ ਦੱਸਿਆ ਕਰਨੀ ਵੀ ਜਗ੍ਹਾ ਆ ਹੋ ਗਿਆ ਰਾਕਟ ਜਿਹੜਾ ਫਾਲਕ 9 ਸਪੇਸ ਨੇ ਕੱਲ ਉਸ ਨੂੰ YouTube ਤੇ ਉਹਨਾਂ ਨੇ ਦਿਖਾਇਆ ਇੰਨਾ ਕ੍ਰਿਸਟਲ ਕਲੀਅਰ ਉੱਡਣ ਤੋਂ ਲੈ ਕੇ ਉਹਦੇ ਵਾਪਸ ਆਉਣ ਤੱਕ ਹਰਾਨੀ ਹੋ ਇਸ ਦਾ ਸਟੇਜ 1 ਪਰਾ ਹੋਇਆ ਫਿਰ ਸਟੇਜ 2 ਉੱਪਰ ਰਹਿ ਗਿਆ ਉਹਦੇ ਚੀਜ਼ ਉੱਪਰ ਕੇ ਜਾਣੀ ਉਹ ਫਰੰਟ ਤੇ ਜਿਹੜੀ ਰਾਉਂਡ ਹੋਈ ਆ ਉਹ ਚੀਜ਼ ਆ ਜਿਹੜੀ ਉੱਪਰ ਲੈ ਕੇ ਜਾਣੀ ਹੁਣ ਨੈਕਸਟ ਫੇਜ਼ ਦੇ ਵਿੱਚ ਸਪੇਸ ਐਕਸ ਨੇ ਕੀ ਕਰਨਾ ਹੈ ਇੱਕ ਦਿਨ ਆਊਗਾ ਜਿਸ ਤਰ੍ਹਾਂ ਹੁਣ ਪੁਲਾੜੀ ਭੇਜਣੇ ਬਹੁਤ ਔਖੇ ਨੇ ਰਸ਼ੀਆ ਦੇ ਵਿੱਚੋਂ ਕਜ਼ਕਿਸਤਾਨ ਦੇ ਵਿੱਚੋਂ ਉਹਨਾਂ ਨੂੰ ਚੜਾਇਆ ਜਾਂਦਾ ਉਪਰ ਦੇਖ ਕੇ ਤਤੀ ਦੇ ਆਲਦਾਰੇ ਕਿ ਇੱਥੋਂ ਉੱਡ ਕੇ ਤੇ ਕਦ ਉਹਦੇ ਨਾਲ ਫਿਰ ਉਹਦੇ ਅੰਦਰਲੇ ਜਿਹੜੇ ਚੌਂਦਾ ਜਿਵੇਂ ਖੂ ਦੇ ਦੀ ਤੁਸੀਂ ਪੈੜ ਵੇਖ ਲਓ ਬੜਦਾ ਦੀ ਇੱਕ ਬਿਲਕੁਲ ਗਰਦਨ ਦੇ ਅੰਦਰਲੀ ਪੈੜ ਫਿਰ ਬਾਹਰਲੀ ਪੈੜ ਫਿਰ ਬਾਹਰਲੀ ਪੈੜ ਫਿਰ ਬਾਹਰਲੀ ਪੈੜ ਫਿਰ ਬਾਹਰਲੀ ਪੈੜ ਇਹ ਬਾਹਰਲੇ ਪੈੜ ਦੇ ਵਿੱਚ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਸਾਡੀ ਧਰਤੀ ਦੇ ਉੱਪਰ ਕੀ ਹੋ ਰਿਹਾ ਸਾਡੇ 100 ਮੰਡਲ ਤੇ ਤੋਂ ਬਾਹਰਲੇ 100 ਮੰਡਲਾਂ ਚ ਪੰਜ ਤੋਂ 6 ਅਸਟ੍ਰੋਨੌਟੋ ਦੀ ਤੇ ਪੁਲਾੜੀ ਨੇ ਪੰਜ-ਪੰਜ ਮਹੀਨੇ ਰਹਿ ਕੇ ਆਉਂਦੇ ਨੇ ਅਗਲਾ ਜਿਹੜਾ ਮੰਗਲ ਦਾ ਜਾਣ ਦੀ ਗੱਲ ਹੈ ਸੋ ਬਾਹਰਲੇ ਬੰਦੇ ਜਿਸ ਚੱਲ ਰਿਹਾ ਜਿਹੜਾ ਇੱਥੋਂ ਜਿਹੜੇ ਬੰਦੇ ਨਵੇਂ ਭੇਜਣੇ ਨੇ ਉਹ ਪਹਿਲਾ ਅੰਦਰਲੀ ਪੈੜ ਤੋਂ ਸ਼ੁਰੂ ਹੁੰਦਾ ਫਿਰ ਹੌਲੀ ਹੌਲੀ ਹੌਲੀ ਹੌਲੀ ਵਧਾ ਕੇ ਸੇਮ ਜਿਹੜੀ ਸਪੀਡ ਤੇ ਤੇ ਪੁਲਾੜ ਵਾਹਨ ਜਿਹੜਾ ਇੱਥੋਂ ਭੇਜਿਆ ਜਾਂਦਾ ਉਹ ਫਿਰ ਜਾ ਕੇ ਡਾਕ ਹੁੰਦਾ ਰੁਕਦਾ ਨਹੀਂ ਆਈ ਜਿਹੜਾ ਸਟੇਸ਼ਨ ਹੈ ਉਹ ਚੱਲਦਾ ਰਹਿੰਦਾ ਉਹਦੇ ਨਾਲ ਡਾਕ ਹੁੰਦਾ ਤੇ ਫਿਰ ਦੋ ਇੱਕ ਉੱਤੇ ਸਦਾ ਹੀ ਲੱਗਿਆ ਰਹਿੰਦਾ ਗ੍ਰੈਵਿਟੀ ਇੱਕ ਫਿਲਮ ਸੀ ਉਹ ਦੇਖਣ ਵਾਲੀ ਹੈ ਗ੍ਰੈਵਿਟੀ ਦੇ ਵਿੱਚ ਪੁਲਾੜੀ ਬਾਹਰ ਕੰਮ ਕਰ ਰਹੇ ਨੇ ਤੇ ਉਹ ਨਿਕਲ ਜਾਂਦੇ ਆ ਉਪਰ ਇਹ ਤਾਂ ਬਹੁਤ ਅਦਭੁਤ ਚੀਜ਼ ਆ ਬਾਬੇ ਨੇ ਬਹੁਤ 500 ਸਾਲ ਪਹਿਲਾਂ ਇਹ ਚੀਜ਼ਾਂ ਕਹਿ ਦਿੱਤੀਆਂ ਕਿ ਪਤਾ ਨਹੀਂ ਦੁਨੀਆ ਕੀ ਕੀ ਆ ਇਹ ਤਾਂ ਅਸੀਂ ਸਾਡੀ ਉਹ ਗੱਲ ਚੱਲ ਰਹੀ ਹੈ ਸਾਡੀ ਧਰਤੀ ਦੇ ਸਾਡੇ 100 ਮਿੰਡਲ ਦੀ ਉਹ ਗੱਲ ਚੱਲ ਰਹੀ ਆ ਆਰਬਿਟਿੰਗ ਧਰਤੀ ਪਰੇਸ 77 ਜਿਹੜੀ ਆ ਮਾਲ ਦਾ ਸਾਡਾ ਕਿਲੋਮੀਟਰ ਦਾ ਰੇਡੀਅਸ ਆ ਤੇ ਉਸ ਰੇਡੀਅਸ ਦੇ ਆਲੇ-ਦਾਲੇ ਧਰਤੀ ਦੇ ਆਲੇ-ਦਾਲੇ ਇਹ ਸੈਟੇਲਾਈਟਸ ਫਿਰ ਰਹੀਆਂ ਨੇ ਜਿਹੜੀਆਂ ਸਾਡੀ ਸੇਵਾਵਾਂ ਦੇ ਲਈ ਸੋ ਫਾਲਕਨ 9 ਜਿਹੜਾ ਇਲਨ ਮਸਕ ਦੀ ਸਪੇਸਐਕਸ ਦਾ ਪਹਿਲਾ ਰਾਕਟ ਹੈ ਜਿਹੜਾ ਸੈਟੇਲਾਈਟਸ ਨੂੰ ਛੱਡ ਕੇ ਦੁਬਾਰਾ ਆ ਕੇ ਧਰਤੀ ਤੇ ਉਤਰ ਕੇ ਇਹਦੇ ਨਾਲ ਸੈਟੇਲਾਈਟਸ ਨੂੰ ਭੇਜਣਾ ਹੋਰ ਸਸਤਾ ਹੋ ਜਾਊਗਾ ਕਿਉਂਕਿ ਬਹੁਤ ਮਹਿੰਗਾ ਜਿਹੜਾ ਭੇਜਣਾ ਪ੍ਰਾਈਵੇਟ ਕੰਪਨੀਆਂ ਨੇ ਜਿਹੜੀਆਂ ਨਾਸਤ ਸਰਕਾਰ ਨਹੀਂ ਕੰਮ ਕਰਦੀ ਐ ਪ੍ਰਾਈਵੇਟ ਕੰਪਨੀਆਂ ਆਪਣੀਆਂ ਸੈਟੇਲਾਈਟਸ ਲਈ ਉਹਨਾਂ ਨੇ ਇਹ ਜਹਾਜ਼ ਬਾਹਨ ਰੱਖੇ ਹੋਏ ਤੇ ਉਹਨੂੰ ਬਹੁਤ ਜਲਦੀ ਪਾਵਰ ਦੇ ਕੇ ਸਾਡੀ ਧਰਤੀ ਤੋਂ ਬਾਹਰ ਜਾ ਕੇ ਉਹਨੂੰ 200 ਕਿਲੋਮੀਟਰ ਤੇ ਇਹ ਸਾਰੀਆਂ ਜਿਹੜੀਆਂ ਨੇ ਸੈਟੇਲਾਈਟਸ ਜਿਹੜੀਆਂ ਲੋ ਐਲਟੀਟਿਊਡ ਤੇ ਨੇ ਉਹ ਘੁੰਮ ਰਹੀਆਂ ਨੇ 400 ਕਿਲੋਮੀਟਰ ਧਰਤੀ ਤੋਂ ਉੱਪਰ ਇੰਟਰਨੈਸ਼ਨਲ ਸਪੇਸ ਸਟੇਸ਼ਨ ਧਰਤੀ ਦੇ ਆਲੇ-ਦੁਆਲੇ ਘੁੰਮ ਰਿਹਾ ਖਰਾਨੀ ਦੀ ਗੱਲ ਹੈ ਕਿ ਉਸ ਦੇ ਵਿੱਚੋਂ ਕਈ ਵਾਰ ਮੋਨੀਟਰ ਕਰ ਸਕਦੇ ਹਾਂ ਤੁਸੀਂ ਸਪੇਸ ਸਟੇਸ਼ਨ ਨੂੰ ਕਿੱਥੇ ਦੀ ਲੰਘ ਕਈ ਵਾਰ ਉਹ ਹਰ ਰੋਜ਼ ਤੁਹਾਨੂੰ ਕਈ ਵਾਰ ਉਹ ਦਿਖਦਾ ਕਈ ਵਾਰ ਦਿਖ ਨਹੀਂ ਜਾਂਦਾ ਜਦ ਜੇ ਵਾਤਾਵਰਨ ਸਾਫ਼ ਹੋਵੇ ਸੋ ਇਲਨ ਮਸਕ ਦਾ ਇੱਕ ਨਵਾਂ ਯਤ ਕੇ ਸੈਟਲਾਈਟs ਛੱਡ ਕੇ ਰਾਕਟ ਦਾ ਬਾਪ ਸੌਣਾ ਬਹੁਤ ਵੱਡੀ ਗੱਲ ਹੈ ਉਸ ਨੂੰ ਕੰਟਰੋਲ ਕਰਨਾ ਤੇ ਉਹ 4.5 5 ਮਿੰਟ ਦੀ ਜਿਹੜੀ ਵੀਡੀਓ ਹੈ ਜਿਹਦੇ ਚੜਦਾ ਤੇ ਆਉਂਦਾ ਦਿਖਾਇਆ ਗਿਆ ਵਪਾਰਕ ਸੇਸ਼ਨ ਤੋਂ ਤੁਸੀਂ ਸ਼ਾਮਲ ਹੋਵੋ ਇਹ ਪਕੜ ਹੈ ਕਿ ਮੈਂ ਬੇਨਤੀ ਕਰਦਾ ਬਹੁਤੋਂ ਤੁਸੀਂ ਸੁਣਨ ਵਾਲੇ ਇਹਦੇ ਵਿੱਚ ਹੋਰ ਵਾਧਾ ਕਰੋ ਕੋਈ ਗੱਲਬਾਤ ਕਰੋ ਕਿ ਇਹ ਪਲਾੜ ਇੰਟਰਨੈਸ਼ਨਲ ਸਪੇਸ ਸਟੇਸ਼ਨ ਸੈਟੇਲਾਈਟਸ ਫਾਲਕਨ 9 ਰਾਕਟ ਇਲਨ ਦੀ ਟੈਸਲਾ ਕੋਈ ਵੀ ਇਲਨ ਮਸਕ ਵਾਰੇ ਕੋਈ ਗੱਲਬਾਤ ਕਰਨੀ ਚਾਹੋ 1846 247 1550 1:42 ਹੋਇਆ ਜੀ ਹੇਲਨ ਮਸਟ ਬੀ ਜਿਹੜੀ ਗੱਲਬਾਤ ਮੈਂ ਤੁਹਾਨੂੰ ਦੱਸ ਕੇ ਹਟਿਆ 1844 247 1550 ਕਿਸੇ ਵਿਸ਼ੇ ਬਾਰੇ ਤੁਸੀਂ ਇਹਦੇ ਬਾਰੇ ਜਾਂ ਪੰਜਾਬ ਦੇ ਪਾਣੀਆਂ ਦੇ ਬਾਰੇ ਕੋਈ ਗੱਲਬਾਤ ਤੋਂ ਤੁਸੀਂ ਗੱਡੀਆਂ ਵੇਖ ਸਕਦੇ ਹੋ ਅਜੀਤ ਸਿੰਘ ਹੈਰ ਤੇ ਜੀ ਵੀ ਹੈਰ ਕੁਦੀਪ ਸਿੰਘ ਹੈਰ ਤੁਹਾਡੇ ਲਈ ਗੱਡੀਆਂ ਸਾਡੇ ਤੇਸ ਤੋਂ ਕਰੀਬ ਉਹਨਾਂ ਨੇ ਰੱਖੀਆਂ ਇਨ ਹਾਊਸ ਫਾਈਨਾਂਸਿੰਗ ਆ ਕੋਈ ਵੀ ਗੱਡੀ ਤੁਸੀਂ ਲੈਣੀ ਹੈ ਲਕਜ਼ਰੀ ਕਾਰ ਕੰਮ ਵਾਲੀਆਂ ਵਹਨਾਂ ਤੇ ਸੋ ਟ੍ਰੱਕ 604580 755@airbots.com ਜੈਰੀ ਬ੍ਰਾਡ 6047628899 ਬੈਸਟ ਡੀਲ ਓਨ ਬੈਸਟ ਰੇਟ ਜੈਰੀ ਬ੍ਰਾਡ ਦੇ ਨਾਲ ਤੁਸੀਂ ਗੱਲਬਾਤ ਕਰਿਓ ਜੈਰੀ ਬ੍ਰਾਡ ਤੁਹਾਡੇ ਲਈ ਮੌਰਗੇਜ ਦਾ ਪ੍ਰਬੰਧ ਕਰਕੇ ਦਿੰਦੇ ਨੇ ਕਿੱਥੇ ਵੀ ਤੁਸੀਂ ਬੀਸੀ ਚ ਡੈ ਰਹੇ ਹੋ ਮੋਰ ਦੇ ਨਹੀਂ ਮਿਲ ਰਹੀ ਤਾਂ ਇੱਕ ਵਾਰ ਜੈਰੀ ਤੇ ਗੱਲ ਕਰਿਓ ਸਾਰਾ ਕੰਮ ਹੋ ਜਾਏਗਾ ਗ੍ਰੈਂਡ ਤਾਜ ਸਿੰਘ ਖਿਆੜਾ ਹਰਪਾਲ ਸਿੰਘ ਸੂਚ ਸੋਚਾ ਸਿੰਘ ਪੱਡਾ ਪਾਰਟੀ ਵੱਡੀ ਛੋਟੀ ਗ੍ਰੈਂਡ ਤਾਜ ਤੁਸੀਂ ਕਰ ਸਕਦੇ ਹੋ ਸਰੀ ਦਾ ਤਾਜ ਹੈ ਗ੍ਰੈਂਡ ਤਾਜ 84 ਤੇ 128 ਤੇ ਚੜ੍ਹਦੇ ਵਾਲੇ ਪਾਸੇ ਸੇਵਾ ਪੂਰੀ ਵੱਡੀਆਂ ਛੋਟੀਆਂ ਪਾਰਟੀਆਂ ਰਾਜਨੀਤਿਕ ਇਕੱਠ 60460178484 Parvinder Singh think insurance dot ca 74827213 Alberta te BC Swama life insurance critical illness mortgage supervisor disability insurance <inaudible> Parvinder Singh 6048287213 oasiswindows 604500795033 oasiswindows.com multi family town house condo project te custom made ghar bana rahe ho chota bada ghar hai koi ਸਰਵ ਡਿਵੀਜ਼ਨ ਆ ਤਾਂ ਵਧੀਆ ਵਿੰਡੋਜ਼ ਆ ਵਾਰਡ ਵਿਨਿੰਗ ਵਿੰਡੋਜ਼ ਟ੍ਰਿਪਲ ਗਲੇਜ਼ ਤੇ ਟੈਂਪਰਡ ਗਲਾਸ ਦੇ ਨਾਲ ਬਣਾ ਕੇ ਵਧੀਆ ਵਿੰਡੋ ਜਿਹੜੀਆਂ ਬਾਹਰਲੇ ਤੁਹਾਡੇ ਘਰ ਦੇ ਪੇਂਡ ਦੇ ਨਾਲ ਰਲਾ ਦੇਣਗੇ 6645975033@wsswindows.com ਗੇਟਵੇ ਪੀਜ਼ਾ 6645903333 6645993333 ਨਿਊਟਨ ਦੀ ਲੋਕੇਸ਼ਨ ਦਾ ਪਹਿਲਾ ਤੇ ਗਿਲਫਰਡ 6645993333 148 ਤੇ ਫਰੇਜ਼ਰ ਹਾਈਵੇ ਦੇ ਸਨ ਦੇ ਵਿੱਚ ਜਸਵਿੰਦਰ ਸਿੰਘ ਲਾਈਨ ਨੰਬਰ 2 ਤੁਸੀਂ ਇਸ ਤੇ ਹਲੋ ਜੀ ਹਲੋ ਹਾਂ ਦਸਿਕਾ ਜੀ ਸਤਿ ਜੀ ਬਾਈ ਜੀ ਬਾਰੇ ਗੱਲ ਕਰਨੀ ਸੀਗੀ ਕਰੋ ਜੀ ਜਿੰਨ ਸਾਹਿਬ ਕੋਈ ਵੀ ਦੇ ਅੰਦਰ ਦਾ ਕੋਈ ਨੋਟ ਚੇਂਜ ਨਹੀਂ ਕਰਨਾ ਲੈ ਨਹੀਂ ਲੈਣਾ ਨਹੀਂ ਹੈਗਾ ਆਰਬੀਆਈ ਠੀਕ ਬੈਂਕ ਉਹ ਦਿੱਲੀ ਆ ਮੈਂ ਪੰਜਾਬ ਦੇ ਵਿੱਚ ਕੋਈ ਬੈਂਕ ਨੇ ਲਾਮਿਨੇਟ ਕੀਤਾ ਹੈਗਾ ਕੋਈ ਕਿਸੇ ਦਾ ਗਿਆ ਹੋਵੇ ਤਾਂ ਮੜਾ ਜਿਹਾ ਪਤਾ ਕਰਕੇ ਦੱਸਿਓ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਜੀ ਤੇ ਤੁਸੀਂ ਗੋਣਾ ਤੋਂ ਇਸ ਬਾਰੇ ਹੋਰ ਹੋ 604 349 13 13 ਤੇ ਗਗਨ ਸਿੰਘ ਪੰਜਾਬ ਫੋਰੈਸਟੋ ਪ੍ਰੋਗਰਾਮ ਦੇ ਸਪான்ਸਰ ਨੇ ਡਾਲਰ ਭੇਜਣੇ ਆ ਜਾਂ ਡਾਲਰ ਇਧਰ ਨੂੰ ਲੈ ਕੇ ਆਉਣੇ ਆ ਜਿਸ ਦਿਨ ਕਹਿ ਦਿੱਤਾ ਤਾਂ ਰੁਪਈਏ ਜਾਂ ਡਾਲਰ ਇੱਥੇ ਹੋਣਗੇ ਵਾਅਦਾ ਕਿਸੇ ਨੂੰ ਝੂਠਾ ਨਹੀਂ ਕੀਤਾ ਜਾਂਦਾ ਤੇ ਹਰ ਗੱਲ ਕਹਿ ਕੇ ਪੂਰੀ ਕੀਤੀ ਜਾਂਦੀ ਭਰੋਸੇ ਦਾ ਦੂਜਾ ਨੰਬਰ ਗਗਨ ਸਿੰਘ 604 349 13 13 ਇਆ 640 120 ਫੀਟ ਯੂਨਿਟ ਨੰਬਰ 102 ਸਰੀ ਦੇ ਵਿੱਚ ਸਕਾਟ ਰੋਡ ਤੇ ਜਿੱਥੇ ਵੀਜ਼ਾ ਮਿਲਦਾ 80 ਤੇ ਸਕਾਟ ਰੋਡ ਫਾਈਬਰ ਕੋਈ ਤੁਸੀਂ ਲੋਟ ਪਟਾਉਣੀ ਹੈ ਤੇ ਜਾਂ ਕੋਈ ਘੱਟ ਹੋਣਾ ਡਰੇਨ ਸਾਈਜ਼ ਪਾਉਣੀਆਂ ਆ ਜਾਂ ਬਜਰੀ ਲੈਣਾ ਟਰੱਕਿੰਗ ਦਾ ਕੰਮ ਆ ਕੋਈ ਐਕਸਕੇਵੇਸ਼ਨ ਦਾ ਕੰਮ ਆ ਦਾ ਕੰਮ ਹੈ ਤਾਂ ਹਰਪੀ ਸਿੰਘ ਕੰਗ 6047270424 ਗੁਰਪ੍ਰੀਤ ਸਿੰਘ ਦਵਾਲ 778846 9942 6047270424 ਹਰਪੀ ਸਿੰਘ ਕੰਗ ਗੁਰਪ੍ਰੀਤ ਸਿੰਘ ਦਵਾਲ 778846 9942 5 ਰਿਵਰਸ ਐਕਸ ਵੇਟਿੰਗ ਕੰਪਨੀ ਲਾਟ ਪਟਣ ਦੇ ਖਾਸ ਡਿਸਕਾਊਂਟ ਲੋਕ ਸਾਤਾ ਦੇ ਹਵਾਲਾ ਗ੍ਰੀਨ ਇੰਡੀਅਨ ਕੁਜ਼ੀਨ 645033535 ਯੂਨਿਟ 112 125 65 88 ਐਵੇਨਿਊ 沃尔马ርት ਵਾਲੇ ਪਲਾਜ਼ੇ ਦੇ ਵਿੱਚ ਸ੍ਰੀ ਸਿੰਘ ਨੇ ਇੱਕ ਇਕੱਠਾ ਇੱਕ ਹੀ ਤੇ ਜਿੱਥੇ ਪੀਜ਼ਾ ਮਿਲਦਾ ਹੈ ਉੱਥੇ ਮਠਿਆਈ ਮਿਲਦੀ ਹੈ ਉੱਥੇ ਭਾਰਤੀ ਖਾਣੇ ਬਹੁਤ ਵਧੀਆ ਰੈਸਟੋਰੈਂਟ ਬੈਠ ਕੇ ਖਾਣ ਦੇ ਲਈ ਜਾਂ ਆਰਡਰ ਕਰ ਸਕਦੇ ਹੋ ਟੇਕ ਆਊਟ ਕਰ ਸਕਦੇ ਹੋ 604503 3535 ਗ੍ਰੀਨ ਇੰਡੀਅਨ ਕਜ਼ੀਨ ਐਂਡ ਐਵਨਿਊ ਤੇ ਬਕਾਈ ਪਕਾਉ ਲੱਖ 80 ਹਜ਼ਾਰ ਦੀ 604 684 88 88 ਹਰਲੀ ਨਾਗਰਾ ਦਾ ਨੰਬਰ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਇੱਥੇ 베ਰੀ ਤੇ ਘਰ ਬਹੁਤ ਵਧੀਆ ਬਣਦਾ 40 ਐਵਨੀ ਉਤੇ ਤੇ 149th 149 3847 ਵਪਾਰ ਖਨੇਸ਼ਾ ਦਬਾਲ ਵਾਪਸ ਹੋਣਾਂ ਚ ਸਭ ਮਨਜੀਤ ਸਿੰਘ ਜੀ ਤੁਸੀਂ ਇਰ ਤੇ ਹੋ ਲਾਈਨ ਨੰਬਰ 2 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਜੀਤ ਸਿੰਘ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਜਦੋਂ ਤੋਂ ਸ਼ੁਰੂ ਕੀਤਾ ਇਤਿਹਾਸ ਜਿਹੜਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਨਾ ਮੈਨੂੰ ਬੜੇ ਅਫਸੋਸ ਨਾਲ ਮਤਲਬ ਜਦੋਂ ਇਹ ਗੱਲਬਾਤ ਹੁੰਦੀ ਤਾਂ ਬਹੁਤ ਅਫਸੋਸ ਇਹਦਾਂ ਦਾ ਹੁੰਦਾ ਦੇਖੋ ਅੱਜ ਵੀ ਪੰਜਾਬ ਦੀ ਸਿਆਸਤ ਵਿੱਚ ਨਾ ਜਿਹੜੇ ਪੰਜਾਬ ਦੇ ਅਸਲੀ ਮਾਮਲੇ ਆ ਉਹਨਾਂ ਤੇ ਕੋਈ ਵੀ ਪਾਰਟੀ ਸੰਜੀਦਾ ਨਹੀਂਗੀ ਸੋ ਇਹ ਬਹੁਤ ਸੀਰੀਅਸ ਮਸਲਾ ਆ ਤੇ ਜਿਹੜੇ ਤੁਸੀਂ ਆਪਣੇ ਮਹਿਮਾਨਾਂ ਨਾਲ ਗੱਲਬਾਤ ਕੀਤੀ ਆ ਇਹ ਇਹਨਾਂ ਦੀ ਵੀ ਵੀਡੀਓ ਵੀ ਦੇਸੀ ਹੈ ਵੈਸੇ ਤੇ ਬਹੁਤ ਇਹਨਾਂ ਦਾ ਸ਼ਲਾਘਾਯੋਗ ਉਹ ਦਮਿਆਂ ਤੇ ਜਿੰਨਾ ਵੀ ਨੇ ਵਧੀਆ ਆ ਪਰ ਜਿਹੜਾ ਸਭ ਤੋਂ ਜ਼ਿਆਦਾ ਸੰਜੀਦਾ ਆ ਉਹ ਜਿਹੜੀ ਆ ਨਵਾ ਸਰਸੋਤੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ ਇਹ ਸੇ ਝਾੜੇ ਧਿਆਨ ਦੇਣ ਦੀ ਲੋੜ ਆ ਕਿਉਂਕਿ ਦਾ ਗੱਲ ਤੇ ਦੂਜੀ ਗੱਲ ਮੈਨੂੰ ਇਹ ਲੱਗਦਾ ਪੰਜਾਬ ਦੇ ਮੁੱਦਿਆਂ ਤੇ ਮੈਂ ਗੱਲ ਕੀਤੀ ਕਿ ਉਹ ਸੰਜੀਦਾ ਨਹੀਂ ਗਏ ਪਰ ਜਿਹੜੇ ਸਿੱਖ ਮੁੱਦੇ ਆ ਤੇ ਮੈਂ ਚਾਹੂੰਗਾ ਜੇ ਤੁਹਾਡੇ ਕੋਲ ਕਿਸੇ ਵੇਲੇ ਫਿਊਚਰ ਦੇ ਵਿੱਚ ਟਾਈਮ ਦੇ ਅਟੈਕ ਵੇਲੇ ਹਰਮੰਦਰ ਸਾਹਿਬ ਦੇ ਕੰਡੂ ਘਾਰੇ ਦਾ ਜਿਹੜਾ ਆਪਣਾ ਬੇਸ਼ਕੀਂਤੀ ਖਜ਼ਾਨਾ ਲੁਟਿਆ ਗਿਆ ਆ ਤੋਚੇ ਖਾਨੇ ਦਾ ਉਦੇ ਬਾਰੇ ਕੋਈ ਖੋਜ ਕੱਢ ਕੇ ਲਿਆਓ ਫੇ ਉਹ ਉਹਦੇ ਕੀ ਮੁੜਿਆ ਕੀ ਨਹੀਂ ਮੁੜਿਆ ਜੇ ਨਹੀਂ ਮੁੜਿਆ ਤਾਂ ਉਹਦਾ ਆਪਣੇ ਫਿਚਰ ਦੇ ਤੇ ਕੀ ਉਹ ਆਪਾਂ ਨੂੰ ਅਸਰ ਪਾ ਸਕਦਾ ਹੈ ਉਹਨੂੰ ਕੀ ਬਦਲ ਸਕਦੇ ਆ ਕੀ ਕੁਝ ਉਹਦੇ ਆ ਸਾਡੇ ਆਉਣ ਇਤਿਹਾਸ ਲਈ ਸਾਡੇ ਆਉਣ ਵਾਲੇ ਰਿਕਾਰਡ ਲਈ ਉਹ ਸਾਨੂੰ ਮਤਲਬ ਨੁਕਸਾਨ ਕਰ ਸਕਦਾ ਇਹਦੇ ਬਾਰੇ ਖੋਜ ਕਰਕੇ ਜਰੂਰ ਕਿਸੇ ਵੇਲੇ ਕੋਈ ਪ੍ਰੋਗਰਾਮ ਲਿਆਓ ਜੀ ਬੜੀ ਮਿਹਰਬਾਨੀ ਠੀਕ ਹੈ ਜੀ ਧੰਨਵਾਦ ਜੀ ਇਹ ਗੱਲ ਠੀਕ ਹੈ ਜੀ ਪੰਜਾਬ ਦੀ ਗੱਲ ਜਿਹੜੀ ਚੱਲ ਰਹੀ ਹੈ ਪਾਣੀਆਂ ਦੀ ਇਹਦੇ ਬਾਰੇ ਅਸੀਂ ਸੰਜੀਦਾ ਨਹੀਂ ਤੇ ਨਾ ਹੀ ਕੋਈ ਪਾਰਟੀ ਸੰਜੀਦਾ ਇਹ ਮੰਨਣਾ ਪਊ ਅ ਤਜੀਤ ਸਿੰਘ ਬਰਨਾਲੇ ਹੋਣੀ ਇਸ ਦੁਨੀਆ ਤੋਂ ਤੁਰ ਗਏ ਆ ਹੁਣ ਕਿਹੜੇ ਕਿਹੜੀ ਗੱਲ ਨਾਲ ਕੌਮ ਯਾਦ ਕਰ ਐਵੇਂ ਗਵਰਨਰੀਆਂ ਨਹੀਂ ਮਿਲੀਆਂ ਐਸ.ਆਈ.ਐਲ ਸਭ ਤੋਂ ਵੱਧ ਜਿਹੜੀ ਬਣੀ ਤਾਂ ਸਜੀਤ ਬਰਨਾਲੇ ਦੇ ਸਮੇ ਬਣੀ ਹੁਣ ਤੁਸੀਂ ਵਜ਼ਨ ਲੈ ਕੇ ਰੂਹ ਤੇ ਦਾਗ ਲੈ ਕੇ ਪਰਿਵਾਰ ਨੂੰ ਜਿਹੜੇ ਲਖਬ ਦੇ ਨਾਲ ਕਿਵੇਂ ਲੋਕ ਬੁਲਾਉਣਗੇ ਫਿਰ ਦੇ ਕੱਖਾਂ ਕਾਨਿਆਂ ਕਦੇ ਕਾਂਗਰਸੀ ਬਣ ਗਏ ਕਦੇ ਆਮ ਆਦਮੀ ਚਲੇ ਗਏ ਕਦੇ ਅਕਾਲੀ ਬਣ ਗਏ ਕਦੇ ਇੱਧਰ ਕਦੇ ਉੱਤਰ ਕਿਹੜਾ ਪੁੱਛਦਾ ਯਾਦ ਹੈ ਤੁਹਾਨੂੰ ਫੋਟੋ ਇੱਕ ਜਿਹਦੇ ਤੇ ਬਰਨਾਲਾ ਬੋਲਦਾ ਤੇ ਮੂਰੇ ਗਗਨਦੀਪ ਹੱਥ ਚ ਨੰਗਾ ਰਵਾਲਵਰ ਲੈ ਕੇ ਖੜਾ ਅ ਇੰਡੀਆ ਟੂਡੇ ਉਹ ਰਸਾਲਾ ਕਿਤੇ ਪਿਆ ਘਰੇ ਤੇ ਮੈਂ ਹੈਰਾਨ ਸੀ ਖਾਨੀ ਉਹ ਸ਼ਾਇਦ ਦਰਬਾਰ ਸਾਹਿਬ ਦੇ ਵਿੱਚੇ ਸੀ ਮੈਨੂੰ ਲੱਗਦਾ ਤੇ ਦੇ ਵਿੱਚੋਂ ਕੀ ਕੱਢਣਾ ਹੈ ਵਜ਼ਨ ਲੈ ਕੇ ਲੋਕ ਤੁਰ ਤੇ ਮੈਂ ਦੱਸਣ ਕਿ ਆਹ ਕੰਮ ਮੈਂ ਪੰਜਾਬ ਲਈ ਕਰਕੇ ਗਿਆ ਐ ਨੇ ਵਾਰੋ ਵਾਰੀ ਤੁਰ ਜਾਣਾ ਸੋ ਹੋ ਕੇ ਇਸ ਦੁਨੀਆ ਤੋਂ ਤੁਰਨਾ ਚਾਹੀਦਾ ਜਿੰਨਾ ਵਿਤ ਹੋਵੇ ਉਹਨਾਂ ਕੰਮ ਕਰਨਾ ਚਾਹੀਦਾ ਪੰਜਾਬ ਦਾ ਪਾਣੀ ਆ ਜਿਹੜਾ ਉਹ ਮੁੱਕ ਜਾਣਾ ਅ ਜਿਵੇਂ ਪਹਿਲਾਂ ਜਿਵੇਂ ਬੋਰ 30 30 ਫੁੱਟ ਤੋਂ ਪਾਣੀ ਮੋਨੋ ਬਲਾਕ ਨਾਲ ਚਲਦੀਆਂ ਮੋਟਰਾਂ ਹੁਣ 3 300 ਫੁੱਟ ਖੂਹੀ ਪੱਟੀ ਹੋਈ ਐ ਤੇ ਉਦੋਂ ਗਾਂ ਬੋਰ ਐ ਤੇ ਜਿਵੇਂ ਸਾਲ ਪਹਿਲਾਂ ਮੱਛੀ ਮੋਟਰਾਂ ਦਾ ਅਸ ਦਾ ਨਾਉ ਸੀ ਇਉਂ ਹੀ ਅੱਜ ਤੋਂ 10 ਸਾਲਾਂ ਨੂੰ ਪੰਜਾਬ ਦੇ ਵਿੱਚੋਂ ਪਾਣੀ ਖਤਮ ਹੋ ਜਾਣਾ ਇਹ ਮੰਨ ਲੋ ਗੱਲ ਇਹ ਲੋਕ ਪੰਜਾਬ ਦੇ ਮੰਨਣ ਨੂੰ ਤਿਆਰ ਨਹੀਂ ਤੁਹਾਨੂੰ ਤਾਂ ਸਮਝ ਆਉਂਦੀ ਐ ਇਹ ਜਿਸ ਤਰ੍ਹਾਂ ਇਹ ਪ੍ਰੋਗਰਾਮ ਹੋਇਆ ਹੈ YouTube ਤੇ ਫਾਦ ਦਿੱਤਾ ਜਾਣਾ ਆਸਨੇ ਅੱਜ ਲੋਕ ਸੱਤ ਦੇ ਨਾਂ ਥੱਲੇ ਇਸ ਨੂੰ ਵੱਧ ਤੋਂ ਵੱਧ ਭੇਜੋ ਲੋਕ ਇਸ ਨੂੰ ਸੁਣ ਸਕਣ ਪਤਾ ਲੱਗ ਸਕੇ ਪੰਜਾਬ ਵਿੱਚ ਦੱਸੋ ਉਸ ਨੂੰ YouTube ਤੇ ਇਹ ਤੋਂ 1 ਵਾਲਾ ਸਮੇਂ ਦਾ ਜਿਹੜਾ ਪ੍ਰੋਗਰਾਮ ਹੈ ਅਗਲੀਆਂ ਦੋ ਕੜੀਆਂ ਦਾ ਵੀ ਦੱਸੋ ਜ਼ਰੂਰੀ ਹੈ ਇਹ ਉਹਨਾਂ ਵੋਟਾਂ ਤੋਂ ਪਹਿਲਾਂ ਅਕਲ ਹੋਵੇ ਸਿਆਣੇ ਹੋਣ ਕਿ ਕਿਵੇਂ ਵੋਟਾਂ ਪਾਉਣੀਆਂ ਪੰਜਾਬ ਬੈਂਕਟ ਹਾਲ 6045987611 ਵੱਡੀ ਛੋਟੀ ਪਾਰਟੀ ਕੀਤੀ ਜਾਂਦੀ ਹੈ ਸ਼ਾਮੇ ਗਿੱਲ ਹੋਣਾ ਨਾਲ ਗੱਲਬਾਤ ਕਰ ਲਿਓ ਪੰਜਾਬ ਬੈਂਕਟ ਹਾਲ ਪੂਰੀ ਤਰ੍ਹਾਂ ਰੈਨੋਵੇਟ ਕੀਤਾ ਹੈ ਬੈਂਕਟ ਹਾਲ ਹੈ ਪਾਲ ਬਿਜ਼ਨਸ ਸੈਂਟਰ ਨਵਾਂ ਜਿਹੜਾ ਡਾਂਸਿੰਗ ਫਲੋਰ ਹੈ ਤੇ ਨਮੀਆਂ ਲਾਈਟਸ ਤੇ ਸਿਸਟਮ ਮੀਟ ਖਰੀਦਣਾ ਤਾਂ ਕੈਪਟਨ ਮੀਟ ਦੀ ਦੂਸਰੀ ਲੋਕੇਸ਼ਨ ਪਾਲ ਬਿਜ਼ਨਸ ਸੈਂਟਰ ਚ ਖੁੱਲ ਗਈ 604 503 0070 ਹਰ ਕਿਸੇ ਦਾ ਮੀਟ ਆਚਾਰ ਤੇ ਜੇੜਾ ਵੀ ਤੁਹਾਡਾ ਮਨ ਕਰੇ ਜਿਉਂ ਜਿਉ ਵੀ ਤੁਸੀਂ ਮੀਟ ਖਾਣੇ ਹੋ ਉਹ ਜੇ ਮੀਟ ਕੈਪਟਨ ਵੀਰ ਸ਼ਾਪ ਤੋਂ ਮਿਲਦਾ ਅਖੀਰ ਦੇ ਵਿੱਚ ਇੱਕ ਗੀਤ ਬਾਵੇ ਦਾ ਚਾਹ ਲੋਣਾ ਸੀ ਉਹਨਾਂ ਦੇ ਸਨਮੁਖ ਅੱਜ ਆਪਣੀ ਐ ਫਿਰ ਕੱਟਦੇ ਸਰੀਰਾਂ ਨਾਲ ਬਾਵੇ ਦਾ ਗੀਤ ਸਰਦਾਰ ਨਹੀਂ